ਇਹ ਅੰਕ ਕੋਹੂੰ ਸ਼ੁੱਧਤਾ ਕੀ ਸਾਰ ਹੋ ਕੋਹੂੰ ਅਕਲੰਕ ਕਿਤੇ ਤੂੰ ਐਸਾ ਸਰੂਪ ਹੈ ਤੇਰਾ ਜਿਹਨੂੰ ਕਲੰਕ ਲੱਗਦਾ ਹੀ ਨਹੀਂ ਦੇਖ ਲੰਕੀ ਜਿਹੜਾ ਬ੍ਰਹਮ ਗਿਆਨ ਹੁੰਦਾ ਉਹਨੂੰ ਕਲੰਕ ਨਹੀਂ ਲੱਗਦਾ ਕਿਉਂ ਨਹੀਂ ਕਲੰਕ ਲੱਗਦਾ ਅਸਲ ਚ ਕਲੰਕ ਕੁਝ ਹੁੰਦਾ ਕਲੰਕ ਆਪਣੇ ਆਪ ਇਹ ਲਉਂਦੇ ਪਰਮਦਾ ਸਾਡੇ ਮੰਨ ਨਾਲ ਹੈ ਜਿਵੇਂ ਪੁਰਨਾ ਪਾਪ ਨੂੰ ਮੰਨਦੇ ਆ ਤਾਂ ਪਰਮ ਹੁੰਦਾ ਸਾਡੇ ਮਨਰ ਤੇ ਡਿਪੈਂਡ ਹੈ ਸਾਡਾ ਵਕਾਰ ਵਕਾਰ ਕੋਈ ਨੀ ਲਾਉਂਦਾ ਸਾਨੂੰ ਅਸੀਂ ਆਪ ਲਾਉਂਦੇ ਐਕਸੈਪਟ ਕਰਦੇ ਹਾਂ ਵਕਾਰ ਨੂੰ ਅਸੀਂ ਬਿਮਾਰੀਆਂ ਨੂੰ ਐਕਸੈਪਟ ਕਰਦੇ ਹਾਂ ਅਹੰਕਾਰ ਕ ਕਲੰਕ ਰਹਤਾ ਕਹੂੰ ਮਾਰਤੋਂ ਮਯੰਕ ਕਿਤੇ ਮਯੰਕ ਜਿਹੜਾ ਹੈਗਾ ਕਲੰਕ ਕਿਸੇ ਦਾ ਉਹਨੂੰ ਧੋ ਰਿਹਾ ਆਪਣੇ ਨੂੰ ਧੋ ਰਿਹਾ ਹੈ ਕਿਸੇ ਦੇ ਨੂੰ ਧੋ ਰਿਹਾ ਪਰਬ ਦਾ ਨਾਸ ਕਰ ਰਹੇ ਆਪਣੇ ਅੰਦਰ ਭਰਮ ਹੈ ਉਹਦਾ ਵੀ ਅਸੀਂ ਗੱਲ ਨੂੰ ਨਾਸ ਕਰ ਰਹੇ ਹਾਂ ਉਪਦੇਸ਼ ਕਰਕੇ ਦੂਸਰੇ ਦਾ ਵੀ ਨਾਸ ਕਰ ਰਹੇ ਹਾਂ ਤੇ ਆਪਣਾ ਜਿਹੜੇ ਨਾਸ ਕਰ ਲੈਂਦੇ ਨੇ ਕਲੰਕ ਫਿਰ ਉਹ ਦੂਸਰੇ ਦਾ ਕਲੰਕ ਦੂਸਰੇ ਦਾ ਭਰਮ ਨਾਸ ਕਰਦੇ ਨੇ ਜਿਵੇਂ ਗੁਰਬਾਣੀ ਸਾਡਾ ਭਰਮ ਨਾਸ ਕਰਦੀ ਹੈ ਭਗਤਾ ਨੇ ਲੋਕਾਂ ਦਾ ਭਰਮ ਨਾਸ ਕੀਤਾ ਉਹ ਬੇਅੰਗ ਜਿਹੜਾ ਹੈ ਉਹਨੂੰ ਮਾਰ ਰਹੇ ਨੇ ਅਗਿਆਨਤਾ ਦਾ ਨਾਸ ਕਰ ਰਹੇ ਨੇ ਕਹੋ ਪੂਰਨ ਪ੍ਰਜੰਕ ਕਹੋ ਪੂਰਨ ਪ੍ਰਜੰਕ ਕਿਤੇ ਪੂਰਾ ਕਰ ਲੈਣੇ ਗਿਆਨ ਗਾਰ ਪੂਰਾ ਤੱਕ ਫਲਕ ਪੂਰਨ ਕਰ ਲੈਣਾ ਪੂਰਨ ਪ੍ਰਜੰਕਲਾ ਹੁੰਦਾ ਪੂਰਨ ਕਰ ਦੇਣਾ ਕਿੰਨੂੰ ਕਹੂੰ ਸੁੱਧਤਾ ਕੀ ਸਾਰ ਹੋ ਕਹੂੰ ਸੁੱਧਤਾ ਕੀ ਸਾਰ ਹੋ ਕਿਤੇ ਸੁੱਧਤਾ ਸੁੱਧਤਾ ਹੁੰਦਾ ਸੋਜੀ ਆ ਜਾਣੀ ਸੋਜੀ ਸਭ ਕਾ ਸਦੀ ਸੋਜੀ ਆ ਜਾਣੀ ਆਤਮ ਗਿਆਨੀ ਹੋ ਜਾਣਾ ਆਤਮ ਗਿਆਨੀ ਹੋ ਜਾਣਾ ਆਤਮ ਗਿਆਨੀ ਸੋਚੀ ਜਾਣੀ ਸੁਤ ਦਾ ਕੀ ਸਾਰ ਹੋ ਕਹੂੰ ਦੇਵ ਧਰਮ ਕਹੂੰ ਸਾਧਨਾ ਕੇ ਧਰਮ ਕਹੂੰ ਦੇਵ ਧਰਮ ਤਤੇ ਦੇਵ ਧਰਮ ਤੂੰ ਦੇਵ ਧਰਮ ਤਾਂ ਜੋ ਇਹ ਹੁੰਦਾ ਵੀ ਚੰਗੇ ਕੰਮ ਕਰ ਲੈਣੇ ਜਿਹੜੇ ਕੰਮ ਦਾ ਪਤਾ ਮਾੜਾ ਚਾਹੇ ਉਹ ਮਾੜਾ ਹੋਵੇ ਨਾ ਕਈ ਵਾਰ ਮਾੜਾ ਨਹੀਂ ਹੁੰਦਾ ਉਹ ਮਾੜਾ ਸਮਝਦੇ ਹੁੰਦੇ ਨੇ ਦੇਵਤੇ ਉਹ ਨਹੀਂ ਕਰਨਾ ਜਿੰਨਾ ਕੋ ਪਤਾ ਵੁਰਾਈ ਲਾ ਉਹ ਵੁਰਾਈ ਦੋ ਵਤਿ ਰਹਿਣਾ ਪੁਨਪਾਪਲਾ ਪਤਾ ਨਹੀਂ ਹੈ ਪੁਨਪਾਪ ਨੂੰ ਨਜਬ ਨਹੀਂ ਜਾਣਾ ਜਿੰਨਾ ਜਰ ਪਤਾ ਨਹੀਂ ਯਾਰ ਪਤਾ ਲਾ ਗਿਆ ਫਿਰ ਹਟ ਜਾਣਾ ਹਾਂ ਕਹੂ ਦੇਵ ਧਰਮ ਕੋ ਸਾਧਨਾ ਕੇ ਹਰਮ ਸਾਧਨਾ ਕੇ ਹਰਮ ਕਿਤੇ ਸਾਧਨਾ ਦਾ ਕਰਮ ਹੈ ਸਾਧਨਾ ਸਾਧਨਾ ਕਰ ਰਹੇ ਹਾਂ ਦਾ ਘਰ ਹੁੰਦਾ ਵੈਸੇ ਹਰਮ ਕਰ ਲੂਗਾ ਹਰਮੁ ਕਰਤ ਜਿੱਥੇ ਇਸਰੀਆ ਬਸਤੀਆਂ ਉਹਦੀਆਂ ਹਰਮੁ ਕਰਮ ਕਾਇਮ। ਸਾਧਨਾ ਵਾਲੀ ਬੁੱਧੀ ਹੈ। ਸਾਧਨਾ ਵਾਲੀ ਮਤ ਹੈ। ਸਾਧਨਾ ਦੇ ਘਰ ਚ ਰਹਿਣਾ। ਸਾਧਨਾ ਦੀ ਹਾਜ਼ਰੀ ਚ ਰਹਿਣਾ। ਕਹੂੰ ਕੁਤ ਸਤਿ ਕੁਕਰਮ। ਕਿਤੇ ਕੁਤ ਸਤਿ ਕੁਕਰਮ ਨਾਲ ਕਿਤੇ ਬਹੁਤ ਭੈਣੇ ਕੰਮਾਂ ਚ ਲੱਗਿਆ ਹੈ। ਭੈਣੇ ਕੰਮਾਂ ਚ ਲੱਗੇ ਨੇ ਜਿਹੜੇ ਬਲੀਆਂ ਦਿੰਦੇ ਰਹੇ ਦੂਏ ਦਾ ਬੱਚੇ ਮਾਰ ਦੇਣਾ ਚਿਲੀ ਸੇ ਕੱਢਣੇ ਸਿਲੇ ਕੱਢਣੇ ਟੂਣੇ ਟੰਬਣ ਕਰਨੇ ਇਹ ਭੇੜੇ ਦਾ ਇਹ ਵੀ ਦੇਖੋ ਧਰਮ ਕਾ ਜਮੀਆ ਵੀ ਉਹ ਵੀ ਧਰਮ ਕਾ ਜਮੀਆ ਦੇ ਕੁਦਸਤ ਕੋ ਘਰ ਬਣੇ ਲਗੇ ਹੋਏ ਕਹੂੰ ਧਰਮ ਕੇ ਪ੍ਰਕਾਰ ਹੋ ਕਹੂੰ ਧਰਮ ਕੇ ਪ੍ਰਕਾਰ ਹੋ ਕਿਤੇ ਵਿਰੋਧ ਧਰਮ ਦਾ ਪ੍ਰਕਾਰ ਹੈ ਵਿਰੋਧ ਧਰਮ ਕਰਦੇ ਵਿਰੋਧ ਧਰਮ ਦੀ ਸਮਝ ਹੈ ਉਸ ਵਿਰੋਧ ਧਰਮ ਦਾ ਪ੍ਰਚਾਰ ਵਿਰੋਧ ਧਰਮ ਵੀ ਕਹੂੰ ਪੌਣ ਆਹਾਰੀ ਕਹੂੰ ਵਿੱਦਿਆ ਕੇ ਵਿਚਾਰੀ ਕਿਤੇ ਪੌਣ ਆਹਾਰੀ ਪੌਣ ਆਹਾਰੀ ਵੀ ਲੋਕ ਸੀ ਕਿਤੇ ਵਿੱਦਿਆ ਕੇ ਵਿਚਾਰੀ ਕਿਉਂ ਵਿੱਦਿਆ ਕੇ ਵਿਚਾਰੀ ਆ ਗਿਆ ਨੁਕਸਾਨ ਬੜਾ ਕਰਦੀ ਹੈ ਅਸਲ 'ਚ ਵਿੱਦਿਆ ਬਿਨਾ ਵਿਚਾਰੀ ਹੋਈ ਵਿੱਦਿਆ ਅਵਿਦਿਆ ਹੁੰਦੀ ਹੈ ਜਿਹੜੀ ਬਿਨਾ ਵਿਚਾਰੀ ਹੋਈ ਵਿੱਦਿਆ ਨਾ ਉਹ ਅਵਿਦਿਆ ਹੈ ਉਹ ਪਿਛਲੇ ਜਿਹੜੇ ਪੜੇ ਦਾ ਬਗਨ ਵਾਲੇ ਨੇ ਉਹ ਸਾੜੇ ਐਸੇ ਕਰਕੇ ਨੇ ਵਿੱਦਿਆ ਵਿਚਾਰੀ ਹੋਈ ਨਹੀਂ ਉਹਨਾਂ ਦੀ ਉਲਟੇ ਪਾਸੇ ਜਿਹੜੇ ਲੱਗੇ ਨੇ ਉਹਨਾਂ ਵਿੱਦਿਆ ਵਿਚਾਰੀ ਨਹੀਂ ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ ਹੈ ਵਿੱਦਿਆ ਬਹੁਤ ਨੁਕਸਾਨ ਵਾਲੀ ਚੀਜ਼ ਹੈ ਸਾਰੇ ਵਿੱਦਿਆ ਨੁਕਸਾਨ ਵਾਲੀ ਚੀਜ਼ ਹੈ ਜੋ ਸਾਨੂੰ ਪੜਾਤਾ ਸੰਸਾਰ schmੀਆਂ ਮਾਂ ਐ ਪਿਓ ਐ ਐ ਬੋ ਐ ਤੇਰੇ ਮੇਰੇ ਮਰਨ ਜਮ ਇਹ ਸਭ ਉਲਟਾ ਇਹਦੀ ਵਿਚਾਰ ਕਰਦੀ ਇਹ ਰੱਦ ਕਰਦੀ ਹੈ ਬਾਣੀ ਆਤਮਾ ਤੋਂ ਆਤਮਾ ਨਹੀਂ ਪੈਦਾ ਹੋ ਸਕਦੀ ਇਸ ਕਰਕੇ ਵਾਹ ਪੇ ਉਹ ਆਤਮਾ ਨਹੀਂ ਹੋ ਸਕਦਾ ਬੋਲਦੀ ਆਤਮਾ ਮੇਰਾ ਪਿਓ ਵਿਚਾਰ ਕਰੀਏ ਤਾਂ ਇਥੋਂ ਬਦਲਣਾ ਹੋਊਗਾ ਉਹ ਕਹਿੰਦਾ ਵਾਸੋਂ ਵਾਸੁੱਪ ਜਾ ਤੇਰਾ ਪਿਓ ਕੌਣ ਆਪਣਾ ਰੱਬ ਤੂੰ ਤਾਂ ਜੇਤਨ ਜੇਦਨ ਹੀ ਪੈਦਾ ਕਰ ਸਕਦਾ ਤੂੰ ਤੇਰੇ ਅੰਦਲਾ ਤੇਰਾ ਮੂੜੇ ਤੇਨੂੰ ਪੈਦਾ ਕੀਤਾ ਇਸ ਕਰਕੇ ਆਪ ਪਿਤਾ ਆਪ ਮਾਏ ਆਪ ਹੈ ਆਪਣਾ ਪਿਤਾ ਹੈ ਆਪ ਹੈ ਆਪਣੀ ਮਾਏ ਹਰ ਜਿਓ ਪਿਤਾ ਹਰ ਮਾਤਾ ਹਾਂ ਅੰਦਲਾ ਜਿਹੜਾ ਇਹਦਾ ਮੂੜ ਹੈ ਉਹੀ ਇਹਦਾ ਪਿਤਾ ਉਹੀ ਇਹਦੀ ਮੂੜ ਆਪ ਪਿਤਾ ਮਾਏ ਹੋਰ ਗੱਲਾਂ ਹਰ ਜਿਓ ਹੋਰ ਗੱਲਾਂ ਉਹ ਤੇ ਭਲੇਖਾ ਬੈਜੂਗਾ ਜਿਹੜੀਓ ਗਾਂ ਹੈ ਹਰ ਸਭ ਦਾ ਮਾਏ ਉਹ ਗੱਲ ਹੋਰ ਹੈ ਤੇਰਾ ਮੂਲੇ ਤੇਰਾ ਬਤਾ ਹਰ ਕਿਸੇ ਦਾ ਮੂਲੇ ਹਰ ਕਿਸੇ ਦਾ ਬਤਾ ਇਹ ਆਪੇ ਬਤਾ ਆਪੇ ਮਾਇਆ ਇੱਕਾ ਜਿਹੜਾ ਇੱਕ ਆਪੇ ਤਾਂ ਮਾਇਆ ਆਪਣਾ ਆਪਣਾ ਜੀਵ ਨੇ ਆਪਣਾ ਬਣਾ ਆਪੇ ਲਕਿਤਾ ਆਪਣਾ ਮਨ ਆਪੇ ਪੈ ਜਾਣਾ ਪੈਂਦਾ ਉਹ ਹੀ ਹੈ ਬਨਜੜਾ ਪੈਦਾ ਹੋਇਆ ਉਹ ਕੀ ਹੈ ਉਹ ਅਰਾਧ ਕਰਦਾ ਨਾ ਕੁਪਾਂਤੀ ਜਨੂ ਹੋ ਗਿਆ ਮਨ ਪੈਦਾ ਕਰਨਾ ਕੁਪੰਤੀ ਜਨਮ ਹੁੰਦਾ ਸੁਪਨਤੀ ਜਨਮ ਕਿਵੇਂ ਹੁੰਦਾ ਹੈ ਚਿੱਤ ਦਾ ਜਨਮ ਲੈਣਾ ਮਨ ਉਹਦੇ ਵਿੱਚ ਲੀਨ ਹੋਵੇ ਚਿੱਤ ਜਨਮ ਲਵੇ ਮਨជា ਜਨਮ ਲੈਣਾ ਕਲਪਨਾ ਪੈਦਾ ਹੁੰਦੀ ਹੈ ਤੇ ਜਕਲਪਨਾ ਪੈਦਾ ਹੁੰਦੀ ਹੈ ਮਨ ਭੌਂਦਾ ਜਿਹੜਾ ਹੁਕਮ ਉਹ ਪੈਦਾ ਹੁੰਦਾ ਹੁਕਮ ਕੀ ਮਨ ਭੌਂਦੇ ਝੂਠਾ ਹੁਕਮ ਪੈਦਾ ਹੁੰਦਾ ਸੱਚੇ ਹੁਕਮ ਨਾਲ ਵਿਰੋਧ ਹੁੰਦਾ ਇੱਕ ਉਲਟੀ ਜਨਮ ਜੇ ਇਹ ਜਨਮ ਨਹੀਂ ਹੁੰਦਾ ਤਾਂ ਵੀ ਉਹ ਦੂਜਾ ਜਨਮ ਹੁੰਦਾ ਹੁਕਮ ਹੁਕਮ ਦੇ ਵਿੱਚ ਸਮਾਉਂਦਾ ਫਿਰ ਜਨਮ ਲੈ ਕੇ ਉਹਦੇ ਵਿੱਚ ਸਮਾ ਜਾਂਦਾ ਉਹ ਕਮਾਈ ਅੰਦਰੋਂ ਹੀ ਪ੍ਰਗਟ ਹੁੰਦਾ ਆਹ ਕਹ ਲੋ ਇਹ ਕੋਈ ਤਾਂ ਉਕਪੇ ਹੁਕਮ ਹੋ ਗਿਆ ਹੁਕਮ ਰੂਪ ਹੋ ਕੇ ਹੋ ਇਹ ਉਸ ਉਲਟੀ ਜਨਮ ਇਕ ਕੁਪੰਤੀ ਜਨਮ ਵਿਦਿਆ ਵਿਚਾਰੇ ਦੇ ਬਿਨਾ ਕੁਪੰਤੀ ਜਨਮ ਹੋਊਗਾ ਵਿਦਿਆ ਵਿਚਾਰੇ ਦੇ ਬਿਨਾ ਕੁਪੰਤੀ ਜਨਮ ਇਹ ਕੁਪੰਤੀ ਜਨਮ ਹੋਇਆ ਹੋਇਆ ਜੇ ਵਿਦਿਆ ਪੜ ਲਈ ਫਿਰ ਸੁਪਨ ਪਿੱਛੇ ਨੂੰ ਆਏ ਨਹੀਂ ਸਕਦਾ ਕਹਾਂ ਹੀ ਗਾ ਜਾਊਗਾ ਅਗਾਂਹ ਤਾਂ ਬਦੂ ਗਿਆ ਇਹਨੂੰ ਇਸ ਕਰਕੇ ਇਹ ਵਿਦਵਾਨ ਨੇ ਉਹ ਕਦੇ ਵੀ ਸੱਚ ਅਰੇ ਰਾਹ ਨਹੀਂ ਜਾ ਸਕਦਾ ਜਿੰਨਾ ਜਰ ਵਿਦਿਆ ਵਿਚਾਰ ਨਹੀਂ ਜੀ ਜਦ ਵਿਦਵਾਨ ਵਿਦਿਆ ਵਿਚਾਰਦਾ ਫਿਰ ਵਿਦਵਾਨ ਨਹੀਂ ਰਹਿੰਦਾ ਸੰਤ ਜਦ ਭਗਤੀ ਕਰਦਾ ਫਿਰ ਸੰਤ ਨਹੀਂ ਰਹਿੰਦਾ ਫਿਰ ਭਗਤ ਬਣ ਜਾਂਦਾ ਇਸ ਕਰਕੇ ਗੁਰਬਾਣੀ ਸਾਰੀ ਭਗਤਾਂ ਦੇ ਚੱਲੇ ਘਟ ਹੈ ਸੰਤ ਨਹੀਂ ਕਹਾਇ ਉਹ ਲੰਗਤ ਕਹਾਇ ਨੇ ਇਹ ਵੀ ਜਦ ਬਦਵਾਨ ਖੋਜੀ ਹੋ ਜਾਂਦਾ ਫਿਰ ਜਦ ਵਿਦਿਆ ਵਿਚਾਰਦਾ ਖੋਜੀ ਹੋ ਕੇ ਵਿਚਾਰਦਾ ਉਹ ਕਹਿੰਦਾ ਵੀ ਇਹ ਤਾਂ ਸਾਰਾ ਗਲਤ ਹੈ ਬੰਦਾ ਦਾ ਕੋਈ ਹੈ ਹੀ ਨਹੀਂ ਮਾਪੇ ਤਾਂ ਕੋਈ ਹੁੰਦਾ ਹੀ ਨਹੀਂ ਪੂਰ ਪਛਮ ਦਾ ਕੋਈ ਹੁੰਦਾ ਹੀ ਨਹੀਂ ਉਹ ਸਾਰੀ ਵਿਦਿਆ ਜਿਹੜੀ ਮਨਮੁਖਾਂ ਦੀ ਵਿਦਿਆ ਨਾ ਸੰਸਾਰੀ ਸਾਰੀ ਰੱਦ ਕਰ ਦਿੰਦੇ ਇਹ ਨੂੰ ਤਾਂ ਤਾਂ ਤਾਂ ਹੈ ਹੀ ਨਹੀਂ ਗਿਆਨੀਆਂ ਕਹਾ ਤਾਂ ਨਾਮ ਹੈ ਤਾਂ ਹੀ ਕਹਿਣਾ ਵਿਦਿਆ ਵਿਚਾਰੀ ਹੋਈ ਤੇ ਕਹਿਣਾ ਗੰਡੀਆਂ ਦਾ ਤਾਂ ਨਾਮ ਹੈ ਕੰਗਾਲ ਕੰਗਾਲ ਹੀ ਰਹਿਣਾ ਕੰਗਾਲ ਵਜਿਦ ਕੋ ਨਾਮ ਨਹੀਂ ਹੈ ਜਿਹੜਾ ਸੁਸਾਈ ਜਿਹਨੂੰ ਅਸੀਂ ਅਮੀਰ ਕਹਿੰਦੇ ਹਾਂ ਉਹ ਨਹੀਂ ਹੁੰਦਾ ਉਹ ਤਾਂ ਕੰਗਾਲ ਹੈ ਜਿਹਦੇ ਨੱਕ ਨਾ ਹੋਵੇ ਆਹ ਵਹਲ ਉਹ ਨਕਟਾ ਨਹੀਂ ਹੁੰਦਾ ਨਾਮ ਬਿਨਾਂ ਸਾਰੇ ਨਕਤੇ ਹੁੰਦੇ ਨੇ ਜਿਹਦੇ ਵਹਲੀਆਂ ਖਾਨਾ ਹੁਣ ਉਹਨਾਂ ਨਹੀਂ ਹੁੰਦਾ ਤੇ ਇਹ ਨਾ ਕਿ ਜੇ ਮੁਖ ਲੋਣਨਾ ਹੈ ਉਦੋਂ ਸਹੀ ਨਾਨਕਾ ਜੋ ਖਸਮਾ ਕੋ ਸਾਰੀ ਭਾਸ਼ਾ ਬਦਲਦੀ ਇਹ ਵਿਦਿਆ ਕੀ ਵਿਚਾਰ ਹੈ ਜੇ ਵਿਦਿਆ ਵਿਚਾਰੇ ਤੇ ਬਿਨਾ ਅਰਬ ਗਿਆਨ ਦਾ ਸਮਝ ਨਹੀਂ ਆ ਸਕਦੀ ਇਹੀ ਕਾਰ ਲੈਣਾ ਵਿਦਵਾਨਾਂ ਨੂੰ ਖੱਜਲ ਹੁੰਦੇ ਨੇ ਖੱਜਲ ਚਾਰ ਅੱਖਰ ਪੜ ਲੈ ਕਦੂ ਨਾ ਇਤਿਹਾਸ ਜਿਆਦਾ ਨਾ ਉਹ ਇਤਹਾਸ ਉਹ ਦੌਰ ਕੁਛ ਨਹੀਂ ਹੁੰਦੀ ਆ ਨਹੀਂ ਚੱਲੂਦੀ ਇਹਨਾਂ ਕੋਲ ਬਿਲਕੁਲ ਵੀ ਇਹ ਤਾਂ ਗੱਲੇ ਨਹੀਂ ਨੂੰ ਜੇ ਹੋਵੇ ਫਿਰ ਤਾਂ ਇਹਨੂੰ ਦੀ ਉਸ ਬਤ ਮਾਰੀ ਜਾਂਦੀ ਹੈ ਫਿਰ ਤਾਂ ਇਹਦੀ ਖੋਜ ਨੂੰ ਤੁਰ ਪੈਣੇ ਦਾ ਬਾਜ਼ਾਰ ਚ ਨਹੀਂ ਜਾਂਦੇ ਇਹਦਾ ਬਹਾਲ ਦੂਏ ਅੱਖਾਂ ਨਾਲ ਵਿਸ਼ਵਾਸ ਕਰ ਜਿਓ ਨੂੰ ਦੀ ਵਾਸਤੇ ਸੱਚ ਹੈ ਕੁਰਬਾਨੀ ਕਰਨੇ ਜੋ ਅੱਖਾਂ ਨੂੰ ਦੀ ਦੇ ਸਾਰੇ ਝੂਟ ਹੈ ਜੋ ਖਾਨੂੰ ਦੀ ਅੱਖਰ ਨੇ ਸਾਰੇ ਦਿਸਤਬਾਨ ਅੱਖਰ ਹੈ ਜੇ ਇਹ ਅੱਖਰ ਨੂੰ ਸ਼ਬਦ ਕਹੀ ਜਾਂਦੇ ਨੇ ਸ਼ਬਦ ਗੁਰੂ ਆ ਵਿਦਵਾਨੇ ਕਹਿੰਦੇ ਨੇ ਨਾ ਜਿਹੜੇ ਅੱਖਰ ਨੂੰ ਸ਼ਬਦ ਅੱਖਰ ਨੂੰ ਦੇਖਣ ਵਾਲੀ ਚੀਜ਼ ਨੂੰ ਸ਼ਬਦ ਕਹਿੰਦੇ ਨੇ ਉਹ ਵਿਦਵਾਨ ਹੋ ਸਕਦਾ ਨਾ ਗੁਰਮੁਖ ਨਹੀਂ ਹੋ ਸਕਦੇ ਵਿਚਾਰੀ ਨਾ ਵਿਚਾਰੀ ਸ਼ਬਦ ਦਾ ਗੰਨਾ ਦਾ ਵਿਸ਼ਾਖਾ ਦਾ ਹੈਗੀ ਨਹੀਂ ਜੋ ਦੀਦਾ ਉਹ ਦਾ ਅੱਖਰ ਨੇ ਗੁਰਬਾਣੀ ਬਿਗੈ ਨੇ ਇਹਨਾਂ ਖਰਾਬ ਹੈ ਕੋਈ ਗੁਰਮੁਖ ਖੋਜੇ ਤਾਂ ਸਰ ਲਿਖਣ ਹੋਏ का थान है, ਪਰਮੇਸ਼ਰ नहीं ਥਾਨ ਹੈ ਪਰਮੇਸ਼ਰ ਨਹੀਂ ਹੈ ਉਹਦੀ ਜਗ੍ਹਾ ਹੈ ਪਰ ਇਹਦਾ ਅਖਰਨ ਹੈ ਇਹ ਸ਼ਬਦ ਦਾ ਗੁਰਬਾਣੀ ਦਾ ਅਖਰੀ ਰੂਪ ਹੈ ਬੋਲੇ ਤੇ ਗੁਰਬਾਣੀ ਬਣਦੀ ਹੈ ਉਹ ਜਿਹੜੀ ਬਾਣੀ ਆ ਉਹ ਇਹ ਤੋਂ ਕਹਾਂ ਹੈ ਅਸੀਂ ਉਹਦੇ ਨਾਲ ਜੁੜਨਾ ਜਿਹਦੇ ਨਾਲ ਗੁਰਬਾਣੀ ਜੋੜਦੀ ਹੈ ਜੇ ਗੁਰਬਾਣੀ ਨਾਲ ਜੁੜ ਜਾਗੇ ਤਾਂ ਇੱਥੇ ਹੀ ਰਹਿ ਜਾਗੇ ਮੱਥੇ ਟੇਕਦੇ ਹੀ ਰਹਿ ਜਾਗੇ ਫਿਰ ਬਟ ਮੱਥੇ ਟੇਕਦੇ ਆ ਪਾਠ ਕਰਦੇ ਪਾਠ ਕਰ ਪੜਿਓ ਜਿਵੇਂ ਉਹ ਕਰਦੇ ਸੀ ਪਾਠ ਪੜਿਓ ਔਰ ਮੈਨੂੰ ਵਿਚਾਰਿਓ ਜੇ ਜਿੱਥੇ ਗੁਰਬਾਣੀ ਕਹਿੰਦੀ ਹੈ ਉਹਦੇ ਨਾਲ ਜੁੜਾਂਗੇ ਫਿਰ ਗੱਲੋ ਗੁਰਬਾਣੀ ਕੁਝ ਕਹਿ ਰਹੀ ਹੈ ਜੁੜਨ ਨੂੰ ਉੱਥੇ ਜੁੜਨਾ ਗੁਰਬਾਣੀ ਨਾਲ ਹੀ ਜੁੜਨਾ ਗੁਰਬਾਣੀ ਨੂੰ ਸਮਝ ਕੇ ਜਿੱਥੇ ਜੋੜਦੀ ਹੈ ਉੱਥੇ ਜੁੜ ਲ ਗੁਰਬਾਣੀ ਨਾਲ ਜੁੜਨ ਦੀ ਵਿਜਾ ਗੁਰਬਾਣੀ ਨੂੰ ਬੋਲਣਾ ਕਹੋ ਤੁਸੀਂ ਇਹ ਕਹਿੰਦੇ ਗੁਰਬਾਣੀ ਨਾਲ ਜੁੜੋ ਗੁਰੂ ਨਾਲ ਜੁੜੋ ਇਹ ਕਿਉਂ ਕਹਿੰਦੇ ਨੇ ਇਹਦਾ ਗੋਲ ਕਤਰ ਕਹਿੰਦੇ ਵੀ ਹੋਰ ਕਿੱਥੇ ਜਾਓ ਇੱਥੇ ਮੱਥਾ ਟੇਕਾ ਕਰੋ ਆ ਕੇ ਵੋਟਾਂ ਸਾਡੀਆਂ ਚੜਾਵਾ ਸਾਡਾ ਕਲੀਅਰ ਨਹੀਂ ਕਰਦੇ ਗੱਲ ਕਲੀਅਰ ਕਿਉਂ ਨਹੀਂ ਕਰਦੇ ਗੱਲ ਇਹ ਕਿਉਂ ਨਹੀਂ ਕਹਿੰਦੇ ਵੀ ਜਿੱਥੇ ਗੁਰਬਾਣੀ ਜੋੜਦੀ ਹੈ ਉੱਥੇ ਜੁੜੋ ਗੁਰਬਾਣੀ ਦਾ ਇੱਕ ਸ਼ਬਦ ਹੈ ਉਪਦੇਸ਼ ਹੈ ਉਪਦੇਸ਼ ਕੁਝ ਕਹਿ ਰਿਹਾ ਜੋ ਕਹਿ ਰਿਹਾ ਉਹ ਕਰੋ ਉੱਥੇ ਜੁੜੋ ਜਿੱਥੇ ਕਹਿ ਰਹੀ ਹੈ ਇਹ ਨਹੀਂ ਕਹਿੰਦੇ ਗਾਇਤਿਆਂ ਨੂੰ ਸਮਝ ਨਹੀਂ ਸਮਝ ਨਹੀਂ ਹੈ ਇਹ ਉਹਨਾਂ ਦਾ ਭਾਵਨਾ ਕਹਿਣ ਦੀ ਇਹੀ ਹੈ ਪਰ ਕੈਨੀ ਬਾਾਰ ਹੈ ਗੱਲ ਭਾਵਨਾ ਤਾਂ ਇਹੀ ਹੋਵੇ ਕਹਿਣ ਦੀ ਪਰ ਉਲਟ ਕਹੀ ਜਾਂਦੇ ਹੁਣ ਇਹ ਵੀ ਹੋ ਸਕਦਾ ਪਤਾ ਹੀ ਨਹੀਂ ਪਤਾ ਹੀ ਹੈ ਵੀ ਕਹਿਣਾ ਕੀ ਹੈ ਅਸਲ ਉੱਥੇ ਜੋੜਨਾ ਨਾ ਜਿਹੜਾ ਨਾ ਕੁਰਬਾਨੀ ਲਿਖੀ ਉਹਨਾਂ ਨਾਲ ਜੋੜਨ ਦੀ ਲੋੜ ਹੈ ਨਾ ਕਿਸੇ ਸਤਾਲ ਨਾਲ ਜੋੜਨ ਦੀ ਲੋੜ ਹੈ ਜੋ ਕੁਰਬਾਨੀ ਕਹਿਦੀ ਹੈ ਗੁਰ ਕਹਿਆ ਸਕਾਰ ਕਮਾਵੋ ਕਮਾਵੋ ਗੁਰਬਾਣੀ ਦਾ ਕੁਝ ਕਹਿ ਰਹੀ ਹੈ ਉਹ ਕਾਰਖਬੋੜੀ ਹੈ ਗੁਰਬਾਣੀ ਕਹੇ ਸੇਵਕ ਜਾਣਾ ਹਾਂ ਗੁਰਬਾਣੀ ਕਹੇ ਸੇਵਕ ਜਾਣਾ ਮੰਨਣਾ ਇਹਦੀ ਗੱਲ ਮੰਨਣੀ ਹੈ ਜੋ ਕਹੇ ਮੰਨਣਾ ਚਲੋ ਉਹ ਜੁੜਨਾ ਵੀ ਕਹ ਲੀਏ ਕੋਈ ਗੱਲ ਨਹੀਂ ਜੇ ਗੱਲ ਨੂੰ ਅਸੀਂ ਗੁਰਬਾਣੀ ਮੰਨਣ ਨੂੰ ਜੁੜਨਾ ਕਹ ਲੀਏ ਫਿਰ ਕੋਈ ਗੱਲ ਨਹੀਂ ਪਰ ਜੁੜਨਾ ਦਾ ਮਤਲਬ ਇਹ ਨਾ ਲੈ ਲਿਓ ਵੀ ਇਹਦੇ ਨਾਲ ਪੱਥਰ ਟੇਕ ਕੇ ਕਰ ਲੂਆ ਜਣ ਇਹਦੇ ਬਿਨਾ ਹੋਰ ਕਿਸੇ ਨੂੰ ਮੰਨਣਾ ਹੀ ਨਹੀਂ ਵੀ ਬੜੀ ਮਸਾਲ ਨਹੀਂ ਮੱਥਾ ਟਿਕਣਾ ਇੱਥੇ ਟਿਕਣਾ ਜ਼ਰਦਾਰੀ ਮੱਥਾ ਇਹ ਆਰਥਰੀਟਿਸ ਹੈ ਇਹ ਨਹੀਂ ਆਫ ਇਹ ਲਾਂਗ ਰਹਿ ਫਿਰ ਤਾਂ ਬૂર્ਤੀ ਪੂਜਾ दीजिएगा ਇਹ ਅਜੂ ਹੈ ਫਿਰ ਤਾਂ ਜਾਏਗੀ ਬૂર્ਤੀ ਪੂਜਾ ਹੋ ਜੀਏ ਫਿਰ ਇੱਥੇ ਰਹਿ ਜੂਗਾ ਲੈ ਗੱਲ ਸਮਝਣ ਵਾਲੇ ਨੂੰ ਪੂਰੀ ਸਮਝਾਈਏ ਨਾ ਜੇ ਉਹ ਪ੍ਰੇਖੇ ਚ ਲੈਣ ਆਉਂ ਜਾਂ ਤੁਹਾਨੂੰ ਕੀ ਪਤਾ ਇਹ ਬੱਚੇ ਨੂੰ ਕਹਿ ਦਈਏ ਇਹ ਨੂੰ ਬੰਨਣਾ ਇਹ ਉਹ ਇਹ ਮੱਥਾ ਟਿਕਣ ਲੱਗ ਜੂ ਉਜਾ ਇਹ ਨਹੀਂ ਭਾਈ ਮੱਥਾ ਟਕਣਾ ਇੱਥੇ ਟਕਣਾ। ਇਹ ਡਿਓ ਗੱਲ ਕਾਇਤੀ ਰੋ। ਗਾਹ ਦਾ ਗਹਿਣੀ ਨੀ ਕੋਈ। ਉਰੂ ਕੇ ਪਤਾ ਲੱਗੂ ਕਰਨਾ ਕੀ। ਗੁਰਬਾਣੀ ਕਹੇ ਸੇਵ ਜਾਣਾ। ਮੰਨਣਾ। ਜੋ ਕਹਿ ਰਹੀ ਹੈ ਗੁਰਬਾਣੀ ਬੰਲੜੀ ਹੈ। ਗੱਲ। ਜੋ ਬੰਲੜੀ ਨਹੀਂ ਫਿਰ ਸਿੱਖਣੀ। ਗੁਰੂ ਦੀ ਗੱਲ ਨਹੀਂ ਬੰਲੜੀ ਤਾਂ ਸਿੱਕਾ ਦਾ ਰਹੇਗਾ। ਸਿੱਖੀ ਬੰਲਣ ਗਿਆ। ਨਾ ਬੰਲ ਜ ਕੋਈ ਸਿੱਖੀ ਨਹੀਂ। ਖਾਲੀ ਮੱਥਾ ਟੇਕਣਾ ਕੋਈ ਸਿੱਖੀ ਨਹੀਂ। ਖਾਲੀ ਪਹੌੜਾਂ ਨਾਲ ਕੋਈ ਸਿੱਖੀ ਨਹੀਂ ਖਾਲੀ ਬਾਣਾ ਪਾਉਣ ਨਾਲ ਕੋਈ ਸਿੱਖੀ ਨਹੀਂ ਸਿੱਖੀ ਦਾ ਸਿੱਖਿਆ ਹੈ ਸਿੱਖੀ ਸਿੱਖਿਆ ਹੈ ਸਿੱਖੀ ਸਿੱਖਿਆ ਗੁਰ ਵਿਚਾਰ ਗੁਰੂ ਦੇ ਵਿਚਾਰਤਾ ਰਹੇ ਸਿੱਖੀ ਤਾਂ ਵਿਚਾਰਤਾ ਰਹੇ ਉਹ ਵਿਚਾਰਤਾ ਰ ਅਡਾਪਟ ਕਰ ਲਈਏ ਉਹ ਰਸਤੇ ਮਾਰਗ ਤੇ ਚੱਲਣਾ ਇਹਨਾਂ ਨੂੰ ਸਿੱਖੀ ਹੈ ਮਾਰਗ ਪੰਥ ਹੈ ਆਦਮੀ ਦਾ ਕਠਪੰਥਰੀ ਹੁੰਦਾ ਇੱਕ ਆਦਮੀ ਨੇ ਕਠਰੂ ਪੰਥ ਕਰਨ ਲੱਗੇ ਦਮੇ ਕਬ ਉਹ ਪੰਥੀ ਨੇ ਜਿਹੜੇ ਦੌੜ ਰਹੇ ਨੇ ਰਸਤੇ ਪੰਥਣੀਓਂ ਦਾ ਪੰਥੀ ਨੂੰ ਪੰਥ ਕਰਨ ਲੱਗੇ ਬਿਤਾ ਇਹ ਨਾ ਵਿਚਾਰੀ ਮਹਾ ਮੂਰਖ ਦੇ ਜਿਹੜੇ ਪੰਥ ਕਰਦੇ ਨੇ ਆਦਮੀ ਨੂੰ ਕੋਣ ਨੂੰ ਸਮਝੇ ਕੋਈ ਨਹੀਂ ਗੁਰਬਾਣੀ ਦੀ ਆਦਮੀ ਦਾ ਕਠ ਸਦਤ ਕਹਿ ਸਕਦੇ ਤੁਸੀਂ ਫੰਕ ਤਾਂ ਕੈਸਾ ਕਰਦੇ ਪੰਥ ਨਹੀਂ ਕੈਸਾ ਕਰਦੇ ਪੰਥ ਵਿਚਾਰਧਾਰਾ ਦਾ ਨਾਮ ਹੁੰਦਾ ਪੰਥ ਵਿਚਾਰਧਾਰਾ ਪੰਥ ਰਸਤਾ ਹੈ ਮਾਰਗ ਹੈ ਜਿਹਦੇ ਤੇ ਚੱਲਣਾ ਪੰਥ ਨੂੰ ਖਤਰਾ ਚੱਲਣ ਵਾਲੇ ਜਿਹੜੇ ਨੇ ਪੰਖੀ ਨੇ ਖਤਰਾ ਕਿਵੇਂ ਹੋ ਸਕਦਾ ਪੰਥ ਖਤਰਾ ਹੋ ਸਕਦਾ ਪੰਥ ਨੂੰ ਦਿਸ਼ਾ ਦਿੱਤ ਕਰ ਸਕਦੇ ਹਾਂ ਅਸੀਂ ਜਿਵੇਂ ਕੀਤਾ ਹੋਇਆ ਸਾਡੇ ਖਤਰਾ ਤਾਂ ਹੈਗਾ ਖਤਰਾ ਹੋਊਗੀ ਇਤੋਂ ਜ਼ਿਆਦਾ ਖਤਰਾ ਕੀ ਹੋਊ ਪੰਥ ਬਾਰੇ ਤੈਨੂੰ ਗਿਆਨ ਨਹੀਂ ਦੀ। ਜੇ ਪੰਥ ਹੈ ਤੁਹਾਡੇ ਕੋਲ ਤਾਂ ਖਤਰਾ ਉਹਨੂੰ ਕੀ ਹੋਣਾ। ਖਤਰਾ ਜਾਂਦਾ ਹੋਊ ਜਾਂ ਪੰਥ ਹੋਵੇ। ਸਮਝੇ ਨਹੀਂ ਇਹ ਕੁਰਬਾਨੀ ਦੀ ਖਤਰਾ ਘੜੀ ਗੱਲ ਦਾ। ਖਤਰਾ ਤਾਂ ਖਤਮ ਹੋ ਖਤਰਾ ਤਾਂ ਪਹਿਲਾਂ ਸੀਗਾ। ਖਤਰਾ ਜਾਂ ਸੀ ਜਾਂ 700 ਰੁਪਏ ਦੇ ਵਿੱਚ ਕਿ ਕਰਦੇ टोटल ਵੀ ਕਿ ਜਿਹੜੇ ਜਾਣਦੇ ਸੀ ਉਹਨਾਂ ਦੇ ਮੁੱਲ ਪਏ ਸੀ 80 ਰੁਪਏ ਟੋਟਲ ਮਿਲਦੇ ਸੀ 5 ਰੁਪਏ 10 ਰੁਪਏ ਮਿਲਦੇ ਸੀ ਉਹਦੋਂ ਖਤਰਾ ਸੀ ਖਤਰਾ ਉਹ ਖਤਮ ਹੋ ਗਿਆ ਸਮਾਪਤ ਕਰਤੀ ਸੀ ਉਹਨਾਂ ਨਾਲ ਉਹ ਤਾਂ ਉਹਦਾ ਹੀ ਖਤਮ ਹੋ ਬਾਕੀ ਦਾ ਜ਼ਮੀਨ ਤੇ ਕਬਜ਼ੇ ਨੇ ਤਾਰਨ ਓਮ ਪ੍ਰਾਤਨ ਵੈਰਾ ਤੇ ਇਸ ਕਾ ਰੂਹ ਜਗਤ ਕਰਕੇ ਰ ਬਾਕੀ ਦਾ ਆ ਪੰਥ ਹੈ ਇਹ ਸਾਖਤਾਨਾ ਪੰਥ ਇਹ ਇਹ ਸਾਖਤਾਨਾ ਪੰਥ ਗੁਰਮਕਾੜਾ ਪੰਤਰੀ ਹੈ ਇਹ ਸਾਖਤਾਨਾ ਹੈ ਇਸ ਕਰਕੇ ਦੂਸਰੇ ਪੰਥ ਦੀਆਂ ਨੂੰ ਲੋੜੇ ਨਹੀਂ ਗੁਰਬਾਣੀ ਦੀ ਲੋੜੇ ਨਹੀਂ ਉਹਨਾਂ ਦਾ ਤਾਂ ਵੋਟਾਂ ਨੇ ਵੋਟਾਂ ਜਿਹੜਾ ਹੈ ਅਗੇ ਤਲਵਾਰਾਂ ਦੇ ਨਾਲ ਹੁੰਦਾ ਸੀ ਰਾਜ ਮਿਲਦਾ ਪੜਦਾ ਉਹ ਬੋਟਾ ਨਾ ਬਲਟਾ ਇਹ ਤਾਂ ਕੈਸਾ ਹੀ ਨਾ ਬਲਟਾ ਬੂਥ ਕੈਪਚਰ ਕਰਕੇ ਕਬਜ਼ਾ ਕਰ ਲੋ ਪੈਸੇ ਦੇ ਕੇ ਸ਼ਰਾਬ ਦੇ ਕੇ ਜੋ ਵੀ ਹੈ ਜੋ ਕਰਦੇ ਨੇ ਉਹ ਆਪਣੇ ਸਾਰੇ ਹਰਮੇ ਵਰਤੇ ਪਹਿਲਾਂ ਵਰਤੇ ਇਹ ਰਸਤਾ ਹੋਰ ਹੈ ਗੁਰਬਾਣੀ ਨਾਲ ਕੋਈ ਸਮਝ ਨਹੀਂ ਸੰਸਾਰੀ ਗੱਲ ਹੈ ਤਾਂ ਇਹ ਹੰਕਾਰੀਆਂ ਵਾਲਾ ਰਸਤਾ ਪੰਥ ਨਾਲ ਕੋਈ ਸਮਝ ਨਹੀਂ ਇਸ ਗੱਲ ਦਾ ਹਾਂਜੀ ਕਹੂੰ ਜੋਗੀ ਜਤੀ ਬ੍ਰਹਮਚਾਰੀ ਕਹੂੰ ਜੋਗੀ ਜਤੀ ਬ੍ਰਹਮਚਾਰੀ ਜੋਗੀ ਜਤੀ ਤਾਂ ਇਕੱਠਾ ਹੁੰਦਾ ਹੈ ਬ੍ਰਹਮਚਾਰੀ ਹਟਦਾ ਹੈ ਜਾਂ ਤਾਂ ਹੋਰ ਚੀਜ਼ ਹੈ ਬ੍ਰਹਮਚਾਰਿਆ ਹੋਰ ਚੀਜ਼ ਹੈ ਜੋਗੀ ਜਤੀ ਹੈ ਬ੍ਰਹਮਚਾਰੀ ਹੋਰ ਗੱਲ ਬ੍ਰਹਮਚਾਰਿਆ ਹੋਰ ਗੱਲ ਹੁੰਦੀ ਇਹਦੇ ਵਿੱਚ ਬਹੁਤ ਲੰਬਾ ਫਰਕ ਹੈ ਉਹਨਾਂ ਦਾ ਕਾਹਿਆਂ ਡਾਟਣਾ ਹੋਇਆ ਹੈ ਆ ਡਾਟ ਨਾ ਤਹਾਇਆ ਕਿਉਂਕਿ ਬ੍ਰਮਚਾਰੀ ਕਿਸੇ ਹੱਦ ਤੱਕ ਬ੍ਰਮਚਾਰੀ ਰਹਿੰਦੇ ਜਦ ਤੀ ਸਾਰੀ ਜ਼ਿੰਦਗੀ ਵਾਸਤੇ ਰਹਿੰਦੇ ਬ੍ਰਮਚਾਰੀ ਇਹਦੇ ਇੱਕ ਹੱਦ ਹੈ ਨਾ ਉਹਦੇ ਬਾਦ ਉਹ ਕ੍ਰਿਸ਼ਤੀ ਬਣਦਾ ਉਹ ਤਾਂ 25 ਸਾਲ ਉਹਦੀ ਲਿਮਟ ਬ੍ਰਮਚਾਰੀ ਦੀ ਸਾਰੀ ਉਮਰ ਦੀ ਹੈ ਇਹ ਆ ਡਾਟ ਹੈ ਉਹਦੇ ਬਾਦ ਉਹ ਕ੍ਰਿਸ਼ਤੀ ਹੈ ਉਹਦੇ ਬਾਦ ਵਨਪ੍ਰਸਤ ਹੈ ਉਹਦੇ ਬਾਦ ਸੰन्यास ਹੈ ਇਹਨਾਂ ਦੇ ਪ੍ਰਚਾਰੀ ਨੇ ਚਾਰ ਨੇ ਨਾ ਸਟੇਜਾਂ 25 ਸਾਲ ਤੱਕ ਪ੍ਰਚਾਰੀ 25 ਤੇ 50 ਸਾਲ ਤੱਕ ਕ੍ਰਿਸ਼ਤਾ ਆਸ਼ਰਮ 50 ਤੇ 75 ਤੱਕ ਬਾਣ ਪ੍ਰਸਤਾ ਆਸ਼ਰਮ ਉਹਦੇ ਬਾਅਦ ਸੰਨਿਆਸੀ ਆਸਨ ਚਾਰ ਨੇ ਅਡਰ ਇਹਨਾਂ ਦੇ ਜਤੀਆਂ ਸਾਰੀ ਉਬਰਿਆ ਬਸ ਅਡਰ 2 2 ਦਾ ਇਕੱਠਾ ਨਹੀਂ ਸੀ ਹੁੰਦਾ ਸਾਡਾ 2 ਲੱਖ ਨਹੀਂ ਸੀ ਹੁੰਦਾ ਇਹਦੇ ਵਾਸਤੇ ਕਤੇ ਨਾਰੇ ਕਤੇ ਨਾਰੇ ਆਦਮੀ ਕਤੇ ਹੋਰ ਤੇ ਕਹੂੰ ਛਤਰ ਧਾਰੀ ਕਹੂੰ ਛਾਲਾ ਧਰੇ ਛੈਣ ਭਾਰੀ ਕਹੂੰ ਛਤਰ ਧਾਰੀ ਕਤੇ ਛਤਰ ਧਾਰੀ ਤੂੰ ਛਤਰ ਧਾਰੀ ਰਾਜਾ ਛਤਰ ਧਾਰੀ ਰਾਜਾ ਵੀ ਉਹ ਸੰਗਾ ਛਤਰ ਧਾਰੀ ਇਹ ਦੂਏ ਵੀ ਹੋ ਸਕਦੇ ਨੇ ਜਿਹੜੇ ਪੀਠਲ ਦੇ ਵਾਲ ਕਰੇ ਉਹ ਵੀ ਹੱਥਾਂ ਦੇ ਵਹਨ ਦੇ ਉੱਤੇ ਛਤਰ ਉਹਨਾਂ ਦੇ ਵੀ ਹੁੰਦੇ ਨੇ ਉਹ ਧਾਰਮਿਕ ਨੇ ਛਤਰ ਧਾਰੀ ਇੱਕ ਜਿਹੜੇ ਨੇ ਇਧਰ ਮਾਇਆ ਦੇ ਵਿੱਚ 70 ਧਾਰੀ ਹੁੰਦੇ ਉਹ ਧਰਮ ਦੇ ਪੱਖ ਵਾਲੇ ਹੁੰਦੇ ਨੇ 70 ਧਾਰੀ ਧਰਮ ਉਹ ਕਿੰ ਸਿੱਕਾ ਚੱਲਦਾ ਹੁੰਦਾ ਉਹਨਾਂ ਦਾ ਐਂ ਕਹ ਲਓ ਉਹਨਾਂ ਦਾ ਧਰਮ ਦਾ ਸਿੱਕਾ ਚੱਲਦਾ ਧਰਮ ਦੇ ਵਿੱਚ ਵੱਡੇ ਨੇ ਦੋਹੇ ਰਾਜ ਪ੍ਰਬੰਧ ਦੇ ਵੱਡੇ ਨੇ ਹਾਂਜੀ ਖੁਸ਼ ਆਲਾ ਧਰੇ ਸ਼ੈਲ ਭਾਰੀ ਖੁਸ਼ ਆਲਾ ਧਰੇ ਸ਼ੈਲ ਭਾਰੀ ਕਿਤੇ ਸ਼ੈਲ ਮਤਲਬ ਸਮਝ ਲਓ ਅਤ ਸਰੂਪ ਹੈ ਤੇਰਾ ਅੱਤ ਸੁਧਰ ਅੱਤ ਸੁਧਰ ਕੁਲੀਨ ਤੇ ਤਰ ਛਲ ਛਲ ਭਾਰੀ ਕਹੂੰ ਛੱਕ ਵਾਰੀ ਕਹੂੰ ਕੇ ਪ੍ਰਕਾਰ ਹੋ ਕਹੂੰ ਛੱਕ ਵਾਰੀ ਕਹੂੰ ਕੇ ਪ੍ਰਕਾਰ ਹੋ ਕਿਤੇ ਛੱਕ ਵਾਰੀ ਕਿਤੇ ਛਲ ਕਰਨਾ ਕਿਤੇ ਕਿਤੇ ਤਾਂ ਕੁਛ ਕਿਸੇ ਅੱਗੇ ਆਊਗਾ ਵੀ ਕਿਸੇ ਦਾ ਤੂੰ ਕੁਝ ਦੇ ਰਿਹਾ ਹੈ ਕਿਸੇ ਨੂੰ ਬਰਦਾਨ ਕਿਤੇ ਉਹਤੇ ਛੱਡ ਰਿਹਾ ਲੈ ਰਿਹਾ ਕਿਤੇ ਭਰ ਰਿਹਾ ਸ਼ਿਕਵਾਰੀ ਹੁੰਦਾ ਭਰ ਰਿਹਾ ਖਰਚ ਕਰ ਰਿਹਾ ਜਿਵੇਂ ਕੋਈ ਦਰਖਤ ਹੈ ਖਾਸ ਤੇ ਤੇ ਜਾ ਕੇ ਫਿਰ ਉਹ ਘਟਣਾ ਸ਼ੁਰੂ ਹੋ ਜਾਂਦਾ ਆਦਮੀ ਵੀ ਖਾਲੀ ਹੋਣਾ ਹਾਲਾਂਕਿ ਖਾਣਾ ਖਾਣ ਦੇਖੋ ਬੱਚਾ ਖਰਾਬ ਛੋੜੀ ਜਾਂਦਾ ਥੋੜੀ ਖਾਂਦਾ ਉਦੇ ਖਰਾਕ ਵੀ ਵੱਧਦੀ ਜਾਂਦੀ ਹੈ ਸਰੀਰ ਵੀ ਵੱਧਦਾ ਜਾਂਦਾ ਹੈ। ਚੰਗਾ ਪਾਲਾ ਬਣਾ ਹੁੰਦਾ ਖਰਾਕ ਘੱਟਦੀ ਜਾਂਦੀ ਹੈ ਸਰੀਰ ਘਟਣ ਲੱਗ ਜਾਂਦਾ ਹੈ। ਇਹ ਰਖਸ਼ਾ ਹਸਣ ਦੇ ਸਰੀਰ ਤੱਕ ਦਾ ਹੈ। ਫਿਰ ਉਧਰ ਗਿਆਨ ਤੱਕ ਦਾ ਵਿਰਖਸ਼ ਹੈ। ਕਿਤੇ ਬੁੱਧ ਦਾ ਵਿਕਾਸ ਹੋਇਆ ਕਹਿੰਦੇ ਬੁੱਧਾ ਨਾ ਸੋਹਰੇ। ਕਿਤੇ ਬੁੱਧ ਦਾ ਵਿਕਾਸ ਹੋ ਰਿਹਾ ਕਹਿੰਦੇ ਬੁੱਧਾ ਨਾ ਸੋਹਰੇ। ਨਾਲ ਵੀ ਆਪੇ ਕਰਦਾ ਵਿਕਾਸ ਵੀ ਆਪੇ ਕਰਦਾ। ਹੁਣ ਗੁਰਬਾਣੀ ਸਾਡੇ ਕੋਲ ਹੈ। सुनने सारे ਹੀ ਨੇ ਕੁਲਵਾਰਾਂ ਜੀ ਵੀ ਸੁਣਦੇ ਹੀ ਨੇ ਫੇਰ ਵੀ ਉੱਟੇ ਕੰਮ ਹੀ ਲੱਗੇ ਹੋਏ ਨੇ ਸੁਧਰ ਵੀ भी ਨੇ ਵਿਗੜ ਵੀ ਰਹੇ सुन के भी, ਗੁਰੂ ਘਰ ਜੀ ਵੀ ਸੀਗੇ ਪਲਾਸੀ ਗੁਰੂ ਘਰ ਦੀ ਵਿਗੜ ਵੀ ਗਏ ਸੁਧਰ ਵੀ ਗਏ ਗੱਲ ਕੋਈ ਸੁਣੀਏ ਉਹੀ ਗਿਆਨ ਕਿਸੇ ਨੂੰ ਵਿਗਾੜ ਰਿਹਾ ਉਹੀ ਗਿਆਨ ਕਿਸੇ ਨੂੰ ਸਮਾ ਰਿਹਾ ਪਰ ਸੂਰ ਤਾਂ ਮੰਨਣ ਵਾਲੇ ਨੇ ਉਹਦੇ ਤੇ ਅਸਰ ਹੋ ਰਿਹਾ ਉਹ ਤੇ ਅਸਰੇ ਵੀ ਹੋ ਰਿਹਾ ਕਹੂੰ ਛਲਕੇ ਪ੍ਰਕਾਰ ਹੋ ਕਹੂੰ ਛੜ ਕੇ ਪ੍ਰਕਾਰ ਹੋ ਕਹੂੰ ਗੀਤ ਕੇ ਗਵਈਆ ਕਹੂੰ ਵੇਨ ਕੇ ਬਜਈਆ ਗੀਤ ਕੇ ਗਵਈਆ ਕਹਿੰਦੇ ਗੀਤ ਦਾ ਗਵਈਆ ਉਹ ਵੀ ਬੜੇ ਇਕ ਵਨ ਹੋ ਕੇ ਗਾਉਂਦੇ ਨੇ ਨਾ ਉਹ ਵੀ ਝੜ ਕੇ ਗਾਉਂਦੇ ਨੇ ਨਾਲ ਆਪਣੇ ਆਤਮਾ ਉਹ ਉਹ ਗੀਤ ਨੂੰ ਮੈਂ ਸਾਧਨਾ ਸਮਝਦਾ ਨੇ ਬਹੁਤ ਆਲਮੀ ਰਾਗ ਨੂੰ ਸਾਧਨਾ ਸਮਝਦੇ ਨੇ ਕਹੂੰ ਵੇਣ ਕੇ ਵਜਾਈਆ ਕਹੂੰ ਵੇਣ ਕੇ ਵਜਾਈਆ ਜਿਹੜੇ ਸਾਜਾ ਵਾਲੇ ਨੇ ਵੀ ਆਪਣੇ ਸਾਜ ਵਜਦੇ ਨਹੀਂ ਜਿੰਨਾ ਜਿਹੜਾ ਇਚੇ ਤੇ ਜੁੜਦਾ ਨਹੀਂ ਸਾਜ ਉਹ ਵੀ ਕਹਿੰਦੇ ਨੇ ਵੀ ਜੁੜਨਾ ਪੈਂਦਾ ਬਸ ਇਨਾ ਜੁੜਨ ਨੂੰ ਇਹ ਭਗਤੀ ਬੰਦੇ ਸੀਗੇ ਕਹੂੰ ਨਰਕ ਕਹੂੰ ਨਰਕੋ ਆਕਾਰ ਹੋ ਕੋ ਨਰਕੋ ਕਾਰੋ ਕਿਤੇ ਨਰਦਾ ਕਾਰ ਆ ਆਦਮੀ ਦੀ ਜੂਲ ਵਿੱਚ ਕਹੂੰ ਬੇਦਵਾਨੀ ਕੋਕ ਕੀ ਕਹਾਣੀ ਆਖੋ ਕਿਤੇ ਬੇਦਵਾਨੀ ਹੈ ਕੋਕ ਕੀ ਕਹਾਣੀ ਹੈ ਕੋਕ ਕੀ ਕਹਾਣੀ ਸੰਸਾਰ ਦੀ ਕਹਾਣੀ ਹੈ ਬੇਦਵਾਨੀ ਅੰਤਰਾਤਮ ਦੀ ਹੈ ਕੋਕ ਕੀ ਕਹਾਣੀ ਬੇਦਵਾਨੀ ਦੀ ਵਿਰੋਧ ਕਰਦੀ ਹੈ ਵਿਰੋਧ ਇਦਾਂ ਮਨਾਂ ਬੇਦਬਾਗੀ ਦਾ ਬਰੋਧ ਕਾਊਂਟ ਕਰਦੀਏ ਕੋਕੀ ਕਹਾਣੀ ਕਰਦੀਏ ਤੇ ਦੁਸ਼ਮਣ ਕੌਣ ਹੋਈ ਫਿਰ ਕੋਕੀ ਕਹਾਣੀ ਬਟ ਦੁਸ਼ਮਣ ਦੀ ਸੀ ਆਈਡੀ ਤੇ ਪੈਸੇ ਦੇ ਕੇ ਬਹੁਤ ਬੇਤਰਾ ਲੋਕ ਲੈਂਦੇ ਨੇ ਜਿਵੇਂ ਜਤੜਾ ਹੋਵੇ ਦੁਸ਼ਮਣ ਨੂੰ ਉਹਦੇ ਸਾਰੇ ਲੂਪ ਹੋਲ ਜਨਾ ਜਾਂ ਸਾਡੇ ਕੋਲ ਹੋਣਾ ਜਿੱਤਾਂ ਦੇ ਕੇ ਉਹਨੂੰ ਜਿੱਤਣ ਦੇ ਤਰੀਕੇ ਉਹਦੇ ਕਿੰਨੀ ਉਹਦੇ ਚ ਸ਼ਕਤੀ ਕਿੰਨੀ ਆ ਅਸੀਂ ਉਹਨੂੰ ਕਿਵੇਂ ਮਤਲਬ ਹੈ ਦਬੋਣਾ ਉਹ ਚ ਕਮਜ਼ੋਰੀਆਂ ਕਿੱਥੇ ਨੇ ਬੇਦਵਾਨੀ ਦਾ ਉਲਟਾ ਕੋਕੀ ਕਹਾਣੀ ਹੁਣ ਕੋਕੀ ਕਹਾਣੀ ਦਾ ਇੱਥੇ ਆ ਗਈ ਇਹਦੇ ਵਿੱਚ ਕਾਲ ਉਸਤਤ ਅਕਾਲ ਉਸਤਤ ਦੇ ਵਿੱਚ ਕੋਕੀ ਕਹਾਣੀ ਆ ਗਈ ਤੇ ਕੋਕੀ ਕਹਾਣੀ ਵੀ ਤੂੰ ਓਏ ਬੇਦਵਾਨੀ ਵੀ ਤੂੰ ਓਏ ਤੇ ਤੈਨੂੰ ਸਮਝਣਾ ਦੋ ਸਭਝੜੇ ਬਹਿਣਗੇ ਕਹੂੰ ਮਿਹਰਬਾਨੀ ਕੋਕੋ ਕੀ ਕਹਾਣੀ ਇਹ ਕੋਕੀ ਕਹਾਣੀ ਵੀ ਤੂੰ ਏ ਤੂੰ ਕੋਣਾ ਅਭ੍ਰਮ ਗਿਆਨ ਹੈ ਮਿਹਰਬਾਨੀ ਵੀ ਤੂੰ ਏ ਤੇਰੇ ਲੋਕ ਦੀ ਰਚਨਾ ਤਾਂ ਹੀ ਹੋਈ ਹੈ ਤਾਂ ਫਿਰ ਕੋਕੀ ਕਹਾਣੀ ਛੱਡ ਕੇ ਤੈਨੂੰ ਨਹੀਂ ਸਮਝਿਆ ਜਾ ਸਕਦਾ ਉਹ ਪਾਠ ਰਹੇ ਜੂਗਾ ਤੇਰਾ ਸਮਝੂ ਨਾ ਉਹ ਪੱਕ ਰਹੇ ਜੂਗਾ ਇਹ ਕੋਕੀ ਕਹਾਣੀ ਵਾਲਾ ਪੱਕ ਛੱਡਦੀ ਏ ਪਰ ਉਹ ਜ਼ਰ ਐ ਨਹੀਂ ਗਿਆ ਉਹ ਨਾ ਪੂਰਾ ਜਾਣ ਤੇ ਨਹੀਂ ਹੋ ਸਕਦਾ ਜੇ ਕੋਕੀ ਕਹਾਣੀ ਨੂੰ ਛੱਡ ਦਈਏ ਇਸ਼ਾਰੇ ਮਾਤਰ ਗੱਲ ਆ ਗਈ ਇੱਥੇ ਲੇਕੋਕੀ ਕਹਾਣੀ ਦੇ ਕਿ ਲੋੜ ਸੀ ਉਹਨੂੰ ਸੰਬੋਧਨ ਕਰਤਾ ਵੀ ਤੂੰ ਹੀ ਹੈ ਉੱਤਰਾਦੋਂ ਸੰਬੋਧਨ ਕਰਤਾ ਵੀ ਤੂੰ ਹੈ ਇਹ ਦੋ ਇਹ ਤੇਰੇ ਚ ਜੇ ਸੰਸਾਰ ਹੈ ਸੰਸਾਰ ਪੈਦਾ ਨਹੀਂ ਹੋ ਸਕਦਾ ਕੋਕੀ ਕਾਣੇ ਬਲੂ। ਸਰਦ ਹੋਇ ਰਿਹਾ ਕੋਲਾ ਪਹਿਲਾ ਕਰਕੇ ਦਿਖਾਉਂਦਾ ਸੰਸਾਰ ਕਿਵੇਂ ਪੈਦਾ ਹੋਇਆ। ਸੰਸਾਰ ਚੋਂ ਨਿਕਲਣ ਵਾਸਤੇ ਵਹਿਰ ਬਾਣੇ ਆ। ਸੰਸਾਰ ਪੈਦਾ ਕਰਨ ਵਾਸਤੇ ਸੰਸਾਰ ਚ ਰਹਿਣ ਵਾਸਤੇ ਕੋਕੀ ਕਾਣ ਜੀ। ਸੰਸਾਰ ਦੇ ਵਿੱਚ ਪੈਦਾ ਕਰਨ ਵਾਸਤੇ ਕੋਕੀ ਕਹਾਣੀਆਂ ਪੈਦਾ ਕਰਨ ਵਾਲੀ ਹੈ ਸੰਸਾਰ ਜੋ ਕੱਢਣ ਵਾਲੀ ਬੇਦੋਰੀ ਹੁਣ ਦੋ ਇੱਕ ਦੂਰੇ ਪਾਸੇ ਦੋ ਪਾਸੇ ਦੋ ਪਾਸਿਆਂ ਦੇ ਵਿੱਚ ਵਿੱਚ ਸਾਥ ਬਚਾਣਾ ਕੋਈ ਇੱਕ ਪਾਸਾ ਕਿਵੇਂ ਚੱਲੂਗਾ ਡਿਵੈਲਪਮੈਂਟ ਨਹੀਂ ਹੋ ਸਕਦੀ ਸਰੀਰ ਮਨਾ ਡਿਵੈਲਪਮੈਂਟ ਨਹੀਂ ਹੋਣੀ ਸਰੀਰ ਕੋਕੀ ਕਹਾਣੀ ਤੋਂ ਬਿਨਾਂ ਨਹੀਂ ਪੈਦਾ ਹੁੰਦਾ ਸ੍ਰੀ ਕੇ ਮੰਗ ਲੂਹਾ ਕੇ फिकने आदमी है अनसुललाइज्ड किसे बोले थावरी है कि ब जंगली सी आदमी जंगली सी आदमी जानवर ने ज्यादा आदमी जंगली सी ज्यादा नो असली कुछ जानवर ने कोई असलीली लगता लगता कुछ बस बस ये सर्व डेवलपमेंट जड़ी इधर ना सानू दिसती बदल एक टेंपरेरी बदली है दिसती ਜਿਸ ਕੋਲ ਕਾਦ ਬਲੇ ਜਦ ਤੱਕ ਸਪਲਾਈ ਹੋ ਗਿਆ ਜਿਹੜੇ ਹੁਣ ਵੀ ਕਿਦਣਾ ਚੜ ਰਹੇ ਨੇ ਸਪਲਾਈ ਦੀ ਉਹ ਵੀ ਅੱਧੀ ਨੰਗੀ ਰਹਤ ਨੇ ਉਹ ਉਹ ਨਾ ਬਣਾ ਬਤ ਲਾਉਣ ਦੀ ਕੋਈ ਚੀਜ਼ ਉਹਨਾਂ ਬਾਤ ਕੋਈ ਚੀਜ਼ ਉਹਦੇ ਵਾਸਤੇ ਹੈ ਸਾਡੇ ਤਾਂ ਕੁਝ ਰੰਗ ਹੋਰ ਚੜ ਗਿਆ ਲੈਕਚਰੋਂ ਰੰਗ ਨਹੀਂ ਹੈ ਸਾਡਾ ਜਿਹੜਾ ਹੈ ਸਾਡਾ ਆਦਮੀ ਨਾ ਬਣਾਇਆ ਹੈ ਰੰਦਾ ਨਹੀਂ ਤੇ ਉਹਨਾਂ ਜਦੋਂ ਪੈਦਾ ਕੀਤਾ ਉਹਨੇ ਨੰਗੇ ਆਵਣਾ ਨੰਗੇ ਜਾਣਾ ਲੈ ਕੇ ਤਾਂ ਉਹ ਕਪੜੇ ਹੀ ਨਹੀਂ ਪਾਣੇ ਆਦਮੀ ਨੇ ਅਸ਼ਲੀਲਤਾ ਆਦਮੀ ਦੇ ਦਿਮਾਗ ਦੀ ਉਪਜ ਹੈ ਆਦਮੀ ਦੇ ਦਿਮਾਗ ਤੇ ਬਹੁਤ ਕੁਝ ਉਪਜਦਾ ਆਦਮੀ ਦੇ ਦਿਮਾਗ ਦਾ ਤੇ ਇਥੇ ਬਹੁਤ ਕੁਝ ਉਪਜਦਾ ਇਹ ਆਦਮੀ ਦੇ ਦਿਮਾਗ ਦੀ ਉਪਜ ਹੈ ਪਰ ਦੇ ਦਿਮਾਗ ਦੀ ਉਪਜ ਨਹੀਂ ਹੈ ਉਹਦੇ ਦਿਮਾਗ ਦੇ ਵਿੱਚ ਹੁੰਦੀ ਤਾਂ ਕੱਪੜੇ ਪਾ ਕੇ ਧੋ ਲਦਾ ਇੱਥੇ ਫਿਰ ਹਨ ਇਹ ਤਾਂ ਅਜੂਬੇ ਦਿਮਾਗ ਦੇ ਵਿੱਚ ਹੈ ਗਿਆਨ ਨੇ ਪਾਇਆ ਕੋਣ ਆਦਮਾ ਇਹ ਕੁਦਰਤ ਨੂੰ ਆਪਣੇ ਆਪ ਨੂੰ ਵੱਡਾ ਸਮਝਦਾ ਫਿਰ ਤਾਂ ਅਸ਼ਲੀਲਤਾ ਹੈ ਜੋ ਕੁਦਰਤ ਨੂੰ ਵੱਡਾ ਜੇ ਇਸ ਰੁੱਖ ਤੇ ਨੂੰ ਸਮਝ ਲਵੇ ਕੋਈ ਜਿੰਨਾ ਕਰੇ ਇਸ ਰੁੱਖ ਤੇ ਨੂੰ ਨਹੀਂ ਸਮਝਦਾ ਉਹ ਅਸ਼ਲੀਲਤਾ ਮੰਨੂਗਾ ਇਹਦਾ ਬਦਲਵਾ ਉਹ ਜੋ ਵਿਦਵਾਨ ਹੈ ਆ ਵਿਦਿਆ ਵਿਚਾਰੀ ਦੀ ਉਹਨੇ ਸੰਸਾਰ ਕੀ ਹੈ ਜੇ ਬਦਲਵਾ ਜਾ ਕੇ ਦੇਖ ਲੋ ਕਿੰਨਾ ਹੱਦ ਬਦਲਿਆ ਆਦਮੀ ਔਰਤਾਂ ਦੀਆਂ ਲੱਗੀਆਂ ਦੀ ਫੋਟੋ ਨੇ ਬਿਲਕੁਲ ਉਹ ਵੀ ਘਰ ਦਾ ਹਿੱਸਾ ਸੀ ਉਥੇ ਬਦਲ ਬਣਿਆ ਜੀ ਉਹ ਤਾਂ ਲੋਕ ਨਹੀਂ ਸੀ ਕਹਿੰਦੇ ਇਹ ਆਦਮੀ ਦਾ ਜਿਹੜਾ ਹੈ ਨਾ ਸਿਵਲਾਈ ਅਸਰ ਹੈ ਯੂਰਪ ਦੇ ਵਿੱਚ ਹੋਰ ਹੈ ਸਾਡੇ ਰਿਵਾਜ ਨੇ ਦੇਸ਼ਾਂ ਦੇ ਦੇਸ਼ਾਂ ਦੇ ਰਿਵਾਜ ਨੇ ਕਿਤੇ ਇਹਨੂੰ ਗਲਦਨੇ ਸ਼ਰੀਰ ਤੱਕ ਨਹੀਂ ਬੰਦ ਜਿਹੜੇ ਇਹੇ ਜਿਹੇ ਰਿਵਾਜ ਨੇ ਆਦਮੀ ਦੇ ਆਪਣੇ ਦਿਮਾਗ ਇੱਥੇ ਦੇ ਗਰੌਂਡ ਸਾਡੇ ਆਪਣੇ ਬਣਾਏ ਹੋਏ ਨੇ। ਸਿਵਲ ਦਾ ਗਰੌਂਡ ਸਾਡੇ ਆਪਣੇ ਬਣਾਏ ਹੋਏ ਨੇ। ਅਸੀਂ ਵਿਆਹ ਕਰਦੇ ਆਂ। ਕਰਦੇ ਆਂ। ਲਾਵਾਂ ਦਿੰਦੇ ਆਂ। ਸਰਕਾਰ ਕਹਿੰਦੀ ਹੈ ਹਾਈ ਕੋਰਟ ਮਾਰੀ ਦੇ ਨਾਲ। ਮੈਂ ਤਾਂ ਤਾਂ ਵੀ ਨਾਂ ਵੀ ਕਰਾਵੇ ਫਿਰ ਵੀ ਕੀ ਹੈ? ਫਿਰ ਕਿਉਂ ਹੋ ਜੂ? ਐਵੇਂ ਜਿੱਲੀ ਨੂੰ ਤਾਂ ਅਗੇ ਕਬਨਿਸਟਰ ਕੱਲ੍ਹ ਵੇਚ ਆਈਦਾ ਨਹੀਂ ਕੋਈ। ਕੁਝ ਤਾਂ ਪਤਾ ਹੀ ਨਾ ਲੱਗੇ ਵੀ ਕਿਦਾ ਕੌਣ ਉਹ ਮੋਬੈਲ ਹੋ ਜਾਂਦਾ ਉਹਨਾਂ ਨੇ ਇਹ ਦਲੀਲ ਦਿੱਤੀ ਛਾਲੀਕ ਸਾਲ ਹੋ ਗਏ ਮੇਰਾ ਖਿਆਲ ਆਰਟੀਕਲ ਆਇਆ ਸੀ ਨਾ ਆਪਣੇ ਕਵਰਿਸਟਾ ਦੇ ਇਹ ਜਿਹੜਾ ਕ腐ਸ਼ਨ ਹੈ ਕਾਰਨ ਇਹ ਬੇਰਾ ਤੇਰਾ ਬੇਰਾ ਤੇਰਾ ਹੀ ਖਤਮ ਕਰੋ ਕ腐ਸ਼ਨ ਦਾ ਕਾਰਨ ਮੇਰਾ ਤੇਰਾ ਪਰ ਇਹ ਤਾਂ ਉਹਨਾਂ ਨੂੰ ਇਹ ਨਹੀਂ ਸੀ ਪਤਾ ਕੋਈ ਬੱਚੇ ਤਾਂ ਮਹਾਂਦਰੇ ਤੋਂ ਪਤਾ ਲੱਗ ਜਾਂਦਾ ਯਾਦੋਂ ਇਹ ਤਾਂ ਸਿਆਫੇ ਚੁਪ ਕਰ ਗਏ। ਫੇਰ ਬਾਤ ਬਿਚਾਣੇ ਜਾਂਦੇ ਹੋ ਤਾਂ ਕਰੋ ਚੁਪ ਕਰਕੇ ਵੀ ਇਹ ਹੋ ਨਹੀਂ ਸਕਦਾ ਪੋਸੀਬਲ ਨਹੀਂ ਹੈ। ਬੜਾ ਰੌਲਾ ਪਿਆ ਦੋ ਤੁਸੀਂ ਸਾਰੇ ਤਾਂ। ਹੋਰਨ ਆਦਮੀ ਆਪਣੇ ਦਿਮਾਗ ਚੋਂ ਅਲੱਗ-ਅਲੱਗ ਸਮੇਸਰ ਅਲੱਗ-ਅਲੱਗ ਉਹਦਾ ਗਿਆਨ ਨਿਕਲਦਾ ਰਹਿੰਦਾ। ਅਲੱਗ-ਅਲੱਗ ਤੇ ਕਰਦਾ ਰਹਿੰਦਾ। ਪਰ ਇਹ ਜਿਹੜੀ ਗੱਲ ਹੈ ਇਹ ਫਾਈਨਲ ਹੈ। ਇਹਦੀ ਕਦੇ ਸੰਸ਼ੋਧਨ ਦੀ ਲੋੜ ਪੈਂਦੀ ਹੋਈ ਇਹ ਪੂਰੀ ਬੁੱਧੀ ਦੀ ਗੱਲ ਕਹੀ ਹੋਈ ਹੈ ਅਧੂਰੀ ਬੁੱਧੀ ਆਪਣੀ ਡਵੈਲਪ ਕਦੇ ਕੁਛ ਕਰਦੀ ਰਹਿੰਦੀ ਹੈ ਕਦੇ ਕੁਛ ਕਰਦੀ ਰਹਿੰਦੀ ਹੈ ਕਦੇ ਕੁਛ ਕਰਦੀ ਰਹਿੰਦੀ ਹੈ ਇਹਨਾਂ ਦੇ ਕੁਛ ਕਰਦੀ ਰਹਿੰਦਾ ਕਹੂੰ ਬੇਦਬਾਣੀ ਕਹੂੰ ਕੋਈ ਪੂਜਾ ਦਾ ਸਹਾਰਾ ਹੁੰਦਾ ਨਾ ਤਾਂ ਕਿ ਲੋਕ ਉਹਨਾਂ ਦੇ ਦਿਮਾਗ 'ਚ ਰਹੀ ਨਾ ਉਹਨਾਂ ਦੇ ਦਿਮਾਗ 'ਚ ਰਹੇ ਉਹ ਹੋਰ ਐਂਗਲ ਤੋਂ ਦੇਖ ਲਓ। ਉਹ ਇਹਨੂੰ ਕਰਤਾ ਦੇ ਐਂਗਲ ਤੋਂ ਦੇਖਣ। ਕਿ ਰਚਨਾ ਕਰਨ ਵਾਲਾ ਹੈ, ਰਚਨਾ ਵਾਲਾ। ਉਹਨੂੰ ਰਚਨ ਹਾਰਾ ਪੂਜਾ ਦੇ ਥੋਤੇ ਦੇਖ ਲਓ। ਸੰਸਾਰ ਪੈਦਾ ਕੀਤਾ ਹੈ। ਜਲਵਦਾਤਾ ਹੈ। ਉਹ ਐਂਗਲ ਤੋਂ ਦੇਖਣ। ਐਂਗਲ ਬਦਲ ਗਿਆ ਨਾ। ਵੱਦਰ ਕੇ ਬਾਣਦੋ ਬਦਲੇ ਐਂਗਲ ਬਦਲੇ ਉਹਦਾ ਉਹਨੂੰ ਐਂਗਲ ਦੇ ਦਿੱਤਾ ਜਲਬ ਦਾਤਾ ਦਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਆਤਾ ਮਾਤਾ ਦਾ ਪਿਤਾ ਦਾ ਐਂਗਲ ਦੇ ਤੂੰ ਐਂਗਲ ਬਦਲਿਆ ਸੀ ਉਹ ਹੋਰ ਸੀ ਇਹ ਉਹਨਾਂ ਨੂੰ ਸ਼ਲੀਲ ਕੀ ਜਾਂਦੇ ਨੇ ਇਹਨਾਂ ਨੂੰ ਕੀ ਪਤਾ ਕੀ ਕਿਹਾ ਸੀ ਉਹਨਾਂ ਨੇ ਆਂ ਐਂਗਲ ਬਦਲਿਆ ਸੀ ਉਹ ਵੀ ਸਿਆਣੇ ਸੀ ਕਦੇ ਕੇਸਾ ਯੋਰੋ ਯੋਰੋ ਕਦੇ ਕੇਸਾ ਯੋਰੋ ਯੋਰੋ ਕਹੂੰ ਬੇਦਬਾਣੀ ਕਹੂੰ ਕੋਕੀ ਕਹਾਣੀ ਕਹੂੰ ਰਾਜਾ ਕਹੂੰ ਰਾਣੀ ਕਹੂੰ ਨਾਰਕੇ ਪ੍ਰਕਾਰ ਹੋ ਕਹੂੰ ਰਾਜਾ ਕਹੂੰ ਰਾਣੀ ਕਿਤੇ ਰਾਜਾ ਕਿਤੇ ਰਾਣੀ ਹੈ ਆਤਮਾ ਉਹੀ ਇੱਕੋ ਹੀ ਹੈ ਸਾਰਿਆਂ ਦੀ ਰਾਜਾ ਹੈ ਤੇ ਰਾਣੀ ਕਹੂੰ ਪ੍ਰਕਾਰ ਹੋ ਕਹੂੰ ਨਾਰਕੇ ਪ੍ਰਕਾਰ ਹੋ ਰਾਜਾ ਰਾਣੀਏ ਕੋਈ ਤੇ ਰਾਜਾ ਰਾਣੀ ਦੇਹੀ ਹੈ ਤਾਂ ਰਾਣੀ ਦਾ ਇੱਕ ਖਾਸ ਜਗਾ ਹੋਗੀ ਨਾ ਰਾਣੀ ਉਸ ਮਤ ਨੂੰ ਵੀ ਕਹਿ ਸਕਦੇ ਹਾਂ ਸੀ ਜਿਹੜੀ ਉਹ ਛਤਰ ਧਾਰੀ ਰਾਜਾ ਹੈ ਧਰਮਕ ਜਿਹੜਾ ਧਰਮਕ ਰਾਜਾ ਹੈ ਨਾ ਜਿਵੇਂ ਜਿਵੇਂ ਸ਼ਿਵ ਜੀ ਕਾ ਰਾਜਾ ਵਿਸ਼ਨੂ ਰਾਜਾ ਚਲੋ ਬੈਜਰਮ ਬਤਰਾਣੀ ਹੈ ਜੇ ਉਹਨੂੰ ਧਰਮ ਦੇ ਅੰਗਲ ਤੋਂ ਦੇਖੀਏ ਸਰ ਬੈਜਰਮ ਬਤਰਾਣੀ ਹੈ ਬਸ ਕੋਹੂ ਨਾਰਕੇ ਪ੍ਰਕਾਰ ਹੋ ਨਾ ਜਨਨ ਬਤਾਨੇ ਉਹ ਜਿਹੜੀਆਂ ਦੁਈਆਂ ਜੀਆਂ ਨੇ ਬਤਾਂ ਆਪਣੀਆਂ ਤਰੀਆ 74 ਇਹ ਤਰੀਆ ਜਨਤਾ ਜਿਹਦੀ ਉਹ ਮਨ ਬਤਾਨੇ ਨਾ ਇਹ ਕਿਸੇ ਦੇ ਆਦੀ ਨੂੰ ਦੀ ਆ ਮਤਾ ਵੇਸ਼ ਨਾਰ ਹੁੰਦੀ ਹੈ ਕਿਸੇ ਦੇ ਆਸ਼ਰਤ ਕਿਸੇ ਤੇ ਆਸ਼ਰਤ ਹੋਵੇ ਨਾ ਉਹਨੂੰ ਨਾਰ ਕਹਿੰਦੇ ਨੇ ਜੋ ਇੰਡੀਪੈਂਡੈਂਟ ਨਹੀਂ ਹੈ ਜੋ ਇੰਡੀਪੈਂਡੈਂਟ ਜੀਵਨ ਨਹੀਂ ਬਸਰ ਕਰ ਸਕਦਾ ਉਹਨੂੰ ਨਾਰ ਕਹਿੰਦੇ ਨੇ ਨਾਰ ਇੰਡੀਪੈਂਡੈਂਟ ਜੀਵਨ ਬਸਨ ਕਰ ਕਰ ਬਸਰ ਕਰ ਸਕਦਾ ਜੰਗਲ ਦੇ ਵਿੱਚ ਆਦਮੀ ਇਕੱਲਾ ਵੀ ਘਰਾਉਂਦਾ ਨਹੀਂ ਉਹ ਤਾਂ ਖਰਚ ਵੀ ਡਲਣ ਲੱਗ ਜਾਂਦੀ ਹੈ ਯਾਤਵੀ ਕਰਨਾ ਹੋਵੇ ਸ਼ਾਮ ਨੂੰ ਬਹਾਰ ਘਰ ਹੋਵੇ ਨਾ ਥੋੜਾ ਜਿਹਾ ਫਰਕ ਨਾ ਹੋਵੇ ਉਲਟਾ ਲੱਗਣਾ ਜਾਂ ਆਜ ਵੀ ਦਾ ਰਾਜ ਵਿੱਚ ਦੱਦੀਆਂ ਦੀ ਇਹ ਕੁਦਰਤੀ ਗੱਲ ਹੈ ਨਾਰੂ ਪੈ ਇਹ ਕੁਦਰਤੀ ਗੱਲ ਹੈ ਇਹਦੇ ਵਿੱਚ ਕੋਈ ਹੋਰ ਨਹੀਂ ਹੈ ਦੇਖਦੇ ਰੋ ਰਿਹਾ ਹੈ ਉਹਦੇ ਵਿੱਚ ਭੈ ਪੀਤਾ ਹੈ ਅਦਭੁਤ ਹੈ ਨਹੀਂ ਹੋਗਾ ਨਾ ਲੱਗਾ ਕਿਸੇ ਔਰਤ ਵਿੱਚ ਵੀ ਘਟ ਹੋਵੇ ਕਿਸੇ ਵਿੱਚ ਵੱਧ ਹੋਵੇ ਆਦਮੀ ਵਿੱਚ ਵੀ ਘਟ ਵੱਧ ਹੋਵੇ ਹੋਰਾਂ ਗੱਲ ਕੁਲ ਟੋਟਲ ਮਲਾਇਆ ਤਾਂ ਇਹ ਗੱਲ ਹੈ ਜਿਹੜੀ ਐਵੇਂ ਹਰ ਮੱਤ ਜਿਹੜੀ ਹੁੰਦੀ ਹੈ ਬੰਦੇ ਦੀ ਹੁੰਦੀ ਹੈ ਬੰਨ ਜਿਹੜੀ ਹੈ ਜਿੱਦਿਆ ਬਰਗਤਾਰੇ ਉਹ ਬੰਦੇ ਦੀ ਉਹ ਤਾਂ ਨਾਲ ਨਹੀਂ ਅਰੀ ਇੰਨੇ ਨਾ ਹੋਵੇ ਕੜੀਆਂ ਕਿੰਨਾ ਨਾ ਮੰਨ ਤਰਵੀਬ ਕੌਣ ਕਰਦਾ ਮੁਰ ਉਹ ਇਹਦੇ ਅਧੀ ਜਲਦੀ ਗੁਰਮਤਬੀ ਇਹਦੀ ਜਲਦੀ ਹੈ ਕਿਹਦੇ ਜਲਦੀ ਹੈ ਉਹ ਕਿਹਦੇ ਜਲਦੀ ਜੋ ਸੱਚਖੰਡ ਜਿ ਬੈਠਾ ਹੈ ਇਹ ਵੀ ਹੈ ਪੁਰਖ ਬਿਨਾਰ ਨਾਰ ਨਾਰ ਮੇ ਪੁਰਖਾ ਪੁੱਜੇ ਬ੍ਰਭ ਗਿਆਨੀ ਇਹਦਾ ਨਾਮ ਵੀ ਬਾਣੀ ਹੈ ਪਰ ਇਹਦੇ ਦੋਏ ਨਾਮ ਨੇ ਗੁਰਮਤਬ ਇਹਦਾ ਨੋ ਸ਼ਬਦ ਵੀ ਆ ਜਨੋ ਮਾੜੀ ਵੀ ਇਹਦੇ ਦੋਏ ਨਾਂ ਨੇ ਕਿਉਂਕਿ ਇੱਕੋ ਹੀ ਹੈ ਨਾ ਤੂੰ ਪਿਤਾ ਤੂੰ ਮਾਤਾ ਤੂੰ ਸ਼ੌਧ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਕੀ ਤਤ ਗਿਆਨ ਹੈ ਇਹਦੇ ਵਿੱਚ ਕੀ ਹੈ ਗੁਰਮਤ ਵਿੱਚ ਕੀ ਹੈ ਤਤ ਤਤਵ ਲੈਣ ਜਿੱਥੇ ਤਤ ਗਿਆਨ ਹੁੰਦਾ ਉਹਨੇ ਮਤ ਬਣਾਈ ਹੋਈ ਹੈ ਕਿ ਦੁੱਧ ਦਾ ਗਾਡੋ ਬਣੇ ਕਿਉਂ ਤੂੰ ਵਖੜ ਤੋਂ ਦੁੱਧ ਰਣਕੇ ਕੀ ਬਣੂਗਾ ਵਖੜ بس ਐਦਾਂ ਦੀ ਗੱਲ ਹੈ ਉਹ ਆ ਪੁਰਖ ਨਾਰ ਮੇਂ ਪੁਰਖ ਕਹੂੰ ਬੇਣ ਕੇ ਬਜਈਆ ਪਰਮਤਨ ਆ ਪੁਰਖ ਪੈਦਾ ਕਰਨ ਜਨਮ ਦੇ ਕੇ ਜਿਹੜਾ ਸਤਗੁਰ ਦਾ ਜਨਮ ਹੋਣਾ ਕਿਨੇ ਵਾਰ ਆ ਕਰਨ ਮਾਤਰੀ ਪਰ ਕਰਨ ਇਹਨਾਂ ਪੁਰਖ ਪੈਦਾ ਕਰਨਾ ਜੋ ਪੈਦਾ ਹੋਣਾ ਪਰਖੂਗਾ ਉਹ ਪੈਦੋ ਜੋ ਘਰਮਤ ਪੈਦਾ ਕਰੂ ਉਹ ਪਰਖੂ ਸਤਗੁਰ ਕਾ ਚਰਮ ਹੋਊਗਾ ਜਿਹੋ ਜੀ ਇਹ ਪੁਰਖ ਹੈ ਨਾ ਬੱਤ ਪੈਦਾ ਕਰਦੀ ਹੈ ਇਹੋ ਜਿਹਾ ਜੋ ਸ਼ਰੀਰ ਵੀ ਪੈਦਾ ਹੁੰਦਾ ਇਹ ਤੇ ਬਰਾਬਰ ਹੈ ਉਹ ਇਵੇਂ ਮਤ ਪੈਦਾ ਕਰਦੀ ਹੈ ਨਾ ਕਰਕੇ ਨਾਰ ਤਿਆਗਾ ਅੰਦਾ ਉਹ ਕੀ ਹੈ ਅੰਤਰਾ ਤੋਂ ਵੀ ਵਾਜ ਪੁਰੂਨਾਰ ਕਹਤਾ ਪਰ ਨਾਰ ਹੀ ਹੂ ਘੜੇ ਧੰਦਾ ਦੂਜੇ ਦੀ ਮਤ ਮੰਨ ਲੈ ਮਨ ਮਤ ਕਿਸ ਦੀ ਪੁਰੂਨਾਰ ਕਹਤਾ ਉਹ ਨਾਰ ਕੁ ਬੰਤੀ ਜਨ ਬਗਲ ਦੂਗੀ ਉਹ ਤੇ ਕੁਟੀ ਹੋ ਜਾਊਗਾ ਮੈਂ ਸੁਭਾ ਦਾ ਘਰ ਪੁੱਤ ਜਨਮੂਗਾ ਜਦੋਂ ਉਹ ਮਤ ਤੋਂ ਮਨਮੁਖ ਬਣ ਜਾਊਗਾ ਵਿਰੋਧ ਕਰੂਗਾ ਸੱਚ ਦਾ ਸੱਚ ਦੇ ਖਿਲਾਫ ਖੜਾ ਹੋ ਜਿਹੜਾ ਸਾਰਾ ਦਾਤਾ ਦਾਤਾ ਦੇ ਖਿਲਾਫ ਖੜਾ ਹੋ ਉਹ ਉੱਥੇ ਗੱਲ ਕੀਤੀ ਹੈ ਇੱਥੇ ਸੰਸਾਰ ਹੈ ਜਿਹੜਾ ਸੰਸਾਰ ਜੇ શરીર ਪੈਦਾ ਹੋ ਜਿੱਥੋਂ શરીર ਪੈਦਾ ਹੁੰਦਾ ਉਹਦੀ ਉਹ ਜੀ ਉਹ ਵੈਲਿਊ ਦਿੰਦੀ ਹੈ ਉਸ ਐਂਗਲ ਤੋਂ ਵੈਲਿਊ ਦਿੰਦੀ ਹੈ ਵੀ ਦਾਤ ਆ શરીર ਇੱਕ ਦਾਤ ਹੈ ਦਾਤ ਪਿਆਰੀ ਬਿਸਰਿਆ ਦਾਤਾਰ શરીર ਮਿਲ ਗਿਆ ਜਿਹਨ ਦਿੱਤਾ ਬਿਸਰ ਗਿਆ ਦਾਤਾਰ ਬਿਸਰ ਗਿਆ ਉਹ ਕੋਨਾਲ ਵੇਲੇ ਅਸਰ ਹ ਪਰ ਜਿਹੜਾ ਹੁਕਮ ਨੇ ਸਿਸਟਮ ਪੈਦਾ ਕੀਤਾ ਇਹ ਤਾਂ ਸਰੀਰ ਮਲੇ ਕਿ ਉਹਦੀ ਕੋਈ ਵੈਲੀ ਨਹੀਂ ਹੈ ਉਹਨੂੰ ਕਿਸੇ ਕਿਸ ਐਂਗਲ ਤੋਂ ਦੇਖਦੇ ਹੋ ਤੁਸੀਂ ਕੀਤਾ ਕਿਨੇ ਆ ਪੈਦਾ ਉਹ ਉਹ ਉਹ ਸਖ ਨਾਲ ਦੇਖੋ ਜਿਹਦੇ ਨਾਲ ਜਿਹੜਾ ਪੈਦਾ ਕਰਨ ਵਾਲਾ ਹੈ ਉਹਦੇ ਅੰ内 ਆਖਣ ਦੇਖੋ ਯਾ ਉਸ ਬੰਦੇ ਦੀ ਦੇਖੋ ਕਾਬਲੀਅਤ ਯਾ ਉਹਦੀ ਉਚਤਾ ਉਹਦੀ ਸਚਤਾ ਉਚਤਾ ਉਸ ਨਾਲ ਦੇਖੋ ਇਹਦਾਂ ਨਾਲ ਤੁਸੀਂ ਤਾਂ ਇੱਕ ਉਹਦੇ ਅੰ内 ਦੇਖ ਲਾਗੇ ਜਿਹੜੇ ਬੇਸਬਾਕਾ ਪੂਤ ਹੈ ਇਹ ਕਿਹੜਿਆਂ ਨਾਲ ਦੇ ਬੇਸਬਾਕਾ ਪੂਤ ਦੇ ਅੰ内 ਦੇਖ ਹੈ ਜਿਹੜੇ ਗੁਰਮਤਿ ਦੇ ਤਾਲੀ ਨੇ ਉਹ ਜਿਹੜਾ ਉਹਨਾਂ ਦਾ ਮਾਫਿਆ ਉਹਦੇ ਅੰਦਰ ਦੇ ਦੇਖਦੇ ਜੇ ਪਹਿਲਾ ਕਰਨ ਵਾਲੇ ਦੇ ਅੰਦਰ ਦੇਖਦੇ ਇਹ ਜਿਹੜੇ ਦੂਰੇ ਨੇ ਉਹ ਬੇਸਵਾ ਕੇ ਪੂਤ ਵਾਲੇ ਅੰਦਰ ਨਾਲ ਇਸ ਨੂੰ ਬੇਸਵਾ ਕੇ ਬੁੱਧੀਆਂ ਨੂੰ ਮਰਵਾ ਕਰਨ ਹ ਉਹ ਤਰਕੜੀ ਨੇ ਹੈ ਬੁੱਧੀ ਜੋ ਦੀਚ ਹੈ ਅਸਲ ਜਿਹਨਾਂ ਦੀ ਦੀਜਤਾ ਜਿਹੜੀ ਹੈਗੀ ਹੈ ਨਾ ਆਪਣੇ ਅੰਦਰ ਉਹ ਜਾ ਰਹੇ ਦੀ ਤੂੰ ਨੇਤਾ ਜਾ ਰਹੇ ਦੀ ਕੇਈ ਆਦਮੀ ਨੇ ਨੌਕਰ ਹੋਣਗੇ ਸਾਡੇ ਸੁਖਦਾ ਸੋਨਾ ਪਿਆਰ ਹੈ ਉਹਨਾਂ ਦੇ ਵੰਸ਼ ਨਹੀਂ ਹੁੰਦਾ ਕਦੇ ਵੀ چاہے ਘਰ ਕੱਲੇ ਹੋਈ ਕਈ ਨੌਕਰ ਹੈ ਜੇ ਹੋਣਗੇ ਉਹ ਕੋਲੇ ਹੋਵੇ ਥੋੜੇ ਅੱਖ ਬਚਾਈ ਤੇ ਵੀ ਕੋ ਜੇਬ ਚ ਪਾ ਲੈਣ ਕਿੰਨਾ ਫਰਕ ਦਾ ਦੋਹ ਦੇ ਵਿੱਚ ਦੋਏ ਆਦਮੀ ਦੇ ਕਿੰਨਾ ਫਰਕ ਦਾ ਦੋਹ ਦੇ ਵਿੱਚ ਅਸ ਆਈ ਗੱਲ ਉਹ ਜਿਹੜਾ ਦੇਖ ਕੇ ਰਹਿ ਨਹੀਂ ਨਾ ਸਕਿਆ ਵੀ ਬਚੋਰੀ ਕਰਨਾ ਇਹੋ ਚੋਰ ਨੇ ਸਾਰੇ ਜਿਹੜੇ ਖਲਾਫ ਰਹਿਣਾ ਸਾਰੇ ਇਹੋ ਚੋਰ ਨੇ ਆਪਣੇ ਅੰਦਰ ਦੀ ਕਮਜ਼ੋਰੀ ਇਹਨਾਂ ਨੂੰ ਨਾ ਇਹਨਾਂ ਦੇ ਅੰਦਰ ਕਮਜ਼ੋਰੀ ਹੈ ਉਹ ਔਖਾ ਕਰਦੀ ਹੈ अपनी कमजोरी داری करती है, دی تاں नहीं نہ ہے तो بس ایک تو وہ بھی لکھ رہا ہے رجنیش کنا اک لڑکی ہے جت دریا دے ادھر है, کھڑی ہے دریا دے وچ پانی زیادہ ہے وہ کہہ رہی ہے بھائی mainu मेरे कपड़े पे जान कर कल वो आए हो नाल आदमी जी क सदेसी थी सरयासी का भाई तू मेरे वोट दे भेजा वोट दे बेठालेन पार करेगा पीछो गल्ला करदे आंदे पार करता और उर फिर ओथे गल्ल शुरू कर ली सरयासी ने ओ कहां जाके ओ कहन लगे यार तो और तू दा सदेसिया तय ਇਨਾ ਥੋੜੇ ਨਵਾਜ਼ ਚ ਜੋ ਹਰਤੇ ਕੋ ਮੀ ਜਾਨੀਏ ਤੇ ਮੇਰੀ ਗੱਲ ਤਾਂ ਤੁਸੀਂ ਸੁਣੀ ਹੀ ਨਹੀਂ ਦਾ ਮਤਲਬ ਹੈ ਉਹ ਇੱਕ ਕੰਮ ਸੀ ਉਹਨੂੰ ਲੋੜ થી ਮਾਨੂੰ ਫਾਰ ਕਰਤਾ ਮੈਂ ਤਾਂ ਉਧੀ ਜਾਂਦੀ ਥਿਓ ਤੁਸੀਂ ਲਈ ਫਿਰਦੇ ਹੋ ਤੁਸੀਂ ਤਾਂ ਉਹੀ ਲਈ ਫਿਰਦੇ ਹੋ ਜੋ ਇਹ ਐ ਲਈ ਫਿਰਦੇ ਨੇ ਸਾਰਾ ਦਿਮਾਗ ਚ ਇਸ ਕਰਕੇ ਤਾਂ ਹੀ ਅਸੀਂ ਕਹਿੰਦੇ ਸਾਰਿਆਂ ਦੇ ਬੜਲ ਵਾਲਾ ਨਹੀਂ ਹੈ ਇਹ ਚੈਪਟਰ ਉਹਦੇ ਪੜਨ ਵਾਲਾ ਜਿਹੜਾ ਪਾਸ ਹੋ ਜਪੇ ਪਹਿਲਾਂ ਥੱਲੇੋਂ ਸੜਿਆ ਸੀ ਤਾਂ ਪਾਸ ਸੀਗਾ ਉਹਦੇ ਨਮਾਜ਼ ਕਿਹਦੀ ਗੱਲ ਆਈ ਉਹ ਉੱਥੇ ਹੀ ਫਿਰਨ ਕਰੇ ਫੇ ਤੂੰ ਤਾਂ ਪਿੱਛੇ ਗਿਆ ਤੁਸੀਂ ਤਾਂ ਅਰਥ ਦਾ ਬੂਧੀ ਦੇਖਣਾ ਚਾਹਦੇ ਕਹਿੰਦਾ ਪਰਪਕਾਰ ਦੀ ਗੱਲ ਸੀ ਮੈਂ ਕਰਤੀ ਉਹ ਤਾਂ ਪਰਪਕਾਰ ਸੀ ਉਹਦਾ دریا ਪਾਰ ਹੋ ਗਿਆ ਮੈਨੂੰ ਉਹਦਾ ਸਮਝ ਲੋ ਇਹ ਹੋਊ ਉਹ ਕਹੂ ਬਈ ਬੜਾ ਨੇਕ ਆਦਮੀ ਹੈ ਇੰਨਾ ਤਾਂ ਕਹੂ ਹੈ ਨਾ ਮੈਂ ਦੋ ਜਾਣਾਂ ਦਾ ਉਹ ਚੰਗਾ ਸਨਿਆਸੀ ਸਾਨੂੰ ਤਾਂ ਲੋਕ ਔਰਤਾਂ ਨੂੰ ਨਫ਼ਰਤ ਕਰਦੀ ਜੰਦੇ ਹੈ ਵੀ ਭੈੜੇ ਆਦਮੀ ਨੇ ਸਾਨੂੰ ਨਫ਼ਰਤ ਕਰਦੀਆਂ ਨੇ ਉਹਦੇ ਨਾਲ ਕਿਉਂ ਮੇਰੀ ਨਫ਼ਰਤ ਚਲੀ ਜਾਊਗੀ ਉਹਦਾ ਦਰਿਆਪਾਰ ਹੋ ਗਿਆ ਮੈਨੂੰ ਤਾਂ ਇੰਨਾ ਹੀ ਪਤਾ ਹੈ ਬਸ ਹੋਰ ਪਤਾ ਹੀ ਕਾ ਸਕਦਾ ਨਹੀਂ ਤੂੰ ਪਤਾ ਨਹੀਂ ਕੀ ਨਹੀਂ ਫਿਰਦਾ ਸੋਚ ਆਰ ਵੀ ਬੜੀ ਟੌਪ ਦੀ ਗੱਲ ਕੀਤੀ ਉਹਨੇ ਤੂੰ ਕਹਿੰਦਾ ਘਟਾਉਗੇ ਭੁੱਲੇ ਹੀ ਨਹੀਂ ਉਸ ਗੱਲ ਨੂੰ ਇਹ ਨਾਲ ਤੇਰੇ ਅੰਦਰ ਕਿਤੇ ਚੋਰ ਹੈ ਚੋਰ ਨੂੰ ਤਲਾਸ਼ ਕਰ ਇਸ ਕਰਕੇ ਇਹ ਬਹੁਤ ਪਿੱਛੇ ਰੱਖਿਆ ਹੋਇਆ ਹੈ ਨੇ ਪਹਿਲਾਂ ਰੱਖ ਲਿਆ ਸੀ ਨਾ ਕਾਮ ਕਰੋ ਦਲੋਬਹ ਕਰੋ ਨੇ ਗਲਤੀ ਕੀਤੀ ਸੀ ਉਹੀ ਗਲਤੀ ਸੁਧਾਰੀ ਹੈ ਇਹ ਪੂਰਾ ਪੱਕਾ ਕਰਕੇ ਇਹਨੂੰ ਸਹੀ ਬਣਾ ਕੇ ਫੇਰ ਇਹਨੂੰ ਪੜਾਉਣੇ ਇਹ ਚੈਪਟਰ ਫੇਰ ਦਿਖਾਉਣਾ ਨਕਸ਼ਾ ਹੈ ਕਰਤਾਰ ਦੀ ਰਚਨਾ ਇਹ ਸਾਧੋ ਰਚਨਾ ਰੌਂਗ ਬਣਾਈ ਰਚਨਾ ਦੇ ਬਾਹਰ ਹੈ ਇਹ ਬਾਹਰ ਹੈ ਰਚਨਾ ਤੇ ਪਰ ਕਿਹਾ ਕਿ ਉਹ ਸਾਧ ਨੂੰ ਕਿਹਾ ਸਾਧ ਹੀ ਫੇਰ ਕਿਹਾ ਹੈ ਸਾਧ ਤੇ ਫੜ ਰਾਣੀਆਂ ਤੋਂ ਪਹਿਲਾਂ ਪੜਨ ਵਾਲੀ ਨਹੀਂ ਸਾਧੋ ਰਚਨਾ ਰਚਨਾ ਪਹਿਲਾਂ ਕਾਹਦੇ ਨਹੀਂ ਕਹਤਾ ਭਈ ਇਹ ਗੱਲ ਆਦੇ ਵਿੱਚ ਪਹਿਲੇ ਹੀ ਕਾਦਰ ਹੀ ਕਰਤਾ ਹ ਸ਼ੁਰੂ ਜੇ ਜਦ ਸਾਲ ਹੋ ਗਿਆ ਸਾਧਾ ਨੂੰ ਸਬੋਧਨ ਸਰਫੇ ਸਾਰੀ ਰਚਨਾ ਦਾ ਦਰਸ਼ਨ ਸਾਹ ਦੇ ਕਰਨ ਇਹ ਰਚਨਾ ਦਾ ਕਪੜਾ ਜਾਂ ਚੱਕਲੇ ਦਾ ਸਾਧ ਹੋ ਜਵੇ ਦੇਖਣ ਜੋਗਾ ਹੋ ਜਵੇ ਇਸ ਕਰਕੇ ਅਸੀਂ ਕਹਿੰਨੇ ਲੋਰਡ ਜੀ ਨੂੰ ਪੜ੍ਹਨ ਦੀ ਤੁਹਾਨੂੰ ਕਿਨੇ ਕਹੇ ਤੁਸੀਂ ਪੜ੍ਹੋ ਜਿਹੜੇ ਪੜ੍ਹਦੇ ਨੇ ਤੁਸੀਂ ਕੌਣ ਕੋਲੋਂ ਲੋਰਡ ਕਹਿੰਦੇ ਆਲੇ ਕਲ ਡਾਕਟਰ ਨੇ ਡਾਕਟਰੀ ਪੜ੍ਹਦੇ ਤੁਸੀਂ ਕੱਲ ਹੋਰ ਹੋਰ ਕਹਿ ਦੋਗੇ ਇਹ ਜਾ ਚਲੇ ਜਾਓ ਉੱਥੇ ਡਾਕਟਰ ਦੇ ਕੋਲ ਕਲਾਸ ਦੇ ਵਿੱਚ ਉੱਥੇ ਤਾਂ ਪੜ੍ਹਦੇ ਨੇ ਕੁੜੀਆਂ ਵੀ ਨੇ ਬੁੱਡੇ ਵੀ ਨੇ ਤੁਸੀਂ ਤਾਂ ਹੋਰੇ ਕੋ ਸੋਚੋਗੇ ਉੱਥੇ ਆ ਕੇ ਇੰਨਾ ਕੀ ਫਰਕ ਹੈ ਅਕਤਾਂ ਤੇ ਸਾਰੀਆਂ ਜੋੜ ਗਦਨ ਜੋੜ ਗਦਨ ਆ ਇਹਨਾਂ ਦਾ ਜੋੜ ਕੇ ਮੈਂ ਆ ਜੂਗਾ ਇਹਨਾਂ ਨੂੰ ਜਿਹੜੀ ਚੀਜ਼ ਅਸ਼ਲੀਲ ਲੱਗਦੀ ਹੈ ਇਹ ਲੱਗੇ ਜਿਹਨੂੰ ਤਾਂ ਲੱਗੂ ਹੈ ਇਹਨਾਂ ਨੂੰ ਤਾਂ ਗੁਰਬਾਣੀ ਵੀ ਲੱਗਦੀ ਹੈ ਮੰਨੂ ਜੀ ਜਾ ਸਕਦੀ ਜਿਹਨੂੰ ਤਾਂ ਇਹ ਲੱਗਦਾ ਤੇ ਤਾਂ ਇਹਨਾਂ ਦੇ ਕਹੇ ਤੇ ਹਟ ਜਾਣਾ ਇਹ ਰਹਿਣ ਆਪਣੇ ਘਰ ਠੱਗੇ ਰਹਿਣ ਜਿਹੜੇ ਆਲੂ ਧਾਰਮਿਕ ਵਿਸ਼ਾ ਹੀ ਨਹੀਂ ਇਹਨਾਂ ਦਾ ਪੜ੍ਹੇ ਹੀ ਨਹੀਂ ਤੁਰੇ ਹੀ ਉਹ ਦੋ ਇਹਨੂੰ ਰਹਿ ਦੇਣ ਤੇ ਚੁੱਪ ਕਰਕੇ ਰਾਜ ਬਹਿ ਜਾਣਾ ਆਪਣੇ ਆਰਾਮ ਨਾਲ ਕਰ ਨਾ ਤੁਸੀਂ ਕੋਨਾ ਤੁਸੀਂ ਸਿੱਕੀ ਦਾ ਇੱਕ ਕਦਮ ਚੱਲੇ ਹੋ ਨਾ ਤੁਸੀਂ ਚੱਲਣਾ ਨਾ ਤੁਹਾਡਾ ਵੇਸ਼ ਚੱਲਣਾ ਦਾ ਤੁਸੀਂ ਕੌਣ ਹੋ ਜਿਹਨੂੰ ਰਹਿ ਦੇਣ ਵਾਲੇ ਕੀ ਅਥਾਰਟੀ ਹੈ ਤੁਹਾਡੀ ਕੋ ਰਹਿ ਦੇਣ ਦੀ ਇਹਨਾਂ ਦੇ ਬੱਚੇ ਜੋਗੀਆਂ ਜਨੰਗਾ ਹੀ ਰਹਿੰਦੇ ਨੇ ਦੇਖ ਨਹੀਂ ਉਹ ਸੰਤਾਨ ਦੇ ਜਿਹੜੀਆਂ ਜਨੰਗੇ ਰਹਿੰਦੇ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਪਰ ਜਿਹੜੇ ਉਹਨਾਂ ਦੇ ਸੰਪਰਕ ਇਹਨਾਂ ਉਹਨਾਂ ਨੂੰ ਪੁੱਛੋ ਕਿੰਨਾ ਕਾਜੀ ਬਰਾਮਾ ਤੇ ਤੁਸੀਂ ਤਾਂ ਉਹਨਾਂ ਨੂੰ ਵੀ ਕਹਿਣਾ ਕਿ ਤੁਸੀਂ ਆਪ ਦੇਖੋ ਆਪਣੇ ਅੰਦਰ ਜਾ ਕੇ ਤੁਸੀਂ ਕੀ ਹੋ ਬਜਾਏ ਦੂਏ ਪਾਸੇ ਦੇਖਣਾ ਤੁਸੀਂ ਆਪਣੇ ਆਪ ਦੇਖੋ ਤੁਸੀਂ ਕੀ ਹੋ ਤੁਸੀਂ ਆਪਣੀਆਂ ਕਮਜ਼ੋਰੀਆਂ ਦੂਰ ਕਰ ਲੋ ਲੋਕਾਂ ਨੂੰ ਰਹਿਣ ਦਿਓ ਜਾਂ ਫਿਰ ਜਿਹੜੇ ਹੈਗੇ ਨਿਬੰਦੇ ਆਏ ਹੁਣ ਤੱਕ ਉਹਨਾਂ ਦੇ ਪੈਰ ਵਰਗੇ ਵੀ ਤੁਸੀਂ ਹੈਗੇ ਉਹੀ ਸੀ ਜਿਹੜੇ ਬਸੇ ਰੰਗ ਦਾ ਅਸਰ ਲੈ ਕੇ ਵੱਢ ਕੇ ਉਨੇ ਕਾ ਜੇ ਮਸਲ ਆਇਆ ਤਾਂ ਉਹ ਆਪਸ ਗਣ ਗਰੰਟ ਨੂੰ ਕੋਈ ਜਗਾ ਰਖਣ ਜੇ ਮੈਂ ਸ਼ਹੀਦ ਹੋ ਗਿਆ ਜਾਂ ਮੇਰਾ ਨੁਕਸਾਨ ਹੋ ਗਿਆ ਕੋਈ ਫਿਰ ਤੁਸੀਂ ਐਡ ਐਡ ਕਰ ਦਿਓ ਉਹ ਲਿਆ ਆਇਆ ਫਿਰ ਹਾਲ ਕਰਨੀ ਇਹ ਹੁਕਮ ਪਰਮੇਸ਼ਰ ਦਾ ਹੀ ਆ ਹੁਣ ਉਹਨਾਂ ਨੇ ਇਹਨੂੰ ਪਰਮੇਸ਼ਰ ਦਾ ਹੁਕਮ ਪ੍ਰਕਾਸ਼ ਕਰਤਾ ਇਹ ਮਨਮੁਖ ਫੇਰ ਉੱਠੇ ਇਹ ਮਨਮੁਖਰੇ ਲੋਗ ਇਹਨਾਂ ਲਈ ਕੋਈ ਸ਼ਰਤ ਹੈ ਕੋ ਫਲਨ ਇਹ ਵਨ ਮੁਖਰੇ ਇਹਨਾਂ ਨੂੰ ਕਿਸੇ ਗੁਰੂ ਤੇ ਕਿਸੇ ਪਰਮੇਸ਼ਰ ਤੇ ਭਰੋਸਾ ਨਹੀਂ ਦੀ ਜਿਨ੍ਹਾਂ ਨੂੰ ਭਰੋਸਾ ਹੈ ਉਹਨਾਂ ਦਾ ਭਰੋਸਾ ਇਹਨਾਂ ਦੇ ਘਰ ਦੇ ਡੋਲ ਜਾਊਗਾ ਕਾਹ यूं ਕਹਿਣਾ ਵੀ ਫਿਰ ਤੁਹਾਨੂੰ ਛਤਰਾਂ ਦੀ ਲੋੜ ਹੈ ਫਿਰ ਉਹ ਫਿਰ ਤਾਂ ਹੀ ਵੀ ਇਹਨਾਂ ਨੂੰ ਸੋਤਾ ਲਾਉਣ ਵਾਲਾ ਹੋਰ ਗੱਲ ਕੁਝ ਨਹੀਂ ਵੀ ਤੁਹਾਡਾ ਬੇਸ਼ਾਨੀ ਹਾਂ ਇਹ ਗੱਲ ਹੈ ਤੁਸੀਂ ਸਿੱਖੀ ਛੱਡ ਜੋ ਥੋੜਿਆਂ ਕੋਈ ਬੰਤਾ ਨਹੀਂ ਕਰਦਾ ਵੀ ਉਸ ਸਿੱਖ ਬਣੂ ਤੁਸੀਂ ਸ਼ਰਤ ਤਾ ਰੱਖੋ ਜੇ ਤੁਹਾਨੂੰ ਕੋਈ ਕਹਿੰਦਾ ਹੋਵੇ ਤੁਸੀਂ ਸਿੱਖ ਬਣੋ ਤੁਸੀਂ ਕਹੋ ਵੀ ਜੇ ਇਹ ਪਾੜ ਸਿੱਖੀ ਦਾ ਤੁਸੀਂ ਰੱਖਣਾ ਪਈ ਹੁੰਦੀ ਸਿੱਖੀ ਛੱਡਤੀ ਤੁਸੀਂ ਆਪਣਾ ਕੋਈ ਹੋਰ ਤਰ ਹੋਰ ਤਰ ਪੈタル ਗੱਲੋ ਨਾ ਗਾਲੀ ਨਾ ਹੋ ਬਣਜੋ ਰਾਧਾ ਸਵਾਮੀ ਬਣਜੋ ਇਹ ਜਿਹੜਾ ਤੁਹਾਨੂੰ ਚੱਲਦਾ ਲੱਗਦਾ ਉਧਰ ਚਲੇ ਜਾਓ ਜਾਂ ਕੋਈ ਨਵਾਂ ਤਰ ਬਹੋਰ ਬਣਾ ਲਓ ਤਾਂ ਸ਼ਰਤਾਂ ਤੁਸੀਂ ਤਾਂ ਰੱਖੋ ਜੇ ਅਸੀਂ ਕਈ ਹਾੜੇ ਹਾੜੇ ਤੁਸੀਂ ਸਿੱਖ ਬਣੋ ਵੀ ਸਾਨੂੰ ਛੱਡ ਕੇ ਰਲ ਜਾਓ ਅਗੀ ਤਾਂ ਕਹਿਣਾ ਤੁਸੀਂ ਸਾਡਾ ਘੜਾ ਛੱਡੋ ਪਰੇ ਹੋ ਥੋਤੇ ਦੀ ਲੈਣ ਦੀ ਹੈ ਕਾਂਦਿਆਰੀ ਤੇ ਲੈਣਾ ਕੀ ਹੈ ਤੁਸੀਂ ਕਹਿੰਨ ਉਹ ਘਟੋ ਜਰੂਰ ਉਹ ਮੇਰੇ ਤੇ ਉਹ ਕਹਿੰਦਾ ਘਟਲ ਦੋ ਉਹ ਤਾਂ ਇਹਨੂੰ ਦਗਾਲਦੇ ਠੜੇ ਦੇ ਨਹੀਂ ਜਾਣ ਦਿੰਦੇ ਸਿਕਰੇ ਕਰਨ ਉਹ ਢੜੇ ਦੋ ਤੂੰ ਮੇਰਾ ਘਟ ਕੇ ਦੋਲ ਦਿਓ ਇਹਨੇ ਮੂਰਖ ਰਾਲਾ ਬਦਲੇ ਭਾਈ ਜਾਨ ਆਪੇ ਹਟ ਜਾਣਗੇ ਜਿਉ ਜੋ ਪਤਾ ਲੱਗਦਾ ਜਾਂਦਾ ਉਸ ਵਕਤ ਨੂੰ ਸਾਰੇ ਛੱਡਦੇ ਜਾਂਦੇ ਨੇ ਉਹਨੇ ਇਕੱਲਾ ਹੀ ਐ ਇਹਦੇ ਨਾਲ ਕੋਈ ਨਹੀਂ ਜਿਉ ਜੋ ਇਕੱਲੇ ਜਾਣੀ ਆਉਣਾ ਜੋ ਆਪਾਂ ਬੋਲਦੇ ਹਾਲ ਤੱਕ ਕੋਈ ਬੋਲਿਆ ਨਹੀਂ ਸੀਦਾ ਦੂਏ ਪਾਸੇ ਜੇ ਦੂਏ ਪਾਸੇ ਬੋਲਣ ਲੱਗ ਗਏ ਇਹ ਜਿਹੜਾ ਰਹਿਣਾ ਹੀ ਕੋਈ ਨਹੀਂ ਜਿਹੜੇ ਸਿੱਖ ਨੇ ਉਹ ਤਾਂ ਰਹਿਣਾ ਨਹੀਂ ਇਹ ਜੇ ਬੂਰਖ ਰਹਿ ਜਾਣਗੇ ਪੰਜ ਸੱਤ ਜਿਹੜੇ ਇਹਦੇ ਬਾਰੇ ਬੂਰਖ ਨੇ ਨਾ ਉਹ ਰਹਿ ਜਾਣਗੇ ਉਮਰ ਮੁਖਦਰੀ ਆਪੇ ਤੇ ਨਾ ਪੱਜੀ ਪੱਥਰ ਨੂੰ ਆਈ ਪੱਥਰ ਉੱਤੇ ਕਹੂੰ ਬੇਰ ਕੇ ਵਜਈਆ ਕਹੂੰ ਤੀਨ ਕੇ ਚਰਈਆ ਕਹੂੰ ਬੇਰ ਕੇ ਵਜਈਆ ਕਹੂੰ ਤੀਨ ਕੇ ਚਰਈਆ ਕਿਤੇ ਬੇਰ ਦਾ ਵਜਈਆ ਫੇਰ ਵਜਾਉਂਦੇ ਕ੍ਰਿਸ਼ਨ ਵਾਲੀ ਬੰਸਰੀ ਦੀ ਗੱਲ ਹੈ ਗੱਲ ਕ੍ਰਿਸ਼ਨ ਦੀ ਹੈ ਕ੍ਰਿਸ਼ਨ ਦੀ ਨਹੀਂ ਹੈ ਬੇਰ ਕੇ ਜਿਹੜਾ ਹੈ ਆਪਣੀ ਸੁਰ ਕੱਢਦਾ ਨਾ ਹੁਕਮ ਕੀ ਇਹ ਮਨ ਭਾਉਂਦੇ ਇਹ ਵੀ ਬੇਰ ਕੇ ਵਜਈਆ ਹੈ ਆ ਸੰਤ ਜੀ ਦੀ ਗੱਲ ਹੈ ਕਹੂੰ ਤੇਨਕੇ ਚ ਰਹੀਆ ਉਹ ਤੇਨਕੇ ਚ ਰਹੀਆ ਕਿਤੇ ਗਈਆ ਚਾਰ ਦਾ ਤੇਨਕਾ ਚ ਰਹੀਆ ਇਹ ਵਾਲਾ ਸਰੀਰ ਨੂੰ ਸ੍ਰੀ ਬਾਤ ਫਿਰਦਾ ਨਾ ਪੂਰਿਆ ਸਰੀਰ ਪਾਲਣਾ ਕਰਦਾ ਹੈ ਪਸ਼ੂ ਹੈ ਪਸ਼ੂ ਕੀ ਕਰਦਾ ਸਰੀਰੇ ਪਾਲਦਾ ਆਪਣਾ ਇਹ ਸਰੀਰ ਪਾਲਦਾ ਆਪਣਾ ਤੇਨਕਾ ਚ ਰਹੀ ਗਿਆ ਬਹੁ ਲੱਖਾਂ ਨਾਲ ਲਵਈਆ ਕਹੂੰ ਸੁੰਦਰ ਕੁਮਾਰ ਹੋ ਕਹੂ ਲੱਖਾਂ ਨਾਲ ਰੁਪਈਆ ਕਿਤੇ ਲੱਖਾਂ ਨਾਲ ਮਤਲਬ ਹੈ ਵਪਾਰ ਕਰਦਾ ਉਹ ਲੱਖਾਂ ਕਹੂ ਲੱਖਾਂ ਨਾਲ ਰੁਪਈਆ ਆਹੋ ਰੁਪਈਆ ਰੁਪਈਆ ਮਤਲਬ ਪ੍ਰਾਪਤ ਕਰ ਲੈਣਾ ਕਹੂ ਸੁੰਦਰ ਕੁਮਾਰ ਹੋ ਕਿਤੇ ਸੁੰਦਰ ਕੁਮਾਰ ਹੋ ਕਿਤੇ ਲੱਖਾਂ ਰੁਪਈਆ ਦਾ ਮਤਲਬ ਹੈ ਪਪਾ ਉਹ ਖੱਟੀ ਖਾਂਦਾ ਹੂੰ ਸੁੰਦਰ ਕੁਮਾਰ ਹੋ ਕਿਤੇ ਸੁੰਦਰ ਕੁਮਾਰ ਹੈ ਸੁੱਧਤਾ ਦੀ ਸ਼ਾਨ ਹੋ ਕਿ ਸੰਤਨ ਕੇ ਪ੍ਰਾਣ ਹੋ ਸੁੱਧਤਾ ਦੀ ਸ਼ਾਨ ਹੋ ਸ਼ੁੱਧਤਾ ਦੀ ਸ਼ਾਨ ਹੈ ਕਿਤੇ ਤੂੰ ਸ਼ੁੱਧ ਨਹੀਂ ਹੈ ਸ਼ੁੱਧਤਾ ਦੀ ਵੀ ਸ਼ਾਨ ਸ਼ੁੱਧ ਕਰਨ ਵਾਲਾ ਆਪ ਤਾਂ ਸ਼ੁੱਧ ਹੈਈ ਦੂਜਿਆਂ ਨੂੰ ਸ਼ੁੱਧ ਕਰਨ ਵਾਲਾ ਸੰਤਨ ਕੇ ਪ੍ਰਾਣ ਹੋ ਕਿ ਸੰਤਨ ਕੇ ਪ੍ਰਾਣ ਹੋ ਕੇ ਸੰਤਾ ਦੇ ਪ੍ਰਾਣ ਹੈ ਤੂੰ ਸੰਤਾ ਦੇ ਪ੍ਰਾਣ ਹੈ ਦੂਜਾ ਦੇ ਦੀ ਸੰਤਨ ਕੇ ਪ੍ਰਾਣ ਲਿਖੇ ਮਨ ਮੁਖਾ ਦੇ ਪ੍ਰਾਣ ਨਹੀਂ ਮਨ ਦੇ ਪ੍ਰਾਣ ਵਾਯੂ ਹੁੰਦੀ ਹੈ ਉਹ ਤਾਂ ਹਵਾ ਪ੍ਰਾਣ ਹੁੰਦੀ ਆ ਨਾ ਸੰਤਨ ਕੇ ਪ੍ਰਾਣ ਤੂੰ ਐ ਜਿੰਨਾ ਜਦ ਤੂੰ ਐ ਸੰਤਨੀ ਮਰਦੇ ਉਹਦੇ ਇਹਨੇ ਪ੍ਰਾਣ ਤੈਨੂੰ ਬਣਾ ਲਿਆ ਤੇ ਫਿਰ ਉਹ ਤਾਂ ਮਰਦਾ ਨਹੀਂ ਜਿਹਦਾ ਪ੍ਰਾਣ ਵਾਯੂ ਹੈ ਉਹ ਜਦੋਂ ਮਰਦਾ ਵਾਇਆ ਨਾਲ ਉਹਦੇ ਪ੍ਰਾਣ ਆਇਆ ਕਿ ਦਾਤਾ ਮਹਾਦਾਨ ਹੋ ਕਿ ਦਾਤਾ ਮਹਾਦਾਨ ਹੋ ਮੈਨੂੰ ਸਮਝ ਨਹੀਂ ਆਉਂਦੀ ਤੂੰ ਕੀ ਹਮ ਸਰੀਰ ਹੈ ਤੂੰ ਦਾਤਾ ਮਹਾਦਾਨ ਹੋ ਤਾ ਤਮੰਦਾਰ ਵੀ ਦੋਈ ਇੱਕ ਇੱਕ ਦੀ ਗੱਲ ਚੱਲਦੀ ਐ ਇੱਥੇ ਹਰ ਜਗ੍ਹਾ ਇੱਕ ਗਨ ਕਿਨਰ ਹੈ ਜਿਹਨੂੰ ਕੋਈ ਦੋਖੇ ਇੱਕ ਹੋ ਕੇ ਉਗਵੇ ਨਿਰੰਕਾਰ ਉਹਦਾ ਦੇਸ ਵੱਖਰਾ ਹੋ ਜਾਂਦਾ ਉਹ ਇੱਥੇ ਨਹੀਂ ਰਹਿੰਦਾ ਫਿਰ ਨਿਰਦੋਖੀ ਨਿਰੰਕਾਰ ਐਦਨੋਂ ਪੱਟ ਕੇ ਜਾ ਉਹਦਾ ਲੱਗਿਆ ਨਿਰੰਕਾਰ ਹੈ निर्दोक कोई दोख नहीं होच निर्जुर निरूप हो कि सुंदर स्वरूप हो निर्जुर रूप विरूप हो निर्जुर जरा रोग तो रहत रूप है दी और जरा रोग भी है दी निर्जुर निरूप हो रूप भी है दी ਸੁੰਦਰ ਸਰੂਪਾ ਰੂਪਤਾ ਹੈਗਾ ਪਰ ਪਰ ਰੂਪ ਜਰਾ ਰੋਗ ਵਾਲਾ ਲੀਕ ਦ ਰੂਪ ਹੈ ਇਹ ਜਿਹੜਾ ਰੂਪ ਜਿਹੜਾ ਖਾਲੂ ਦਿਖੇ ਜਿੱਥੇ ਰੇਖਾ ਖਿੱਚਦੀ ਹੈ ਜੋ ਚੀਜ਼ ਦਾ ਵਜੂਦ ਹੈ ਉਹਦਾ ਰੂਪ ਹੀ ਹੈ ਮੂਰਤ ਹੈ ਅਕਾਲ ਮੂਰਤ ਲਿਖਿਆ ਤਾਂ ਹੋਇਆ ਪਰ ਬਿਆਨ ਨਹੀਂ ਕੀਤੀ ਜਾਂਦੀ ਮੂਰਤ ਮੂਰਤ ਜ਼ਰੂਰ ਹੈ ਪਰ ਬਿਆਨ ਤੋਂ ਬਾਹਰ ਅੱਖ ਨੂੰ ਦੇ ਨਹੀਂ ਦਿ ਲੋ ਜੋ ਅੱਖ ਨੂੰ ਦਿਦਾ ਹੋਇਆ ਹੈ ਦੀ ਦੱਸ ਕੀ ਕਿ ਭੂਪਰ ਮੈਂ ਤਾਂ ਦੇਖਦੀ ਪਰਵਾਨਾ ਜਿਹੜਾ ਦੇਖੂ ਦੱਸਿਆ ਦੀ ਜਾ ਸਕਦਾ ਬੁੱਝਣ ਵਾਲੀ ਗੱਲ ਹੈ ਦੇਰ ਜੁਰ ਦਿ ਰੂਪ ਹੋ ਕਿ ਹੋ ਦਿਨ ਹੋ ਦਿ ਸੁੰਦਰ ਸਰੂਪ ਹੋ ਤੈਨੂੰ ਕੀ ਖਾਣ ਜੇ ਰੂਪ ਕਾਹਿਆ ਸੁੰਦਰ ਸਰੂਪ ਕਹ ਦੱਸ ਕੀ ਕਹੋ ਪੂਪਨ ਕੇ ਪੂਪੋ ਕੇ ਪੂਪਨ ਕੇ ਪੂਪੋ ਜਰਾ ਬੈਠੇ ਨੇ ਇੱਥੇ ਚਾਹੇ ਤਰਪ ਕਰ ਚਾਹੇ ਦੂਏ ਨੇ ਤੇ ਤੜ ਜਿਹੜਾ ਗੁਰੂ ਹੰਦ ਦਾ ਤਰਪ ਕਰਾ ਜਾਂਦਾ ਤੇ ਉਹਦਾ ਕੌਣ ਹੈ ਰਾਜਾ ਤੂ ਫਿਰ ਉਹਦਾ ਤੇ ਤੇਰਾ ਤਾਂ ਦਾਸ ਹੋਇਆ ਨੋ ਤੇਰਾ ਤਾਂ ਦਾਸ ਜਿਹਨੇ ਤਾਂ ਦਾਸ ਬਣ ਲਿਆ ਆਪਣੇ ਆਪ ਨੂੰ ਉਹਨਾਂ ਦਾ ਨੂੰ ਬੋਗੂ ਦਾ ਬੋਗਲਿਆ ਮੰਨ ਜੇ ਆਪਣੇ ਆਪ ਨੂੰ ਗੁਰੂ ਬਣਿਆ ਉਹਨੂੰ ਦਾਸ ਨਹੀਂ ਆਪਣੇ ਆਪ ਨੂੰ ਕਿਹਾ ਤਾਂ ਉਹ ਲੋੜੀ ਬਣਿਆ ਉਹਨੇ ਉਹ ਰੂਬਰ ਆਪਣ ਨੂੰ ਬਡਾਰੀ ਬਣਿਆ ਉਹ ਬੜਾ ਕਹਦਾਤਾ ਮਹਾਦਾਨ ਹੋ ਕਿਉਂਕਿ ਉਹ ਕਹਿ ਵੀ ਦਿੱਤਾ ਫਕਤ ਬਰਾਬਰ ਹੋਣਾ ਕੋਈ ਭੰਡਰਪਤੀ ਰਾਜਾ ਪੰਡਤ ਸੂਰਛਤਰਪਤੀ ਰਾਜਾ ਤੋਂ ਵੱਡਾ ਕਹਿ ਵੀ ਦਿੱਤਾ ਸੰਸਾਰ ਦੇ ਨਾਲ ਕਰ ਕਰਕੇ ਕਿਹਾ ਉਹਦੇ ਮੂਰੇ ਉਹ ਕੁੰਦੇ ਅੱਗੇ ਧਾਸ ਹੁਕਮ ਨੇ ਅੱਗੇ ਧਾਸ ਹੈ ਕਿ ਦਾਤਾ ਮਹਾਦਾਨ ਹੋ ਕਿ ਦਾਤਾ ਮਹਾਦਾਨ ਹੋ ਕਿ ਦਾਤਾ ਐਸਾ ਹੈ ਐਸਾ ਦਾਤਾ ਜਿਹੜਾ ਮਹਾਦਾਨੀ ਹੈ ਬਾਦਾਨ ਨਾਮ ਦਾ ਦਾਨ ਇਹ ਤੋਂ ਬੜਾ ਦਾਨ ਨਹੀਂ ਕੋਈ ਕੇ ਬਚਈਆ ਦੁੱਧ ਪੂਤ ਕੇ ਦਬਈਆ ਪ੍ਰਾਂਕਾ ਬਚਈਆ ਪ੍ਰਾਂਕਾ ਬਚਈਆ ਕੌਣ ਦੁੱਧ ਬੂੰਦ ਕੇ ਦੇ ਬਈਆ ਦੁੱਧ ਪੂਰ ਬਾਹਰਾ ਲੀਆ ਉਹਨੇ ਦੁੱਧ ਕੁਰਬਾਨੀ ਹੈ ਪੂਦ ਗਿਆਨ ਵੀਰ ਕੋਈ ਲੜਕਾ ਵੇਚੀ ਲੜਕੀ ਵੇਚ ਕੋਈ ਖਵੀਰ ਕਹਿੰਦਾ ਨਾ ਉਹੀ ਗੱਲ ਹੈ ਜਿਹੜੀ ਬੁੱਧ ਹੈ ਜਗਿਆਨ ਉਧਰ ਤਰੀ ਅਬ ਕੀ ਸੁੰਦਰ ਸਰੂਪ ਸੁਲਖਣੀ ਸਹਿਜੇ ਉਧਰ ਤਰੀ ਉਦੇ ਉਧਰ ਵਿੱਚ ਕੀ ਹੈ ਸਹਿਜ ਪਾ ਰਹਿਆ ਸਹਿਜ ਅਵਸਥਾ ਪਾ ਰਹੀ ਹੈ ਪ੍ਰਾਣ ਕੇ ਬਚਈਆ ਪ੍ਰਾਣ ਪੂਤ ਕੇ ਦਵਈਆ ਗੁਰਬਾਣੀ ਦੁੱਧ ਹੈ ਇਹਨੇ ਜੇ ਗਿਆਨ ਹੈ ਪੂਤ ਹੈ ਹੈ ਜੇ ਤੱਤਾ ਉਹੀ ਹੈ ਪ੍ਰਾਣ ਕੇ ਪੂਤ ਦੁੱਧ ਪੂਤ ਕੇ ਦਵਈਆ ਇਹ ਦੁੱਧ ਪੂਤ ਦਾ ਦਵਈਆ ਤਾਹੀ ਪ੍ਰਾਨ ਵਚਣਗੇ ਪ੍ਰਾਨ ਕਿਵੇਂ ਵਚਣਗੇ ਪ੍ਰਾਨ ਨਹੀਂ ਵਚਣਿਆ ਸਾਜੀਵ ਨਹੀਂ ਹੋ ਸਕਦਾ ਕਦੇ ਵੀ ਜੇ ਗੁਰਬਾਣੀ ਦੇ ਵਿੱਚੋਂ ਗਿਆਨ ਨਾ ਮਿਲਿਆ ਜੇ ਤਤ ਨਾ ਜੇ ਮੱਖਣ ਨਾ ਖਾਦਾ ਸਭ ਮੱਖਣ ਖਾਇਆ ਪੀਏ ਜੇ ਇਹ ਨਾ ਖਾਦਾ ਪ੍ਰਾਨ ਨਹੀਂ ਵਚਣੇ ਸਾਜੀਵ ਨਹੀਂ ਹੋਣਾ ਹੈ ਉਹ ਉਹ ਅਰਥ ਨਹੀਂ ਲਾ ਸਕਦੇ ਜਿਹੇ ਬੰਦ ਲਾਈ ਜਾਂਦਾ ਹੈ ਉਹਦਾ ਸੰਸਾਰੀ ਅਰਥ ਵਿੱਚ ਦੁੱਧ ਪੁੱਤ ਉਹ ਪੁੱਤ ਤਾਂ ਮੰਦੀਆ ਨਹੀਂ ਕਿਸ ਰੂਪ ਗੁਰਬਾਨੀ ਜੇ ਤੋ ਕਹਿਣਾ ਕੋਈ ਪੁੱਤ ਨਹੀਂ ਹੁੰਦਾ ਕੋਈ ਧੀ ਨਹੀਂ ਹੁੰਦੀ ਕੋ ਪਿਆਰੀ ਨਹੀਂ ਹੁੰਦਾ ਕੋ ਵਾਲੀ ਨਹੀਂ ਹੁੰਦੀ ਫਿਰ ਅਸੀਂ ਪੁੱਤ ਕਿਵੇਂ ਗੱਲ ਕਰਾਂਗੇ ਇੱਥੇ ਆਤਮਾ ਦਾ ਸਬਦ ਦੁੱਧ ਹੋਰ ਪੁੱਤ ਗੁਰਬਾਨੀ ਦਾ ਆਤਮਾ ਦਾ ਸਬਦ ਆਪਾਂ ਨੂੰ ਹੁੰਦਾ ਕਿਹੜਾ ਆਤਮਾ ਵਾਸਤੇ ਦੁੱਧ ਕੀ ਹੈ ਗੁਰਬਾਨੀ ਛਾਚ ਪੀਏ ਸੰਸਾਰ ਸੰਤੋਂ ਮੱਖਣ ਖਾਇਆ ਉਹ ਮੱਖਣ ਪੁੱਤਾ ਦੁੱਧ ਦੇ ਵਿੱਚੋਂ ਦਾਤਾ ਉਹਦਾ ਪੁੱਤਾ ਉਹ ਦੋਈ ਪੁੱਤਾ ਰੜਕਣਾ ਕਿਨੇ ਯਨੇ ਰੜਕਣਾ ਉਹਨੇ ਪ੍ਰਾਪਤ ਕਰਨਾ ਜਿਹਨੂੰ ਬੁਲਾਇਆ ਤਨ ਖਾਇਆ ਵਰ ਬੁਲਾਉਣਾ ਹਾਂ ਅਰ ਬੁਲਾਉਣਾ ਬੁਧਿਨਾ ਰੜਕਣਾ ਬੁਧਿਨਾ ਮਨਚਿਤਨਾਏ ਕਾਗਜ਼ਾ ਰੜਕਣਾ ਉਹ ਪ੍ਰਾਪਤੀ ਜੋ ਹੋਣੀ ਆ ਉਹ ਪੁੱਤਾ ਬੰਦਾ ਹੈ ਉਹ ਤਾਂ ਕਹਿੰਦੇ ਨੇ ਜਾਂ ਕੁਰਬਾਨੀ ਨੂੰ ਵਿਚਾਰ ਦੇ ਮਨੁੱਖੀ ਪਰ ਇੱਕ ਹੋ ਕੇ ਉਹਨੂੰ ਵਿਚਾਰਦੀ ਹੈ ਫਿਰ ਪੂਤ ਬਣਦਾ ਇਹ ਸਿਰੂ ਕਹੋਂਦੇ ਨੇ ਰੋਗ ਕੇ ਮਟਈਆ ਰੋਗ ਸੋਗ ਕੇ ਲੋਕ ਸੋਗ ਦਾ ਆਪੇ ਮਟਈਆ ਰੋਗ ਸੋ ਤਾਂ ਜੇ ਰੋਗ ਸੋਗ ਨੂੰ ਬਚਣਗੇ ਤਾਂ ਪ੍ਰਾਣ ਬਚਣਗੇ ਪ੍ਰਾਣ ਬਚੇ ਤਾਂ ਹੀ ਰੋਗ ਦਾ ਬਚੇਗਾ ਹਾਂ ਕਿ ਮੰਨ ਕਦੋਂ ਮੰਨੀ ਮਾਨ ਹੋ ਕੇ ਬਾਣੀ ਬਾਹਾਰੋ ਐਸੀ ਮੰਨਤਾ ਨਾਲ ਪ੍ਰਾਪਤ ਹੁੰਦੀ ਹੈ ਜਿਹਨੂੰ ਮਹਾਮਾਨ ਜੋ ਸੱਚਖੰਡ ਦੀ ਬੋਲਤਾ ਉਹ ਪ੍ਰਾਪਤ ਹੁੰਦੀ ਹੈ ਸੰਸਾਰ ਦੀ ਬੋਲਤਾ ਨਹੀਂ ਹੁੰਦੀ ਪ੍ਰਾਪਤ ਸੱਚਖੰਡ ਪ੍ਰਵਾਨ ਹੋ ਜਾਂਦੀ ਹੈ ਭਗਤੀ ਉਹ ਪੰਜ ਪ੍ਰਵਾਨ ਪੰਜ ਪ੍ਰਦਾਨ ਜਿਹੜਾ ਪ੍ਰਵਾਨ ਹੋ ਜਾ ਦਰਗਾਹ ਦੇ ਵਿੱਚ ਦਰਗਾਹ ਜਿਹੜੀ ਭਗਤੀ ਨੂੰ ਦਰਗਾਹ ਜਮਾਨਤਾ ਮਿਲ ਜਾਏ ਕੋਈ ਮਾਨੀ ਹੈ ਭਗਤੀ ਕੌਣ ਚੇ ਦਰਗਾਹ ਮਾਨ ਕੇ ਵਿਚਾਰ ਹੋ ਵਿਦਿਆ ਕੇ ਵਿਚਾਰ ਹੋ ਵਿਦਿਆ ਵਿਦਿਆ ਵਿਚਾਰੇ ਤੇ ਬਿਨਾ ਦੇਖੋ ਉਹ ਵਿਦਿਆ ਵਿਚਾਰੇ ਰਹੇ ਆ ਕਾਜ਼ੀ ਨਾਲ ਜੇ ਵਿਦਿਆ ਨਾਲ ਵਿਚਾਰੇ ਦੇ ਅਰਥ ਦੀ ਸੀ ਉਹ ਜੇ ਵਿਦਿਆ ਬਿਨਾ ਵਿਚਾਰੇ ਤੇ ਅਰਥ ਕਰਦੇ ਹੱਥੋੜ ਬਣ ਜਰਦੇ ਇਸੇ ਤਰ੍ਹਾਂ ਇਹ ਹੀ ਵਿਦਿਆ ਵਿਚਾਰੀ ਵਿਦਿਆ ਵਿਚਾਰ ਨਾਲੇ ਲੇ ਲੇ ਤਾ ਜੇ ਵਿਦਿਆ ਦੇ ਲਫਜ਼ੇ ਵਿਚਾਰੇ ਨਾ ਜਾਂਦੇ ਪੂਤ ਕੀ ਹੈ ماں ਕੀ ਹੈ ਦੁੱਧ ਕੀ ਹੈ ਕੀ ਹੈ ਉਹ ਕੀ ਹੈ ਤਾਂ ਇਹਦੇ ਹੋ ਕੀ ਅਦਵਾ અવਤਾਰ ਹੋ ਅਦਵਾ ਹੋ ਵਿਦਿਆ ਦਾ ਵਿਚਾਰ ਕਰ ਲੂਗਾ ਫਿਰ ਅਦਵਾ અવਤਾਰ ਹੋ ਜੂਗਾ ਅਦਵਾ અવਤਾਰ ਕਹਿੰਦੇ ਜੀ ਤਾਂ ਦੁਆਇਤ ਹੋਵੇ ਹੀ ਨਾ ਕੋਈ ਬੈਟੀ ਜਬ ਵਿਦਿਆ ਦਾ ਵਿਚਾਰ ਹੈ ਤਾਂ ਆਦਵਾ অবতার ਵੀ ਹੈ ਨਾਲੇ ਜਦ ਹੀ ਵਿਦਿਆ ਦਾ ਵਿਚਾਰੀ ਗੱਲ ਕੋਈ ਦੋਏ ਲੋ ਹੋ ਕੀ ਸੂਰਤ ਹੋ ਕੇ ਸੁੱਧਤਾ ਕੀ ਸ਼ਾਹ ਕੀ ਸੂਰਤ ਹੈ ਸੁੱਧਤਾ ਹੀ ਸੁੱਧਤਾ ਕੀ ਸੂਰਤ ਹੋ ਸੂਰਤ ਕਿਹਨੂੰ ਕਹਿੰਦੇ ਨੇ ਸੂਰਤ ਨੂੰ ਕਹਿੰਦੇ ਨੇ ਸ਼ਕਲ ਨੂੰ ਆਪਾਂ ਕਹਿੰਦੇ ਸ਼ਕਲ ਸੂਰਤ शुद्धता ਦਾ ਰੂਪ शुद्धਤਾ ਦਾ ਰੂਪ ਹੈ ਤੂੰ शुद्धਤਾ ਕੀ ਹੁੰਦੀ ਹੈ ਕਿ ਉਹ ਵਕੀਲ ਤਾਂ ਉਹ ਸੁੱਧਾ ਦੀ ਸੂਰਤ ਉੱਪਰ ਤੋਂ ਹੀ ਕੀ ਕਿ ਸੁੱਧਾ ਦੀ ਸ਼ਾਨ ਹੋ ਦੀ ਸ਼ਾਨ ਹੋ ਸੁੱਧਤਾ ਦੀ ਸ਼ਾਨ ਵਧਾਉਂਦੀ ਸੰਸਾਰ ਦਾ ਦੱਸਦੀ ਵਿਸ਼ੋਤਾ ਚੀਜ਼ ਹੁੰਦੀ ਹੈ ਸੁੱਧਤਾ ਯੋਰ-ਯੋਰ ਵੜੇ ਬੈਠਣ ਨਾਲ ਹੁੰਦਾ ਹੱਥ ਧੋ ਕੇ ਕਹਿੰਦੇ ਨੇ ਸੁੱਧਾ ਹੋ ਗਿਆ ਜੀ ਸੋਚਾ ਹੋ ਗਿਆ ਸੋਚੇ ਨਾ ਅਖੀਰ ਬਹਿਣੇ ਪਿੰਡਾ ਤੋਂ ਜਾਂ ਸੋਚੇ जिन ਨਾਨਕਾ ਜੀ ਜਨਮ ਵਸਿਆ ਸੋਏ ਕਿਹਾ ਫਿਰ ਸੋਤਾ ਦੀ ਸ਼ਾਨ ਵਧੀ ਸੋਤਾ ਦੀ ਸ਼ਾਨ ਕਰਤੀ ਨਾ ਇਹ ਨਹੀਂ ਅਣ ਸੱਚੇ ਇਹ ਨਹੀਂ ਅਣ ਸ਼ੁੱਧ ਜਿਹੜੇ ਪਿੰਡਾ ਤੋਂ ਕੇ ਬਹਿ ਗਏ ਸੱਚਾ ਕੋਣਾ ਜੇ ਜਨਮ ਵਸਿਆ ਸੋਏ ਇਹ ਨਵਾਂ ਚ ਵਸ ਗਿਆ ਨਵਾਂ ਦਵੈ ਅਵਤਾਰ ਅਦਵੈ ਅਵਤਾਰ ਜੋਬਨ ਕੇ ਜਾਲ ਹੋ ਕਿ ਕਾਲ ਆ ਗਿਆ ਜੋਬਨ ਕੇ ਜਾਲ ਜੋਬਨ ਦੀ ਗੱਲ ਹੈ ਜਲਦੀ ਤੇਰੀ ਅਜੰਤਰ ਤੇ ਜਲਦੀ ਆ ਨਾ ਰੂਪ ਦਾ ਬਹੁਤ ਕਥਨ ਜੋਬਨ ਜਾਲ ਹੈ ਕਹਿੰਦੇ ਜੋਬਨ ਦਾ ਜਾਲ ਹੈ ਕ ਨਾਲ ਆਈ ਜਾਣੀਏ ਲੋਗਨ ਤੇਰੀ ਅਜਰਤ ਨਾਲ ਜੇ ਜੋਵਨ ਨੂੰ ਜੋਵਨ ਦੇਖੋਗੇ ਜਾਲ ਚ ਫਸ ਜਾਓਗੇ ਜੋਵਨ ਨੂੰ ਜਾਲ ਬਨ ਕੇ ਚੱਲਣਾ ਜੋਵਨ ਜਾਓ ਜੋਵਨ ਜਾਲ ਹੈ ਇਹ ਜੰਮਦਾ ਜਾਲ ਹੈ ਸੰਸਾਰ ਜਾਲ ਹੈ ਇਹ ਚ ਸਰਬੱਤੀ ਕੁਝ ਖੱਟਣ ਵਾਸਤੇ ਆਇਆ ਅੱਜ ਫਸਣ ਵਾਸਤੇ ਨਹੀਂ ਆਇਆ ਇਹ ਚ ਬੋਤੀ ਹੀਰੇ ਚੁਗ ਲੈਣੇ ਨਾ ਜਾਲ ਚ ਨਹੀਂ ਫਸਣਾ ਜੇ ਮੋਹ ਪਾਇਆ ਜਾਲ ਚ ਫਸ ਗਿਆ माया मायाला मो वाले झाड़ज पर के फिर माया फिर की खाऊगा कौवा की खाल काने फिर हंस नहीं फिर कौवा बन गया ये फिर फिर बगला बन गया डड्डा पर लण जाए ये त राणा हंस बन गई ऐच फिर तारे जो तत ज्ञान के उले तत जो ऐसे तत जोगा एक से तत का चुगदे ਇਹ ਤੱਤ ਚੋਗੇ ਨੇ ਤਨ ਕੋ ਫਾਸਨਾ ਰਜ ਚ ਫੇਰ ਨਹੀਂ ਕੁਲੂ ਰਜ ਜੇ ਨਹੀਂ ਫਾਸਣੀ ਜੇ ਤੱਤ ਚੋਗਿਆ ਮੈਲ ਇੱਕ ਸੇ ਤਾਕੋ ਫਾਸਨਾ ਹਾਂ ਚ ਰਜ ਜਦ ਉਹ ਝੁਗਦੇ ਨਾ ਸੁਣਦੇ ਉਹ ਜੋ ਬੰਦੇ ਕੈ ਲਾ ਰਹੇ ਨੇ ਉਹ ਤਾਂ ਤੱਤੇ ਜੁਗ ਰਹੇ ਨੇ ਫਜ਼ਰੀ ਆਣ ਜੋ ਬੰਦੇ ਜਾਲ ਚ ਤੱਤੇ ਜੁਗੇ ਮਿਲੇ ਇੱਕ ਸੇ ਤਾਗੋ ਫਾਸਨਾ ਰੰਚ ਜਿਹੜੇ ਕਾਗਨੇ ਉਹ ਕਰਨੇ ਡਰੋ ਉਹ ਤਾਂ ਉਹ ਉਹ ਜੁੜ ਜਾਂਦੇ ਨੇ ਕਰਕਟਰੋਲ ਨੇ ਉਹਦੀ ਉੱਢਦੇ ਜੋ ਬੰਨ ਕੇ ਜਾਲ ਹੋ ਕਿ ਕਾਲ ਹੂ ਕਿ ਕਾਲ ਹੋ ਜੋ ਬਨ ਕੇ ਜਾਲ ਹੋ ਕੇ ਕਾਲੂ ਕੇ ਕਾਲ ਹੋ ਕਿਹਦਾ ਕਾਲ ਇਹਨਾਂ ਕਹਿੰਦਾ ਕਾਲ ਇੱਕ ਦੂਜੇ ਦਾ ਕਾਲ ਰੋਪਾ ਸਾਰਿਆਂ ਦਾ ਗਾਨ ਤੂ ਕਾਲ ਹੋ ਕਿ ਛਤਰਣ ਜਿਹੜਾ ਕਾਲ ਕਹਿੰਦੇ ਇਹ ਵੀ ਨਹੀਂ ਹੁੰਦਾ ਨਾ ਸੰਸਾਰ ਨਹੀਂ ਤਾਂ ਸਮਾਂ ਵੀ ਨਹੀਂ ਨਾ ਸੰਸਾਰ ਨਹੀਂ ਤਾਂ ਸਮਾਂ ਨਹੀਂ ਹੁੰਦਾ ਨਹੀਂ ਹੁੰਦਾ ਸਮਾਂ ਕਾਲ ਨਹੀਂ ਹੁੰਦਾ ਉਹ ਤੇਨੂੰ ਤੇਨੇ ਕਾਲ ਨਹੀਂ ਹੁੰਦਾ ਸੂਰੀ ਚੰਦੇ ਨਹੀਂ ਤਾਂ ਨਿਕਾਲ ਹੋਣਗੇ ਥੋੜੇ ਤੇ ਸ਼ਤਰਣ ਕੇ ਸੂਲ ਹੋ ਕੇ ਵਿਰੋਧੀ ਨਾ ਜੜੇ ਔਗਣ ਨੇ ਜੜੇ ਔਗਣ ਹਾਰੇ ਨੇ ਜੜੇ ਉਹਨਾਂ ਵਾਸਤੇ ਸੂਲ ਤੀਰਾਂ ਨੇ ਆਲੇ ਤੀਰ ਕਿ ਮਿੱਤਰਣ ਕੇ ਪ੍ਰਾਣ ਹੋ ਮਿੱਤਰਾਂ ਦੇ ਪ੍ਰਾਣ ਜਿਹੜੇ ਤੇਰੇ ਬਿੱਤਰ ਨੇ ਉਹਨਾਂ ਦੇ ਪ੍ਰਾਣ ਕਹੂੰ ਬ੍ਰਹਮ ਬਾਦ ਕਹੂੰ ਵਿਦਿਆ ਕੋ ਬਖਾਦ ਕਹੂੰ ਬ੍ਰਹਮ ਬਾਦ ਅੱਗੇ ਬ੍ਰਹਮ ਬਾਦ ਬਣੇ ਬੈਠੇ ਝਗੜਾ ਪਾਇਆ ਹੋਇਆ ਲੋਕਾਂ ਨੇ ਬ੍ਰਹਮਤੇ ਝਗੜਾ ਸੀ ਦੋ ਉੱਥੇ ਨਰਨੂ ਵੀ ਇਹ ਬ੍ਰਹਮ ਭਾਈ ਸਭ ਕੁਛ ਹੈ ਤੁਸੀਂ ਬ੍ਰਹਮਤੇ ਆ ਕੇ ਖੜ ਕੇ ਬ੍ਰਹਮਤੇ ਖੜ ਕੇ ਨਾ ਬਾਦ ਮੈਂ ਕਹਾ ਬ੍ਰਹਮ ਤੋਂ ਅੱਗੇ ਚਲੋ ਬ੍ਰਹਮ ਦਾ ਸੰਸਾਰ ਚ ਬ੍ਰਹਮ ਦਾ ਹੁੰਦਾ ਓ ਬ੍ਰਹਮ ਦਾ ਆਦਤ ਨਾਲ ਜੁੜੀਦਾ ਹੁੰਦਾ ਹੂੰ ਬ੍ਰਹਮ ਸੁਣੀ ਆ ਪੂਰਨ ਬ੍ਰਹਮ ਤੇ ਜਾਓ ਪਾਰ ਬ੍ਰੰਗ ਤੇ ਜਾਓ ਫਿਰ ਬ੍ਰਹਮ ਤੋਗੇ ਪੂਰਨ ਬ੍ਰਹਮ ਇੱਕ ਪੈਰ ਤੇ ਪਾਰ ਬ੍ਰੰਗ ਦੂਜਾ ਪੈਰ ਬ੍ਰਹਮ ਦਾ ਤੋ ਆਪ ਹੀ ਏ ਸਾਰੇ ਬ੍ਰਹਮ ਨੇ ਉਹ ਲੱਗੇ ਹੰਸ ਕੇ ਹੰਸੇ ਰ ਬ੍ਰਹਮ ਹੋਰ ਬ੍ਰਹਮ ਕੋਲ ਹੰਸੇ ਵਿੱਚ ਤੇ ਬੋਲ ਨਿਕਲਦਾ ਬ੍ਰਹਮਾ ਬੋਲਦਾ ਤੇ ਸਾਰੇ ਨੇ ਬ੍ਰਹਮ ਤੋ ब्रह्मचर्य चेततान माने ज्यादा दा ज्ञान पूरा mm. हो जांदा बोलनो ब्रह्म ब्रिजंदा। देख लो। ज्ञान दी कमी वाला ब्रह्म। जिथे ज्ञान दी भूख है नो ब्रह्म। यो ज्ञान दी भूख मिटगी पूरा नो ब्रह्म हो गया। जा उग आया। पूरा हो गए। पार ब्रह्म हो गया। mm. दाना दा ब्रेक जा भी पैदा हो जांदा है। ਉਹ ਬਟਰ ਲੱਗਣਗੇ ਬਹੁਤ ਬਰੀਕ ਜਿਹੇ ਦਾਣਾ ਪਹਿਲੇ ਪੈਦਾ ਹੋ ਜਾਂਦਾ ਉਹੀ بڑا ਹੁੰਦਾ ਰੋ ਫੜ ਵੀ ਛੋਟੇ ਛੋਟੇ ਲੱਗਦੇ ਨੇ ਜੋ ਫੜ ਲੂ ਤੋੜ ਲਈਏ ਛੋਟੇ ਜਿਹੇ ਨੂੰ ਉਹ ਜੋ ਗੁਣ ਨਹੀਂ ਹੁੰਦੇ ਜਿੰਨੇ ਪੱਕੇ ਹੋ ਜਾਂਦੇ ਉਹ ਚ ਨਹੀਂ ਹੁੰਦੇ ਉਹ ਗੁਣ ਤਾਂ ਹੀ ਪੱਕੇ ਤੇ ਦਿਖੇ ਲੈ ਇਹਨੂੰ ਪਕੜਾਂ ਕੱਚਾ ਹੈ ਫੜਦਾ ਹੈ ਕੱਚਾ ਹੈ ਕੱਚਾਲੀ ਜਦੋਂ ਹੁੰਦਾ ਜਿੰਨਾ ਜਰ ਜੰਮਣ ਦੇ ਲਾਇਕ ਨਹੀਂ ਹੁੰਦਾ ਉਹਨਾਂ ਜਰਿਆਂ ਨੂੰ ਵੇਲ ਨਾਲ ਰਹਿਣਾ ਚਾਹੀਦਾ। ਉਹਨਾਂ ਜਰ ਸ਼ਰੀਰ ਹੈ ਇਹਦੇ ਨਾਲ ਰਹਿਣਾ ਚਾਹੀਦਾ। ਇਹੇ ਦਾ ਵੇਲ ਹੈ। ਜਪਕ ਇਹੇ ਦਾ ਬਿਰਛ ਹੈ। ਇੱਤੇ ਹੀ ਪਕੜਾ ਨੇ ਵਾਇਜ ਜਪਕ। ਵਾਇਜ ਪਕੜਾ ਨੇ ਵਾਇਰ ਨੂੰ ਛੱਡ ਦੇਣਾ। ਜੁਮਨ ਫਲ ਪੱਕੇ ਪਹੁੰਚਦੇ। ਜਿਹੜੇ ਪੇੜ ਨਾਲ ਫਲ ਲੱਗਿਆ ਹੁੰਦਾ ਉਸੇ ਨਾਲ ਪੱਕਦਾ। ਉਹ ਪੱਕ ਕੇ ਫਿਰ ਪੇੜ ਨੂੰ ਛੱਡ ਦਿੰਦਾ ਹੁੰਦਾ। ਅਛੜਦਾ ਫੇਰ ਉਹਨੂੰ ਭੁੱਖੇ ਨਹੀਂ ਆ ਫੇਰ ਨਹੀਂ ਲੱਗਣਾ ਪੱਕ ਗਿਆ ਬਾਇਆ ਦੀ ਭੁੱਖ ਜਦ ਖਤਮ ਹੈ ਜਦ ਪੱਕ ਜਾਂਦਾ ਹੈ ਪੱਕਦਾ ਗਿਆਨ ਨਾਲ ਹੈ ਬਾਇਆ ਦੇਸਾ ਬਾਇਆ ਦਾ ਮੋੜ ਛੜਦੋਂ ਪੱਕ ਜਾਂਦਾ ਭੁੱਖ ਬਾਇਆ ਦਾ ਮੋੜ ਤਾਂ ਭੁੱਖੇ ਹੀ ਗਿਆ ਨਾ ਨਾ ਭੁੱਖ ਪੈਦਾ ਕਰ ਲੋ ਇਹ ਭੁੱਖਾ ਪਿਹੜ ਜੂ ਕਹੂੰ ਬਰਮ ਬਾਦ ਵਿਦਿਆ ਕੋ ਵਿਖਾਦ ਵਿਦਿਆ ਵਿਦਿਆ ਦਾ ਹੀ ਬਖਾਅ ਪਾਇਆ ਹੋਇਆ ਔਰ ਕੀ ਕੀਤਾ ਹੋਇਆ ਅਬ ਵਿਦਵਾਨਾਂ ਦਾ ਹੀ ਬਖਾਅ ਪਾਇਆ ਹੋਇਆ ਇਹ ਜਿਹੜੇ ਬਰਬਾਦ ਆ ਵਿਦਿਆ ਦਾ ਬਖਾਅ ਦੇਆ ਕੁਰਬਾਨੀ ਦੇ ਅਰਥ ਵਿਦਿਆ ਦਾ ਬਖਾਅ ਦੇ ਬਰਬਾਦ ਹੈ ਤਾਂ ਕੁਰਬਾਨੀ ਦੇ ਅਰਥ ਹੈ ਤਾਂ ਬਰਬਾਦ ਪਰ ਵਿਦਿਆ ਦਾ ਬਖਾਅ ਹੈ ਇਹਨੇ ਵਿਦਿਆ ਦਾ ਬਖਾਅ ਪਾਇਆ ਉਹ ਵਿਦਿਆ ਬਣਾ ਕੇ ਅਰਥ ਕਰਤੇ ਅਬ ਵਿਦਿਆ ਨੂੰ ਵਿਦਿਆ ਸਮਝ ਲਿਆ ਸਾਰ ਚ ਲੋਕਾਂ ਨੇ ਜੋ ਵਿੱਦਿਆ ਪੜ੍ਹਾਈ ਜਾਂਦੀ ਹੈ ਕਾਲਜਾਂ ਸਭ ਵਿੱਦਿਆ ਗੁਰਬਾਣੀ ਨੂੰ ਵਿੱਦਿਆ ਬੁਲਦੀ ਹੈ ਬਾਦੋ ਵਿੱਦਿਆ ਹੈ ਤਕੀਦ ਬਵੇਖ ਦੀ ਬਲੀਦ ਬਵੇਖ ਦੀ ਤਾਂ ਬਲੀਦ ਇਹਨਾਂ ਲੋਕਾਂ ਦਾ ਸਾਰਿਆਂ ਦਾ ਵਿਦਵਾਨਾਂ ਦਾ ਕਿ ਵਿੱਦਿਆ ਨੂੰ ਅਵਿੱਦਿਆ ਨੂੰ ਵਿੱਦਿਆ ਬੋਲਿਆ ਜਿਹੜੂ ਸੱਚ ਕਹਿੰਦਾ ਨਾ ਝੂਠ ਹੈ ਜਿਹਨੂੰ ਸੱਚ ਮੰਨਦੇ ਉਹੀ ਤਾਂ ਝੂਠ ਹੈ ਸੱਚ ਦਾ ਗਿਆਨ ਦੀ ਝੂਠ ਨੂੰ ਸੱਚ ਮੰਨੀ ਬੈਠੇ ਨੇ ਜਿਹਨੂੰ ਪਿਓ ਮੰਨਦੇ ਨੇ ਝੂਠ ਹੈ ਤੈ ਮਰਣਾ ਸੱਚ ਕਹੀ ਜਿਹਨੂੰ ਬਾਲ ਬਾਲ ਤੇ ਨੇ ਸੱਚ ਝੂਠ ਹੈ ਜਿਹਨੂੰ ਬਾਲਣਾ ਕਹਿੰਦੇ ਉਹ ਵੀ ਝੂਠ ਹੈ ਕੋਈ ਵਰਦਾ ਹੀ ਨਹੀਂ ਕੌਣ ਬੁਆਰੇ ਕੌਣ ਬੁਆ ਜੋ ਬੋਲਦੇ ਨੇ ਸਭ ਝੂਠ ਹੈ ਕੁਛ ਵੀ ਬੋਲਦਣ ਮੂੰਹ ਤੇ ਸਭ ਝੂਠ ਹੈ ਲੋਖਾਂ ਨੂੰ ਦੀਦੇ ਝੂਠ ਹੈ ਉਹ ਹੀ ਬੋਲਦਣ ਜਿਹੋ ਦੀਨਾ ਹੋਰ ਕੀ ਬੋਲਣਾ ਉਹੀ ਬੰਧਿਆ ਆਪਣਾਈ ਹੋਈ ਹੈ ਜੋ ਦੀਦੇ ਦੇ ਵਾਸਤੇ ਬੰਧਿਆ ਆਪਣਾਈ ਹੋਈ ਹੈ ਜੋ ਦੀਜ਼ਾਂ ਦੀ ਉਹਦੇ ਵਾਸਤੇ ਵਿਦਿਆ ਕਿڑی ਬਣੂ ਉਹਦੇ ਵਾਸਤੇ ਐਸੇ ਬੋਲੀ ਨੂੰ ਕਢ ਕੇ ਦੁਬਾਰਾ ਦੇ ਕੇ ਨਾ ਸ਼ੇਪ ਹੋਰ ਵਿਚਾਰ ਕੇ ਐਸੇ ਬੋਲੀ ਚੋਂ ਵਿਦਿਆ ਬਣਾਈ ਦੀ ਹੁੰਦੀ ਹੈ ਵਿਦਿਆ ਸੋਧੇ ਤਤ ਲਏ ਉਹ ਸੋਧੀ ਦੀ ਹੁੰਦੀ ਆ ਵਿਦਿਆ ਇਹਨਾਂ ਨੂੰ ਬੜਾ ਪਤਾ ਕੀ ਹੁੰਦਾ ਸੋਧੀ ਦੀ ਵਿਦਿਆ ਸੁਣਿਆ ਹੀ ਨਹੀਂ ਸਮਝਿਆ ਹੀ ਨਹੀਂ ਉਹ ਜਿਹੜਾ ਲਿਖਿਆ ਆ ਸੀ ਵਿਦਿਆ ਸੋਧੇ ਤਤ ਲਏ ਉਹ ਹੀ ਨਹੀਂ ਵਿਦਿਆ ਸੋਧਦੇ ਤੇ ਫਨਾਈ ਜੋ ਤਤ ਗੁਰਮਤ ਦਾ ਤਤ ਨਹੀਂ ਲਿਆ ਜਾ ਸਕਦਾ ਅਖਰੀ ਅਰਥ ਦਾ ਲੱਸੀ ਹੈ ਸਰਵੇਸ਼ मीनिंग ਨੇ ਹੋ ਜਦੋਂ ਤੁਸੀਂ ਸਾਸ਼ ਪੀਏ ਸਾਸ਼ ਪੀਏ ਸੰਸਾਰ ਸੰਸਾਰ ਸਾਰਾ ਸੰਸਾਰ ਜਿਸੀ ਕੋ ਵਿਦਿਆ ਸੋਧ ਨਹੀਂ ਹੋਈ ਹੈ ਜਦੋਂ ਕੋ ਅਲੱਗ ਅਰਥ ਦਿੱਤੇ ਹੋਏ ਨੇ ਸਾਰੇ ਡਿਫਾਈਨ ਕੀਤੇ ਨੇ ਲਫ਼ਜ਼ ਸਾਰੇ ਨਾਮ ਕੀ ਹੁੰਦਾ ਹੈ ਗੁਰਗਾਨ ਪਦਾਰਥ ਨਾਮ ਅਜੀ ਜਿਹੜਾ ਨਾਮ ਲੱਗਿਆ ਉਹ ਨੂੰ ਲੋਗ ਬੰਦੀ ਜ ਨੇ ਉਹੀ ਲੈ ਕੇ ਜਪਣ ਲੱਗੇ ਲੋਕ ਉਹ ਕਹਿੰਨਾ ਨਮਸਤਾਂ ਦੇ ਨਾਮੇ ਹੈ ਨ ਦੇ ਨਾਮੇ ਤੇ ਕੋਈ ਨਹੀਂ ਕਿਸੇ चीज ਦਾ ਵੀ ਨੋਈ ਇਸ ਸੰਸਾਰ ਸਾਡੇ ਆਪਣੇ ਰੱਖੇ ਨੇ ਅਧਿਆਨ ਕੁਰਸੀ ਕਹਿੰਨਾ ਉਹ ਕਹਿੰਦੇ ਯਾਰ ਦੱਸ ਚੇਰ ਹੈ ਕਿ ਕੁਰਸੀ ਹੈ ਪਾ ਝਗੜਾ ਇੱਥੇ ਅੰਗਰੇਜ਼ਾਂ ਕਹਿਣਗੇ ਚੇਰ ਹੈ ਅਸੀਂ ਕਹਾਂਗੇ ਕੁਰਸੀ ਹੈ ਕੋਲ ਮਟੋ ਝਗੜਾ ਇਹਦਾ ਇਹ ਜੋ ਕੁਝ ਹੈ ਇਹੀ ਹੈ ਇਹੀ ਰਹਿਣੀ ਹੈ ਇਹਨਾਂ ਦੀ ਬਦਲ ਨਾ ਹਜ਼ਾਰ ਲੱਖ ਲੁੱਟ ਹੀ ਜਾਏ ਬਿੱਧੇ ਉਹਦੇ ਝਗੜਾ ਬਿੱਧਿਆ ਦਾ ਝਗੜਾ ਝਗੜਾ ਤਾਂ ਬਿੱਧਿਆ ਦਾ ਹੈ ਇਹ ਤਾਂ ਉਹੀ ਹੈ ਜੋ ਹੈ ਪੜੀ ਦੇ ਲੋਰ ਕੇ ਨੇ ਹਰੇਕ ਦੀ ਦੇ 1 ਕਰੋੜ ਦਾ ਕਿਸੇ ਚੀਜ਼ ਦਾ ਆਪਣੀ ਦਸੋ ਘੜੀ ਚੀਜ਼ ਦਾ 1 ਕਰੋੜ ਸਰਦਾਰ ਇਕੜੀ ਚੀਜ਼ ਦਾ 1 ਕਰੋੜ ਸਾਰਾ ਸਾਰਾ ਸਭ ਤੇ ਨਹੀਂ ਕਿਸੇ ਗੱਲ ਤੇ ਆਪਣੇ ਆਪਣੇ ਬੋਲੀ ਆਪਣੇ ਆਪਣੇ ਨਾਮ ਫਿਰ ਨਾਮ ਕਿਹੜਾ ਹੋਇਆ ਕਿਸੇ ਜੀਤ ਦਾ ਨਾਮ ਕਿਸੇ ਜੀਤ ਦਾ ਹੁੰਦਾ ਹੀ ਨਹੀਂ ਸਤਾਰ ਜਪਦੇ ਕੀਨੇ ਵਾਲਾ ਦਾ ਹੈ ਜਿਹੜੇ ਜਪਦੇ ਨੇ ਕੀ ਜਪਦੇ ਨੇ ਫੇ ਵਾਲਾ ਨਾ ਤਾਂ ਨਾਮ ਹੁੰਦਾ ਹੀ ਨਹੀਂ ਕਿਸੇ ਜੀਤ ਦਾ ਇਹਨੇ ਅਨਕਾਰਪੂਰਖ ਅਨਕਾਰ ਜਿਹੜਾ ਹੁੰਦਾ ਪੂਰਖ ਹੁੰਦਾ ਇਹ ਕੋਣ ਨੇ ਦੂਏ ਸੁਗੜ ਸੁਜਾਨ ਆ ਸੁਜਾਨ ਕੋਣ ਹੰਦ ਨੇ ਜਿਹੜੇ ਘੜੇ ਜਾਂਦੇ ਨੇ ਸੁਗੜ ਸੁਜਾਨ ਕੁਰਬਾਨੀ ਘੜਦੀ ਆ ਤਿੱਤੇ ਘੜੀਏ ਸੁਤ ਮਤਮਨ ਬੁੱਧ ਤਿੱਤੇ ਘੜੀਏ ਸੁਰਾਂ ਸਦਾ ਕੀ ਸੁਧ ਜਿਹੜੇ ਦਾ ਘੜੇਗੇ ਬਾੜੀ ਨੂੰ ਤਾਂ ਹੋਗੇ ਸੁਣ ਸੁਜਾਨ ਬਾਕੀ ਰਹਿ ਗਿਆਨ ਘੜ ਬਾਲਾ ਫੇਰ ਨਾਲ ਰਵਾਨ ਘੜਨੇ ਵਿਦਿਆਨੀ ਨੇ ਸੋਤੀ ਅਨ ਘੜ ਰਾਇ ਜੀ ਖਾਜੀ ਕਹੂ ਨਾਦ ਕੋ ਨਾ ਨਾਦ ਕਹੂ ਨਾਦ ਨਾ ਨਾਦ ਕਹੂ ਨਾਦ ਕਹੂ ਨਾਦ ਕੋ ਨਾ ਨਾਦ ਕਿੱਥੇ ਬਰੋਦੀ ਸੋਰਾਂ ਕਿੱਥੇ ਤਾਂ ਨਾਦ ਹੈ ਉਧਰ ਅੰਤਰਾਤਮਨੀ ਆਵਾਜ਼ ਨਾਦ ਅਜਿਹੜੀ ਮਨ ਬੋਲਦਾ ਉਹ ਨਾਦ ਹੈ ਇਹਦਾ ਉਲਟਾ ਦੋ ਸੋਰਾਂ ਨੇ ਇਹਦੇ ਵਿੱਚ ਬੋਲਦੀ ਆਪਸ ਵਿੱਚ ਡੋਰੂ ਵੱਜਦਾ ਨਾ ਇਹ ਸਾਨੂੰ ਡੋਰੂ ਕਿਹਾ ਹੋਇਆ ਉਧਰ ਤਾਂ ਅੰਤਰਾਤਮਨੀ ਆਵਾਜ਼ ਹੈ ਉਧਰ ਇਹ ਇਹਦੀ ਆਪਣੀ ਇੱਛਾ ਇਹਦਾ ਆਪਣਾ ਹੁਕਮ ਹੈ ਮਨ ਦੇ ਵਿੱਚੋਂ ਪੈਦਾ ਹੁੰਦੀ ਹੈ ਇੱਛਾ ਕਹੀ ਨਾ ਉਪਜਿਆ ਉਪਜੀ ਜਿਹੜਾ ਅੰਦਰੋਂ ਬੋਲਦਾ ਨਾ ਆਰਾਮ ਇਹਨੂੰ ਕਹਿੰਦਾ ਵੀ ਆ ਐਂ ਨਾ ਕਰ ਉਹਦੀ ਤਾਂ ਨਹੀਂ ਸੁਣਦਾ ਜਿਹੜੀ ਇਹਦੇ ਮਨ ਦੇ ਵਿੱਚੋਂ ਪੈਦਾ ਹੁੰਦੀ ਹੈ ਨਾ ਇੱਛਾ ਉਹਨੂੰ ਬੁਰੇ ਰੱਖਦਾ ਆਪਣੇ ਅੰਦਰੋਂ ਜਿਹੜੀ ਉਪਜੀ ਆ ਗੱਲ ਉਹ ਤਾਂ ਠੀਕ ਹੈ ਬੰਦਾ ਜਿਹੜੀ ਅੰਦਰੋਂ ਕਹਿੰਦਾ ਉਹ ਰੂਹੀ ਗੁਰਬਾਣੀ ਜੋ ਕਹਿੰਦੀ ਹੈ ਉਹਨੂੰ ਨਹੀਂ ਜਗ੍ਹਾ ਦਿੰਦਾ ਕਈ ਨਾ ਉਪਜਾ ਉਪਜੀ ਜਾਣਾ ਭਾਵ ਅਭਾਵ ਇਹਨੂੰ ਇਹਨੂੰ ਐਨੂੰ ਇਹਨੂੰ ਪਤਾ ਮੇਰਾ ਕਿਹੜੀ ਗੱਲ 'ਚ ਨੁਕਸਾਨ ਆ ਕਿਹੜੀ ਗੱਲ 'ਚ ਨਫਾ ਆਪਣੇ ਨਫੇ ਦੀ ਖਬਰ ਈ ਇਹਨੂੰ ਜਿਆਦਾ ਸੀ ਨੂੰ ਸਮਝਾਉਂਦੇ ਆ ਕਿਸ ਨੂੰ ਕਿਸੇ ਬੱਚੇ ਨੂੰ ਸਮਝਾਉਦੇ ਪੜਦਾ ਨਹੀਂ ਹੈ ਉਹ ਕਹਿੰਦਾ ਭਾਈ ਤੇਰਾ ਨੁਕਸਾਨ ਹੈ ਸਾਡਾ ਤਾਂ ਹੈ ਲੇਕਿਨ ਉਹਨੂੰ ਉਹ ਹੀ ਲੱਗਦਾ ਉਰੂ ਰੋਜ਼ਾਨੇ ਨੂੰ ਕਾ ਲੱਗਦਾ ਤੂੰ ਇਹ ਜਿਓ ਗੱਲ ਸਾਡੀ ਹੈ ਇਹ ਜਿਓ ਗੱਲ ਨੁਕਸਾਨ ਚੰਗਾ ਲੱਗਦਾ ਸੰਸਾਰ ਨਾਲ ਛੁੜਿਆ ਹੋਇਆ ਆਪਣੇ ਨਫੇ ਦਾ ਪਤਾ ਹੀ ਨਹੀਂ ਤੂੰ ਆਇਆ ਕੀ ਕਰਨਾ ਇਹਦਾ ਪਤਾ ਹੀ ਨਹੀਂ ਲਾਹਾ ਲੈਣ ਆਇਆ ਹੈ ਕੁਰਬਾਨੀ ਕਰਾਉਂਦੀ ਹੈ ਪ੍ਰਾਣੀ ਤੂੰ ਆਇਓ ਲਾਹਾ ਲੈਣ ਉਹਦਾ ਤਾਂ ਗਿਆਨੀ ਹੈ ਕਹੂੰ ਪੂਰਨ ਭਗਤ ਹੋ ਕਹੂੰ ਪੂਰਨ ਭਗਤ ਹੋ ਕਿਤੇ ਭੂਲੂ ਭਗਤ ਹੋਰੀ ਪਰਤੇ ਪੂਰਾ ਨਪੁਰ ਦੇ ਪਰਤੇ ਪੂਰੀ ਕਰ ਚੁਕੇ ਕਹੂੰ ਬੇਦ੍ਰੀਤ ਕਹੂੰ ਵਿਦਿਆ ਕੀ ਪ੍ਰਤੀਤ ਕਹੂੰ ਬੇਦ੍ਰੀਤ ਕਿ ਤੇ ਬੇਦ੍ਰੀਤ ਤਾਂ ਸਾਰ ਚਲਦਾ ਹੈ ਕਹੂੰ ਵਿਦਿਆ ਕੀ ਪ੍ਰਤੀਤ ਅਰ ਵਿਦਿਆ ਦੀ ਪ੍ਰਤੀਤ ਵੀ ਹੈ ਵਿਦਿਆ ਦੀ ਸਮਝ ਵੀ ਹੈ ਕਹੂੰ ਨੀਤ او ਅਨੀਤ ਕੋ ਨੀਤ او ਅਨੀਤ ਰੀਤ ਨੀਤ ਦਾ ਵਿਗਿਆਨ ਹੈ ਇੱਕ ਨੇ ਹੁੰਦਾ ਇੱਕ ਅਨੇ ਹੁੰਦਾ ਰੀਤਾਂ ਵਿੱਚ ਨਹੀਂ ਰਹਿਣ ਵਾਲਾ ਨੇ ਤਹੁੰਦਾ ਖੁਸ਼ੇਸ਼ਾ ਰਹਿਣ ਵਾਲਾ ਇਹ ਸਮਝਾ ਕਿਹੜੀ ਚੀਜ਼ ਹਮੇਸ਼ਾ ਰਹਿਣ ਵਾਲੀ ਹੈ ਸੱਚਾ ਝੂਠ ਦਾ ਗਿਆਨ ਇਹ ਕਹ ਲੋ ਸੱਚਾ ਝੂਠ ਦਾ ਗਿਆਨ ਦੀ ਦੌਰ ਦੀ ਸੀ ਜਗਤ ਹੋ ਕਿਤੇ ਬੜਾ ਪ੍ਰਚੰਡ ਗਿਆਨ ਪ੍ਰਚੰਡ ਗਿਆਲ ਦੀ ਅਵਸਥਾ 'ਚ ਬੈਠਾ ਕਿਤੇ ਪੂਰਨ ਪ੍ਰਤਾਪ ਪ੍ਰਚੰਡ ਪ੍ਰਚੰਡ ਗਿਆਲ ਦੀ ਅਵਸਥਾ ਪੂਰਨ ਪ੍ਰਤਾਪ ਕਹੂੰ ਇਕਾਂਤੀ ਕੋ ਜਾਪ ਕਦੇ ਪੂਰਨ ਪ੍ਰਤਾਪ ਹੈ ਪੂਰਾ ਜਿਹੜੇ ਜਿਹਦੇ ਉੱਤੇ ਉਹ ਕਹਿੰਦਾ ਭਾਈ ਅਸੀਂ ਗਏ ਦਰਸ਼ਨ ਦੇਖ ਕੇ ਹੀ ਰਸਾਲ ਹੋ ਗਏ ਦਰਸ਼ਨ ਦੇਖ ਪਈ ਦੇ ਹਾਲ ਪੂਰਨ ਪ੍ਰਤਾਪ ਕੋ ਇਕਾਂਤੀ ਕੋ ਜਾ ਕਦੇ ਬੈਠਾ ਜਾਪ ਕਰੀ ਜਾਂਦਾ ਦੁਨੀਆ ਤੋਂ ਪਰੇ ਜਾ ਕੇ ਉੱਥੇ ਜੀ ਲੱਗਿਆ ਜਾਪ ਦੇ ਵਿੱਚ ਉੱਥੇ ਅਰੰਧ ਦੁਨੀਆ ਤੋਂ ਅਲੱਗ ਜੀ ਨਹੀਂ ਲੱਗਦਾ ਕਿਸੇ ਦਾ ਪਰ ਉੱਥੇ ਬੈਠਾ ਕਹਿੰਦਾ ਮੇਰਾ ਤਾਂ ਇੱਥੇ ਹੀ ਲੱਗਦਾ ਇਕਾਲਤ ਹੋ ਕੇ ਜਾਪ ਕਰ ਰਹੇ ਕਹੂੰ ਤਾਪ ਕੋ ਅਤਾਪ ਕਹੂੰ ਤਾਪ ਕੋ ਅਤਾਪ ਜਿਹੜਾ ਤਾਪ ਹੈ ਨਾ ਚਿੰਤਾਵ ਉਹਦਾ ਇਲਾਜ ਕਰ ਲੈ ਅਤਾਪ ਕਰ ਲੈ ਉਤਾਰ ਲੈ ਚਿੰਤਾਵਾਂ ਨੂੰ ਲਾ ਰਿਹਾ ਥੱਲੇ ਤਾਪ ਕੋ ਅਤਾਪ ਯਾਨੀ ਆਪਣੇ ਆਪ ਨੂੰ ਸ਼ਾਂਤ ਕਰਨਾ ਮਨ ਨੂੰ ਸ਼ਾਂਤ ਕਰਨਾ ਕਹੂੰ ਯੋਗ ਤੇ ਡਿੱਗ ਤੋ ਕਿਤੇ ਯੋਗ ਦੇ ਉੱਤੇ ਚੜਿਆ ਹੋਇਆ ਸੀ ਥੱਲੇ ਦੇ ਪੈਰ ਕਿੰਦੇ ਸੇਕਲ ਨੇ ਟੰਡੇ ਜੜ ਕੇ ਫੇੜੇ ਪੈਣ ਉੱਪਰ ਜੜ ਕੇ ਜਿਹੜੇ ਪੈਰ ਕਿਤੇ ਜੋਗ ਤੋਂ ਕਿਤੇ ਪੈਣ ਉਹ ਕਹਿੰਦੇ ਕੀ ਐ ਸਾਰਾ ਚੱਕਰ ਸੰਸਾਰ ਦਾ ਸਮਝ ਨਹੀਂ ਆ ਰਹੀ ਕੀ ਹੋਵੇ ਦਿਨ ਸਭ ਕੋ ਸਾਹਮਣੇ ਹੀ ਐ ਕੌਣ ਕਿੱਥੋਂ ਢਿੱਗ ਪੈਣਾ ਕੌਣ ਕਿੱਥੇ ਚੜ ਜਾਣਾ ਐ ਪਿੱਛੇ ਅੱਗੇ ਕਿਹਨੇ ਨਿਕਲ ਜਾਣਾ ਗੁਰੂ ਨਾਨਕ ਦੇਵ ਜੀ ਆਇਗਾ ਇਹ ਵੀ ਆਖਰ ਜਾਪੀ ਕਿਸੇ ਆਣੇ ਰਾਸ ਕਿਹੜੀ ਗੱਲ ਕਿਨੂੰ ਰਾਤ ਆ ਜਾਣੀ ਹੈ ਕੋਈ ਪਤਾ ਨਹੀਂ ਕਹੂੰ ਵਰ ਦੇ ਤੂੰ ਕਹੂੰ ਛਾਲ ਸਿਓ ਛਣਾਈ ਲੈ ਤਾ ਕਿਤੇ ਕਹਿੰਦੇ ਵਰ ਦੇ ਦਰ ਨੇ ਕੋਈ ਚੀਜ਼ ਕਿਹਦਾ ਨੂੰ ਕਹੂੰ ਛਾਲ ਸਿਓ ਛਣਾਈ ਲੈ ਕਿਤੇ ਛਾਲ ਤੋਂ ਸਿਣਾਈ ਲੈ ਤਾ ਕਿਤੇ ਜੇ ਛਾਲਾ ਜਾਂਦਾ ਉਹਦੇ ਅੰਦਰ ਉਹ ਤਾਂ ਖੋਲ ਲੈਣ ਛਣਾਈ ਛਾਲ ਤੋਂ ਆਪ ਨਹੀਂ ਛਾਲ ਕਰਦਾ ਛਾਲ ਉਹ ਕਰਦਾ ਜੇ ਕਦਰਤੀ ਦੇਤੀ ਉਹ ਛੜ ਕਰ ਨਾ ਗਏ ਲੋਕ ਕਨੋ ਉਹ ਤੇ ਵਾਪਸ ਲੈ ਖੋਣ ਕੁਛੜੋ ਆ ਗਿਆ ਨਾ ਉਹਦੇ ਵਿੱਚ ਕਹੂੰ ਛੜ ਸੋਂ ਨਾ ਹੈ ਜੇ ਕਪਟਾ ਜਾ ਗਿਆ ਨਾ ਹੋ ਜਾਂਦਾ ਕਹੂੰ ਬਾਰ ਦੇ ਤ ਕਹੂੰ ਛੜ ਸੋਂ ਛਣਾਏ ਰੇ ਮੈਨੂੰ ਤਾਂ ਸਰਬ ਕਾਲ ਦੇ ਵਿੱਚ ਹਮੇਸ਼ਾ ਹਰੇਕ ਜਗ੍ਹਾ ਹਮੇਸ਼ਾ ਇੱਕੋ ਜਿਹਾ ਹੀ ਲੱਗਦਾ ਇੱਕ ਸੇ ਲੱਗਦਾ ਇੱਕੋ ਜਿਹਾ ਲੱਗਦਾ ਮੈਨੂੰ ਕੋਈ ਕੀ ਕਹਾਣੀ ਵੀ ਹੋਈ ਜਾਂਦਾ ਹੀ ਲੱਗਦਾ ਵਿਦਿਆਕਾ ਵਿਚਾਰੀ ਵੀ ਹੋਈ ਜਾਂਦਾ ਹੀ ਲੱਗਦਾ ਛਤਰ ਵੀ ਹੋਈ ਲੱਗਦਾ ਹਾਂ ਤਾਂ ਇੱਕੋ ਹੀ ਰੋ ਮੈਂ ਆਤਮਾ ਨੂੰ ਦੇਖ ਰਿਹਾ ਆਤਮਾ ਨੂੰ ਆਤਮਾ ਉਹੀ ਹੈ ਕਰਦੀ ਕੀ ਹੈ ਅਲੱਗ ਗੱਲ ਹੈ ਉਹਦਾ ਨੂੰ ਫਲ ਕੀ ਬਨੂ ਅਲੱਗ ਗੱਲ ਹੈ ਜਿਹਨੇ ਆਤਮਾ ਦੇਖਣੀ ਮੇਰੀ ਸੂਈ ਆਤਮਾ ਤੇ ਮੇਰੀ ਸੂਈ ਉਹਦੇ ਕਰਮ ਤੇ ਨਹੀਂ ਹੈ ਮੇਰੀ ਸੂਈ ਆਤਮਾ ਤੇ ਉਹਦੀ ਸੋਚ ਤੇ ਇੱਕ ਸੇ ਲੱਗ ਤੋ ਸਰਵ ਕਾਰਨ ਸਰਵ ਸੇ ਲੱਗ ਤੋ ਉਹ ਜਿਹੜੇ ਪੜ੍ਹਦੇ ਰਹੇ ਹੋ ਜਾਂ ਲਿਖ ਰਹੇ ਰਹੇ ਜੋ ਕੁਝ ਕਰ ਰਹੇ ਨੇ ਚਾਹੇ ਉਹ ਕਿਸੇ ਦੀ ਸਾਖੀ ਲਿਖ ਰਹੇ ਨੇ ਸਾਖੀ ਤਾਂ ਇੱਦਾਂ ਇੱਕ ਬਣਾਇਆ ਹੋਣਾ ਨੇ ਬਹੁਤ ਵੱਡੀ ਗੱਲ ਹੈ ਇੱਕ ਰਾਜਾ ਹੈ ਉਹ ਰਾਜਾ ਕਿੱਡਾ ਫੜਾ ਅਨਿਆਇ ਕਰ ਰਿਹਾ ਹੈ ਉੱਤੇ ਹੋ ਰਿਹਾ ਗਲਤੀ ਨਾ ਹੋ ਰਿਹਾ ਉਦੋਂ ਵੀ ਰਾਜਾ ਨੂੰ ਅੰਗਲੀ ਦੀ ਜਾਣਕਦੀ ਕਰ ਰਿਹਾ ਰਾਜੇ ਨੂੰ ਬਿਸਕਾਰਨ ਕੀਤਾ ਰਾਜੇ ਕੋ ਨੇ ਉਹਨੂੰ ਆਪਣੀ ਬੁੱਢੇ ਨੂੰ ਸਿਆ ਬੋ ਦੇਤੀ ਵਜ਼ੀਰ ਨੂੰ ਵਜਾ ਰਿਹਾ ਹੈ ਗਰਾਉਂਡੇ ਲਗੇ ਉਤਰੀਆ ਦੇ ਉਹ ਪੁਰਖ ਬਣਾਇਆ ਹੈ ਰਾਜੇ ਨੂੰ ਚਿਤਤਰ ਖੇਲੇ ਰਾਜੇ ਨੂੰ ਕਸੂਰ ਆਪਣਾ ਵੱਲ ਧੋਦੇ ਤੇ ਆਪਣਾ ਕਸੂਰ ਉਹਦੇ ਤੇ ਭੁਲਤਾ ਬਹੁਤ ਹੀ ਸਜ਼ਾ ਦੀ ਹੱਕਦਾਰ ਆਪ ਜੀ ਉਹਨੂੰ ਦੋਸ਼ ਸਜ਼ਾ ਬੁੱਢੇ ਨੂੰ ਸਜ਼ਾ ਦਵਾਤੀ ਜਿਹੜਾ ਸੱਚਾ ਸੋਚਾ ਸੀ ਆਪ ਗਰੀ ਹੋਈ ਦੀ ਆਵਰੀ ਹੋਗੀ ਕਿੰਦਾ ਬੜਾ ਕੇਸ ਹੈ ਉਸ ਕੇਸ ਦੇ ਵਿੱਚੋਂ ਮੰਤਰੀ ਰਾਜੇ ਨੂੰ ਜਗਾ ਰਿਹਾ ਰਾਜਾ ਉਹਨਾਂ ਜਿਹੜਾ ਰਾਗਾ ਕਾਹੇਪੁਰਖ ਕਮਾਉ ਦੇ ਉਹਨਾਂ ਚੋਂ ਰਾਜਾ ਜੇ ਕਮਾਉ ਦੇ ਨਾਲ ਕੀ ਕਰ ਦਿੰਦੇ ਹੁੰਦੇ ਨੇ ਇਹ ਡਰਾਉਡ ਹੈ ਉਹਦੀ ਕਿੰਨਾ ਆ ਹੋ ਸਕਦਾ ਆਦਮੀ ਤੋਂ ਕਿਸੇ ਤੋਂ ਵੀ ਇਹ ਗਰੌਡ ਜਿਨੇ ਅਵਤਾਰ ਪਹਿਲਾ ਨੇ 24 ਉਹਦੇ ਬਾਅਦ ਦੀ ਗੱਲ ਕੋਈ ਕੁਦਰਤ ਹੋ ਜਾਏ ਕੋ ਐਸਾ ਹੀ ਹੋ ਜਾਏ ਚਾਂਸ ਉਹਨਰੇ ਜੀ ਸਿੰਘ ਰਾਜਾ ਹੋਇਆ ਗਿਆ ਸੀ ਜੇ ਭਲਾ ਨਰਜੀਤ ਸਿੰਘ ਦੀ ਪਜਾਇ ਰਾਜਾ ਅਕਾਲੀ ਫੂਲਾ ਸੌਦ ਉਹ ਆ ਬਹਿਣੇ ਤਖਤ ਤੇ ਗਲਤੀ ਕੀਤੀ ਉਹ ਤਖਤ ਤੇ ਨਹੀਂ ਬੈਠਿਆ ਉਹਨੂੰ ਤਾਂ ਸਾਰੇ ਰਾਜਵੰਦੀ ਨਾਲੇ ਬਿਠਾ ਲ ਦਿੰਦੇ ਯਾਰ ਆਜ ਲੈਂਦਾ ਨਾ ਇਹ ਆ ਬਹਿਣ ਗਲਤੀ ਉਹਦੀ ਏ ਯਾ ਤਲੈਂਡਰ ਨਾ, ਬੈਲੋ ਸਾਰਿਆਂ ਦਾ ਇਕੱਠਾ ਕਰਕੇ ਸਭ ਦੀਆਂ ਗੱਲ ਕਰਿਆ ਕਰਦੇ ਸਾਰੇ ਦਾਗ ਰਹਿ ਜਾਂਦੇ ਨਾ ਇਹ ਡੁੱਦੇ ਸਾਰਿਆਂ ਦੀ ਵੀ ਇਕੱਠੇ ਕਰਕੇ ਸਾਰੇ ਸਲਾਹ ਕਰਕੇ ਸਾਰੇ ਕੰਮ ਕਰਦੇ ਸਲਾਹ ਨਾਲ ਫੁੱਟੇ ਡਿਸਿਪਲਿਨ ਉਹ ਦੋੇ ਪਾਸੇ ਚੱਲ ਗਏ ਅਸੀਂ ਇੱਕ ਇਹ ਵੀ ਕਹਿੰਦੇ ਮੁਰਦਾ ਵਕਤ ਵੀ ਹੁੰਦੇ ਨੇ ਦੇਕਰ ਭਗਤ ਡੇਰਾ ਮੁਰਦਾ ਨਹੀਂ ਚਾਹੀਦਾ ਅਸੀਂ ਤਾਂ ਕਹਿੰਦਾ ਮੁਰਦੇ ਭਗਤ ਜੀ ਸਾਡੇ ਕੋਲ ਤਾਂ ਸ਼ਸਤਰ ਦੇ ਚ ਤਲਵਾਰਾ ਛਤਰੀ ਤੋਂ ਤੁਨੂੰ ਥੱਲੇ ਨਹੀਂ ਡੇ ਉਹਨਾਂ ਨੇ ਉਹਨਾਂ ਨੇ ਕਿਹਾ 700 71 ਵਿਪਰਨ ਦਾ ਕੰਮ ਰਾਜ ਕਰ ਸਕਦਾ ਹੈ ਪਾਵਰ ਆ ਜਵੇ ਇਹ ਤਾਂ ਰਾਜ ਲੈਦੇ ਨਾ ਇਹਨਾਂ ਨੂੰ ਕਰ ਲਾਉਂਦੇ ਇਹ ਕਰਦਾ ਦਾਬ ਕਰਦਾ ਇਹ ਗਲਤੀ ਸੀ ਨਾ ਮੂਰਤੀਆਂ ਉਹਦੀ ਉੱਤੇ ਨਾਲ ਥੱਲੇ ਹੁੰਦਾ ਕੁਝ ਵੀ ਪਰ ਸਾਰੇ ਜਿਹੜੇ ਦੂਏ ਰਸਤੇ ਵਾਲੇ ਦਿੱਤੇ ਡਾਲ ਰਣਜੀਤ ਸਿੰਘ ਕੀ ਕਰ ਲੰਨਾ ਗੱਲਾਂ ਰਣਜੀਤ ਸਿੰਘ ਨੂੰ ਪਾਵਰਫੁਲ ਬਣਾਉਣਾ ਗਲਤੀ ਸੀ ਉਹਦੀ ਕੁਲਪਾਰੀ ਕਿਦਾ ਉਹ ਆਪੇ ਬਹਿ ਜਾਂਦਾ ਆਪ ਨੂੰ ਕੋਈ ਬਿਸਗਾਈਡ ਕਰ ਦਿੱਤਾ ਉਹਦੇ ਵਾਸਤੇ ਐ ਐਸੀ ਪੋਜੀਸ਼ਨ ਚਲੇ ਜਾऊं ਤਾਂ ਐਂ ਬਚ ਕੇ ਇਹਨਾਂ ਗੱਲਾਂ ਤੇ ਤੁਸੀਂ ਬਚ ਕੇ ਵੀ ਰਹਿਣ। ਇਹ ਪੱਖ ਵੀ ਹੈ। ਸਾਡੇ ਵਾਸਤੇ ਢਾਲ ਹੈ। ਜਦ ਤਲਵਾਰ ਚਲਾਉਂ ਜਾਂਦਾ ਨਾ ਦੂਏ ਨਾਲ ਫਿਰ ਢਾਲ ਦੀ ਲੋੜ ਪੈਂਦੀ ਹੈ। ਫਿਰ ਦੂਰਾ ਬਰਾਬਰ ਵਾਲੇ ਨਾਲ ਲੜੂਗਾ ਫੇਰ ਤਾਂ ਢਾਲ ਦੀ ਲੋੜ ਪੈਣੀ ਹੈ ਉਹਨੇ ਵੀ ਤਾਂ ਹੈ ਨਾ। ਜਿੰਨਾ ਜਰ ਅਸੀਂ ਗਿਆਨ ਸਿੱਖਣਾ ਆਪ ਆਪਣਾ ਮਨ ਜਿੱਤਣਾ ਉਹਨਾਂ ਜਰ ਢਾਲਦੀ ਬਿਲਕੁਲ ਲੋੜ ਨਹੀਂ ਆਦ ਗੁਰੂ ਗ੍ਰੰਥ ਸਾਹਿਬ ਨਾਲ ਅਸੀਂ ਆਪਣਾ ਮਨ ਜਿੱਤ ਪਹਿਲਾਂ ਕੋਈ ਢਾਲਦੀ ਲੋੜ ਨਹੀਂ ਤੁਹਾਨੂੰ ਇਸ ਕਰਕੇ ਇਹਨਾਂ ਲੋਕਾਂ ਨੂੰ ਅਨੈਸੈਸਰੀ ਲੱਗਦਾ ਹੋ ਤੁਸੀਂ ਜੇ ਮਨ ਜਿੱਤ ਲਿਆ ਆਪਣਾ ਫਿਰ ਤੁਸੀਂ ਦੂਜਿਆਂ ਨੂੰ ਬਦਲ ਜਿੱਤਣ ਫਿਰ ਮਨਾਂ ਜਰ ਨਿਕਲੜੇ ਉਦੋਂ ਢਾਲ ਦੀ ਲੋੜ ਹੈ। ਯਾ ਲੜਨ ਤੇ ਕੰਨਾ ਫੇ ਢਾਲ ਦੀ ਲੋੜ ਹੈ। ਜਲ ਬੁਦਾਂ ਤੇ ਜਾਣਾ ਲੜਨ ਵਾਸਤੇ ਜਾਣਾ। ਫਿਰ ਤਾਂ ਢਾਲ ਦੀ ਲੋੜ ਹੈ। ਉਹ ਉਹਨਾਂ ਬਾਤ ਹੈ ਜਿਨ੍ਹਾਂ ਨੇ ਲੜਨ ਜਾਣਾ ਹੈ। ਨੇ ਜੰਗ ਲੜਦੀ ਬੂਰੇ ਹੋ ਕੇ। ਧਰਮ ਦੀ ਜੰਗ ਲੜਨੀ ਹੈ। ਜੋ ਗੁਰੂਆਂ ਨੇ ਲੜੀ ਨਹੀਂ। ਧਰਮ ਦੀ ਅੱਗੇ ਲੜ ਕੇ ਬੂਰੇ ਆਪੇ ਹੋ ਕੇ ਲੜੀਏ ਤੁ। ਹੈ ਤਾਂ ਇਹ ਦੁਇਓ ਲੜ ਜੰਗੋ ਸ਼ਬਦਕ ਜੰਗੇ ਆ ਪਰ ਦੋ ਪੇਚ ਤਾਂ ਠੰਡੀ ਜੰਗ ਚ ਵੀ ਹੁੰਦਾ ਹੀ ਨੇ ਇਹ ਦੋ ਪੇਚ ਐ ਨਹੀਂ ਠੰਡੀ ਜੰਗ ਦੇ ਠੰਡੇ ਜੰਗ ਦੇ ਦੋ ਪੇਚ ਨੇ ਉਹ ਸਾਰੇ ਸਿਖਾਤੇ ਤੁਹਾਨੂੰ ਦੋ ਪੇਚ ਪੂਰੀ ਸ੍ਰਿਸ਼ਟੀ ਦੀ ਨੌਲੇਜ ਤਿੰਨ ਲੋਗ ਦੀ ਇਹ ਤੇ ਬਣਾ ਅਧੂਰੀ ਹੈ ਇਹ ਵੀ ਇੱਕ ਪੱਖ संसार ਤ੍ਰਿਯੋਤ ਸੰਸਾਰ ਦੀ ਉਤਪਤੀ है, ਪੱਖ ਹੈ ਸੰਸਾਰ ਨੂੰ ਸਮਝੇ ਬਿਨਾ ਸੰਸਾਰ ਨੂੰ ਛੱਡ ਨਹੀਂ ਸਕਦੇ ਸੰਸਾਰ ਨੂੰ ਛੱਡਣ ਵਾਸਤੇ ਸੰਸਾਰ ਦੀ ਡੀਪ ਨੌਲੇਜ ਚਾਹੀਦੀ ਹੈ ਇਹ ਚ ਲੱਬੜ ਨੂੰ ਕੁਛ यकीन ਹੈ ਇਹ ਚ ਲੱਬੜ ਨੂੰ ਕੀ ਹੈ ਕੁਛ ਨਹੀਂ ਮਾਇਆ ਚ ਲੱਬੜ ਨੂੰ ਕੁਛ ਨਹੀਂ ਜਿਹਦਾ ਯਕੀਨ ਆ ਰਹੀ ਹੈ ਬੜੀ ਤੇ ਵਿਦਿਆ ਕੀ ਪ੍ਰਤੀਤ ਪ੍ਰਤੀਤੇ ਇਹਨੂੰ ਇੱਕ ਹੈ ਪਰ ਪੱਖੋ ਦੋ ਹੈ ਜਦੋਂ ਪਹਿਲਾ ਉਹ ਪੂਰਾ ਹੋ ਜਵੇ ਅਵਤਾਰ ਵੀ ਪਹਿਲਾਂ ਪੜ੍ਹਾਏ ਨੇ ਅਕਾਲ ਉਸਤ ਵੀ ਪਹਿਲਾਂ ਪੜ੍ਹਾਤੀ ਹੈ ਆਦ ਤੋਂ ਬਾਅਦ ਚਿੱਟੀ ਚਨ ਵੀ ਪੜ੍ਹਾਤੇ ਨੇ ਉਹ ਬਾਅਦ ਰੱਖਿਆ ਸਾਰਿਆਂ ਤੇ ਐਨਾ ਪੱਕਾ ਕਰਤਾ ਉਹਨੂੰ ਐਨਾ ਮਜ਼ਬੂਤ ਕਰਤਾ ਉਹ ਉਸ ਦਿਸ਼ੀ ਕੋਲ ਤੱਕੂਗਾ ਸਾਡੋ ਰਚਨਾ ਰਾਮ ਭਰਾਈ ਸਾਥ ਪਹਿਲਾਂ ਹੀ ਉਹ ਜੇ ਉਹ ਸਦਾਸੀ ਜੀ ਨੂੰ ਉਹਨੇ ਕਹਿੰਦੇ ਪਾਰ ਕਰਕੇ ਉਹ ਕਹਿੰਦਾ ਉਹ ਇਹ ਜਬਣਾ ਉਹ ਉਸ ਅਵਸਥਾ ਦੇ ਵਿੱਚ ਇਹਨਾਂ ਨੂੰ ਪੜਨਾ ਚਾਹੀਦਾ ਹੈ ਪਹਿਲਾਂ ਇਹਨਾਂ ਨੂੰ ਕੋਈ ਡਾਕਟਰ ਕਹਿੰਦਾ ਇਹਨੂੰ ਕਹਿੰਦੇ ਕਿ ਆ ਬਈ ਤੁਸੀਂ ਪੜੋ ਕੋਈ ਤਾਂ ਕਹਿਣਾ ਨਹੀਂ ਪੜੋ ਇਹ ਰੌਲਾ ਘਾਦੇ ਬਹੁਤ ਨੇ ਜੇ ਤਾਂ ਕਹਿ ਵੀ ਜ਼ਬਰਦਸਤੀ ਪੜੋਗੇ ਤੁਸੀਂ ਜਰੂਰ ਪਹਿਲਾਂ ਫਿਰ ਅਰੇ ਬਾਲੀ ਸਾਰੇ ਜ਼ਬਰਦਸਤੀ ਪਾਉਂਦੇ ਨੇ ਅਸੀਂ ਤਾਂ ਕਹਿੰਦਾ ਤੂੰ ਆਦਮੀ ਛੱਡ ਜੋ ਸਿੱਖੀ ਵੀ ਛੱਡ ਜੋ ਕੋਈ ਲੋੜ ਹੈ ਜਿੰਨੇ ਘੱਟ ਹੋਣੇ ਇਹਨਾਂ ਚੰਗਾ